ਏਆਰਪੀ 1550 ਏਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ 11:07 ਹੋਏ ਐ 10 ਫਰਵਰੀ ਦਾ ਦਿਨ ਹੈ ਬੜਾ 2017 ਦਾ ਸ਼ੁੱਕਰਵਾਰ ਹੈ 28 ਮਾਘ ਨਾਨਕਸ਼ੇਸਮਤ 548 ਸਵਾਗਤ ਹੈ ਜਿਵੇਂ ਛੋਟੇ ਜਵਾਕ ਨੂੰ ਤਾਇਆ ਦੂਰੋਂ ਹੋਕਰਾ ਮਾਰ ਕੇ ਕਹਿੰਦਾ ਉਹ ਪੀਟਰ ਇੰਜਨ ਦੇ ਕੋਲ ਨਾ ਜਾਈ ਬਲਮੋਹਨ ਵਾਰਸ ਵੀ ਇਹੋ ਹੀ ਕਹਿੰਦਾ ਅੱਜ ਦੇ ਲੋਕ ਸਾਡੇ ਵਿੱਚ ਅਹਿਮ ਕੰਮ ਕਤਦਾਵਾਂ ਗੱਲਾਂ ਬਾਤਾਂ ਗੀਤ ਗੀਤ ਥੁਲਕਦੇ ਮਸਲਿਆਂ ਤੇ ਗਲਵਤ ਹੋਏਗੀ ਪਹਿਲੇ ਹਿੱਸੇ ਦੇ ਵਿੱਚ ਤੁਹਾਨੂੰ ਖਬਰਾਂ ਸੁਣਾਉਣਾ ਹੈ ਖਬਰਾਂ ਤਿਆਰ ਹੋਰ ਕੀਤੀਆਂ ਹੁੰਦੀਆਂ ਜਦ ਨੂੰ ਕੋਈ ਹੋਰ ਤੁਹਾਡਾ ਸੁਖ ਸੁਨੇਹਾ ਕੋਈ ਮਾੜਾ ਸੁਨੇਹਾ ਆ ਜਾਂਦਾ ਉਧਰ ਨੂੰ ਝੁਕਣਾ ਪੈਂਦਾ ਚਲੋ ਸੱਤ ਦੇ ਵਿੱਚ ਗੱਲ ਤੁਹਾਡੀ ਹੋਣੀ ਚਾਹੀਦੀ ਹੈ ਤੁਹਾਡੀ ਹੋ ਹੀ ਕਰੀਦੀ ਹੈ ਮਨ ਆਲੀ ਨਹੀਂ ਕਰੀਦੀ ਮਨ ਆਲੀ ਕਦੇ-ਕਦੇ ਕਰੀਦੀ ਹੈ ਜ਼ਿਆਦਾਤਰ ਤੁਹਾਡੀਆਂ ਹੁੰਦੀਆਂ ਨੇ 12 ਤੋਂ 1:00 ਦੇ ਸਮੇਂ ਦੇ ਵਿੱਚ ਖੁੱਲੀ ਵਿਚਾਰ ਚਰਚਾ 1 ਤੋਂ 2 ਵਜੇ ਤੱਕ ਮੇਰਾ ਪਿੰਡ ਮੇਰੇ ਖੇਤ ਦੀ ਸੈਗਮੈਂਟ ਸ਼ੁਰੂ ਕਰਨੀ ਆ ਸੂਤ ਨਹੀਂ ਆਇ ਮਹੀਨਾ ਤੁਹਾਨੂੰ ਦਿੱਤਾ ਸੀ ਗੱਲ ਤੋੜ ਦੇ ਨਹੀਂ ਕਿਸੇ ਪਾਸੇ ਨੂੰ ਅੱਜ ਮੈਂ ਤੋੜੂੰ ਦੁਆਰਾ ਤੁਸੀਂ ਹੰਗਾਰਾ ਭਰਿਓ 1842 247 1550 ਮੈਂ ਹੌਲੀ ਦੇ ਕੇ ਕਹਿਣਾ ਚਾਹੀਦਾ ਜ਼ੋਰ ਨਾਲ ਕਹਿ ਗਿਆ ਮੈਂ ਮੈਂ ਨਹੀਂ ਹੌਲੀ ਦੇ 1842 247 ਇਹ ਮੈਂ ਬਹੁਤ ਮਾਰਦੀ ਆ ਬੰਦੇ ਨੂੰ ਬਹੁਤ ਪੈੜਾ ਸਿੜਦੀ ਐ ਬੜੇ ਹੋਹੋ ਤੁਰਗੇ ਇੱਥੇ ਕਈ ਤਾਂ ਕਹਿੰਦੇ ਮਾਈਕੇ ਗੀਜੇ ਚ ਪਾ ਕੇ ਅਸੀਂ ਲੈ ਜਾਣਾ 18442471550 ਉਹ ਨੰਬਰ ਹੈ krpradio.com ਜਿੱਥੇ ਸਿੱਧਾ ਪ੍ਰਸਾਰਣ ਚੱਲਦਾ ਹੈ ਵਾਰਿਸ ਸੁਰਮੇ ਦੇ ਗੁਣ ਦੱਸਦਾ ਸੁਣੋ krpradio.com ਤੇ ਸਿੱਧਾ ਪ੍ਰਸਾਰਣ ਤੇ ਐਪ ਡਾਊਨਲੋਡ ਕਰ ਲਿਓ ਤੇ ਪ੍ਰੋਗਰਾਮ ਸਾਰੇ ਖਬਰਨਾਮਾ ਵਾਲੇ ਮੁੰਡੇ ਪਾਉਂਦੇ ਐਟਲੀ ਤੋਂ ਧੰਨਵਾਦ ਹੈ ਜਿਹੜਾ ਪ੍ਰੋਗਰਾਮ ਲੈਟ ਜਾਂਦਾ ਤੁਸੀਂ ਸੁਣ ਸਕਦੇ ਹੋ ਫੇਸਬੁੱਕ ਤੇ ਪਾਇਆ ਹੁੰਦਾ ਤੇ ਯੂਟਿਊਬ ਤੇ ਹਰਜੀਤ ਸਿੰਘ ਗਿੱਲ ਦਾ ਨਾਮ ਪਾਉਂਗੇ ਤਾਂ ਸਾਰੀਆਂ ਕਹਾਣੀਆਂ ਹੁਣ ਤਾਂ ਬਹੁਤ ਇਕੱਠੀਆਂ ਕਰਤੀਆਂ ਉੱਥੇ ਮੌਜ ਹੈ ਸਕਦੇ ਆ 2 3 ਦਿਨ ਜੇ ਨਾ ਆਇਆ ਹੋ ਮੈਂ ਸੁਣ ਸਕਦੇ ਹਾਂ ਜੇ ਦਿਲ ਉਦਰੇ 1844 247 1550 ਐ ਕਿ ਦੇਸ਼ ਦਾ ਵੀ ਘੇੜਾ ਲਾਇਆ ਰੱਬਾ ਨਹੀਂ ਮਾਰ ਮਹੀਨੇ ਦਾ ਹੁਣ ਅਗਲੇ ਸਾਲ ਇਹ ਜਾਵਾਂਗੇ ਨਾਲੇ ਸੁੱਖ ਖੈਰ ਹੋ ਜਾਓ 18442471550 ਉਹ ਨੰਬਰ ਹੈ ਨਿਮੇਡੌਲਾ ਜਿਹਦਾ ਨੰਬਰ 60444064 62 info@krpioradiodotcom ਪਰ ਅਦ੍ਰੇਮਾ ਬਹੁਤ ਹੁੰਦਾ ਦਸਾਂ 11 ਮਹੀਨੇ ਬਾਅਦ ਜੇ ਮਹੀਨਾ ਉੱਥੇ ਲੱਗ ਜੇ ਪਿੰਡ ਦੀਆਂ ਗਲੀਆਂ 'ਚ ਮਨ ਸੂਤ ਆ ਕੇ ਬਹਿ ਜਾਂਦਾ ਪਰ ਕਈ ਵਾਰ ਮੁਸ਼ਕਲਾਂ ਦੇ ਵਿੱਚ ਮਨ ਸਮਝਾਉਣਾ ਵੀ ਪੈਂਦਾ ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਸੀਂ ਸੁਖ ਸੁਨਿਆਹ ਕਰਦੇ ਹੋ harjeet.g@krpioradiodotcom ਇਹ ਈਮੇਲ बड़ा ਹੁੰਦਾ ਇਸ ਮੱਖਾ ਫੁੱਲ ਅੱਕਦਾ ਸੋਹਣੀ ਲੱਗਦੀ ਚੰਬੇਲੀ ਚੁੰਝ ਖੋਲਦੀ ਜਿਹੜੀ ਸਰਵਾਂ ਦੇ ਸਿਰ ਜਾਂਦੀ ਗੁੰਦ ਕੇ ਧੁੱਪ ਬੁੱਲਾਂ ਵਿੱਚ ਪਤਾ ਨਹੀਂ ਕੀ ਬੋਲਦੀ ਚਾਰੇ ਪਾਸੇ ਹਰਿਆਵਲਾਂ ਦਾ ਝੁੱਲਵੇ ਕਿਤੇ ਟਹਿਕਦੇ ਅਨਾਰਾਂ ਉੱਤੇ ਫੁੱਲਵੇ ਜਦੋਂ ਚੰਡੀਆਂ 'ਚ ਜੋਗੀ ਕੋਈ ਨੱਚਦਾ ਉਦੋਂ ਕਿਤੇ ਭੱਤਲਾ ਨੇ ਕੱਜ ਲਈਏ ਧਰਤੀ ਕਿਤੇ ਲੀਹਾ ਵਿੱਚ ਚੁੱਪ ਜਿਹੀ ਵਰਤੀ ਕਦੋਂ ਕਿਰਦ ਕੋਈ ਟੁਕਕਾ ਪਾ ਕੇ ਲੀਹਾ ਸਪਲੰਗ ਜਾਂਦਾ ਕੋਲ ਦੀ ਜਿਹੜੀ ਸਰੂਆਂ ਦਾ ਸਿਰ ਜਾਂਦੀ ਗੁੰਦ ਕੇ ਧੁੱਪ ਬੁੱਲਾ ਵਿੱਚ ਪਤਾ ਨਹੀਂ ਕੀ ਬੋਲਦੀ ਕਿਤੇ ਕੱਚੀ ਕੱਚੀ ਤਾਂਦਲੇ ਦੀ ਕੈਲਵੇ ਪਾਈ ਜਾਂਦੀ ਏ ਗੁਵਾਰੀ ਵਿੱਚ ਪੈਲਵੇ ਜਿਹੜੇ ਅਸੂ ਵਿੱਚ ਮੱਕੜੀ ਦੇ ਜਾਲ ਨੂੰ ਉਹ ਹਵਾ ਝੂਟੇ ਮਾਟੇ ਲੈ ਜਾਵੇ ਖੋਲਦੀ ਜਿਹੜੀ ਸਰੂਆਂ ਦਾ ਸਿਰ ਜਾਂਦੀ ਕੇ ਧੁੱਪ ਬੁੱਲਾਂ ਵਿੱਚ ਪਤਾ ਕੀ ਬੋਲਦੀ ਹੋਈਆਂ ਨੇਰੇ ਵੀ ਚੁੱਪ ਵੇ ਕੁੱਦੀ ਸੂਰਜੇ ਦੀ ਪਾਲਕੀ 'ਚੋਂ ਧੁੱਪ ਕੌਣ ਲੈ ਗਿਆ ਚਿਰਾ ਕੇ ਭਲੇ ਖੰਭਾਂ ਨੂੰ ਨਿਗਾ ਕਾਂਵਾਂ ਅਤੇ ਚਿੜੀਆਂ ਨੂੰ ਟੋਲਦੀ ਜਿਹੜੀ ਸਰੂਆਂ ਦਾ ਸਿਰ ਜਾਂਦੀ ਗੁੰਦ ਕੇ ਧੁੱਪ ਬੁਲਾਂ ਵਿੱਚ ਪਤਾ ਨਹੀਂ ਪਤਾ ਨਹੀਂ ਕੀ ਬੋਲਦੀ ਧੁੱਪ ਬੁਲਾਂ ਵਿੱਚ ਪਤਾ ਨਹੀਂ ਬੋਲਦੀ ਹਰਮਨਜੀਤ ਰਾਣੀ ਤਤਖਿਆਲੇ ਪਿੰਡ ਤੋਂ ਲਿਖਦਾ ਹੂੰ ਕਿੰਨੀਆਂ ਵਧੀਆ ਚੀਜ਼ਾਂ ਪਿੰਡਾਂ ਦੇ ਵਿੱਚੋਂ ਸਾਨੂੰ ਮਿਲੀਆਂ ਜਿਹੜੇ ਅਸੀਂ ਪਿੰਡਾਂ 'ਚੋਂ ਆਏ ਅਸੀਂ ਵੀ ਵਿਸਾਰਤੀਆਂ ਬੰਦਿਆਂ ਨੂੰ ਤਾਂ ਖੈਰ ਬੜਾ ਕੁਝ ਲਾਉਣ ਕਰਨ ਦੀ ਗੱਲ ਨਹੀਂ ਹੁੰਦੀ ਵੱਧ ਤੋਂ ਵੱਧ ਦੇਸੀ ਬੰਦਿਆਂ ਨੇ ਖੇਤੀ ਤੋਂ ਬਾਅਦ ਆਥਣੇ ਜੇ ਨਹਾਉਣਾ ਜੇ ਸਰੋਂ ਦਾ ਤੇਲ ਲਾ ਲੈਣਾ ਸਵਾਰ ਕੇ ਉਹਨਾਂ ਨਾਲ ਗੱਲ ਬਣ ਜਾ। ਜਮਈ ਕੜਾ ਹੋਇਆ ਜਿਹੜਾ ਚਮੜਾ ਉਹਨੇ ਨਰਮ ਹੋ ਜਾਣਾ। ਜੱਤੂ ਨੀਰੂ ਤੇਲ ਲਾ ਕੇ ਬੰਦਿਆਂ ਨੇ ਮਾੜੀ ਮਾੜੀ ਉਂਗਲ ਨੱਕ ਨਾਲ ਤੇ ਮਾੜੀ ਜੀ ਉਂਗਲ ਜਿਹੜੀ ਕੰਨਾਂ ਤੇ ਸਿਰ ਤੇ ਹੱਥ ਫੇਰ ਕੇ ਨਾਲ ਸ਼ੁਕਰ ਆਦਤ ਗਰਮ ਪਾਣੀ ਨਾਲ ਨਹਾ ਕੇ। ਬੀਬੀਆਂ ਦਾ ਕੰਮ ਇੱਕ ਸਾਂਝੀ ਕੁਜੀ ਹੁੰਦੀ ਛੋਟੀ ਤੇ ਉਹਦੇ ਵਿੱਚ ਇੱਕ ਸੁਰਮੇ ਦੀ ਡਲੀ ਹੁੰਦੀ ਉਹ ਡਲੀ ਕਸਾ ਕੇ ਛੋਟੇ ਜੁਆਕਾਂ ਦੇ ਉਸਰਮਾ ਪਾਇਆ ਜਾਂਦਾ ਡਲੀ ਵਾਲਾ ਸੁਰਮਾ ਉਹਨੂੰ ਕਹਿੰਦੇ ਬੀਬੀਆਂ ਕੋਲ ਸੁਰਮਚੂ ਹੁੰਦਾ ਤਿੱਖਾ ਐਨ ਬਹੁਤ ਉਹਨੂੰ ਦੇਖ ਕੇ ਡਰ ਲੱਗਦਾ ਕਈ ਵਾਰ ਢਾ ਕੇ ਜਦ ਪਾਉਂਦੀਆਂ ਨਾ ਲੋ ਬاہر ਚੀਚੀ ਨਾਲ ਪਾਉਂਦੀਆਂ ਲੇਰਾ ਮਾਰਦੇ ਜਾਂ ਲੋ ਵਾਲੀ ਡੱਬੀ ਬੇਬੇ ਨੇ ਚੱਕਣੀ ਤੇ ਉਹ ਸੁਰਮਚੂ ਆ ਜਿਹੜਾ ਉਹ ਬਹੁਤ ਖਿਆਲ ਦੇ ਨਾਲ ਪਾਉਂਦੀ ਹੈ ਤੇ ਫੇਰ ਜਦ ਉਹ ਅੱਖ ਦੇ ਵਿੱਚ ਸਲਾਈ ਸੁਰਮਚੀ ਉਹਦੇ ਸੁਰਮੇ ਦੀ ਪਾ ਕੇ ਤੇ ਅੱਖ ਨੱਪ ਕੇ ਵਿੱਚ ਵੀ ਹੌਲੀ ਦੇ ਕੇ ਹੋ ਸਲਾਈ ਖਿੱਚਣੀ ਤਾਂ ਅੱਖ ਕਈ ਵਾਰ ਘਮਾਉਣੀ ਪਈ ਟਕ ਟਕ ਟਕ ਇਸ ਤਰ੍ਹਾਂ ਇੱਥੇ ਹੁਣ ਪੁੱਠਾ ਕੰਮ ਹੋਇਆ ਹੋਰ ਕੁਝ ਲਾਉਣੀ ਹੈ ਜਿਹੜੀ ਨਾਲ ਵਾਲ ਜੇ ਕੜੇ ਹੋ ਜਾਂਦੇ ਅੱਖਾਂ ਹੁਣ ਵੀ ਚਮਕਦੀਆਂ ਤੇ ਵੱਧ ਤੋਂ ਵੱਧ ਸਨਖਪਣੇ ਲਈ ਵਟਨਾ ਉੱਥੇ ਹੁੰਦਾ ਤੇ ਵਟਨਾ ਵਧੀਆ ਤਰੀਕੇ ਨਾਲ ਲਾਇਆ ਜਾਂਦਾ ਸਿਰ ਨਹਾਉਣ ਨੂੰ ਵਧੀਆ ਜਾਮਣ ਹੁੰਦਾ ਮੂਲੋਂ ਹੀ ਉੱਪਰ ਗੱਲ ਕਰਨੀ ਆ ਤਾਂ ਦੰਦਾਸਾ ਮਿਲਿਆ ਜਾਂਦਾ ਉਹਦੀ ਗੱਲ ਪਤਾ ਲੱਗ ਜਾਂਦੀ ਵਿਦੰਦਾਸਾ ਮਿਲਿਆ ਸੁੱਖ ਹੈ ਵਿਆਹਾਂ 10 ਵਜੇ ਨਹਾਉਂਦੀਆਂ ਫਿਰ ਆਪਣੇ ਆਪ ਨੂੰ ਸਵਾਰਦੀ ਬੰਦੇ ਸਾਰੀ ਦਿਹਾੜੀ ਉਹਦੇ ਵਿੱਚ ਕਿੰਨੀ ਸਾਦਗੀ ਸੀ ਹੁਣ ਅਤਰ ਫਲੇਲ ਜੀ ਤੇ ਆਹਾ ਜੀ ਫਰੇਗਰੈਂਸਸ ਦੀ ਇਹ ਕੋਲੋਨ ਹੈ ਜੀ ਇਹ ਪਰਫਿਊਮ ਹੈ ਜੀ ਇਹ ਡਿਓਡੋਰੈਂਟ ਨੇ ਜੀ ਇਹ ਹੈ ਉਹ ਹੈ ਵਾਸ਼ ਹੈ ਇਹ ਪਤਾ ਨਹੀਂ ਬੜਾ ਸਾਰਾ ਕੁਝ ਉਹਨਾਂ ਚ ਕੈਮੀਕਲ ਹੀ ਆ ਪਰ ਕਿੰਨਾ ਆਰਾਮ ਸੀ ਕਦੇ ਕੈੜੀ ਚ ਵੱਧ ਤੋਂ ਵੱਧ ਠੰਡ ਦੇ ਵਿੱਚ ਪੂਰੀ ਠੰਡ ਦੇ ਵਿੱਚ ਗਰਦ ਦੇ ਨਾਲ ਕਿਤੇ ਚਮੜੀ ਖਰਾਬ ਹੁੰਦੀ ਕੱਖ ਨਹੀਂ ਸੀ ਹੁੰਦਾ ਹੁਣ ਵੀ ਜਿਆਦਾ ਆਉਂਦੇ ਨੇ ਕਸ਼ਮੀਰੀ ਉੱਪਰੋਂ ਉਹ ਦੰਦਾਸਾ ਦੇ ਕੇ ਜਾਂਦੇ ਨੇ ਪਰ ਹੁਣ ਕੌਣ ਮਲਦਾ ਉੱਥੇ ਦੰਦਾਸਾ ਨਾ ਕੋਈ ਚੱਬਦਾ ਨਾ ਕੋਈ ਮਰਦਾ ਦੰਦ ਅਨਾਰ ਦੇ ਦਾਣਿਆਂ ਵਾਂਗ ਹੁੰਦੇ ਆ ਅਨਾਰ ਦੇ ਦਾਣਿਆਂ ਵਾਂਗ ਐ ਤਿੱਖੇ ਇੱਥੇ ਜਵਾਕ 10 10 ਹਜ਼ਾਰ ਚ ਪੈਂਦਾ ਪਹਿਲੇ 15 ਸਾਲਾਂ ਚ ਕਦੇ ਇਧਰ ਨੂੰ ਤਾਰ ਬੰਨ ਲੱਕਦੇ ਇਧਰ ਨੂੰ ਕਦੇ ਮੂਹਰ ਨੂੰ ਕਰਦੇ ਕਦੇ ਪਿੱਛੇ ਨੂੰ ਕਰਦੇ ਜਵਾਕ ਬੋਲਣੋਂ ਪਹਿਲਾਂ ਹੀ ਧੱਗਾ ਨਹੀਂ ਬੋਲਣਾ ਆਉਂਦਾ ਫਿਰ ਆਬ ਮੰਨ ਦਿੰਦੇ ਫਿਰ ਹੋਰ ਕੁਝ ਬੋਲਦੇ ਖੈਰ ਬਦਲਾਅ ਸੁਭਾਵਿਕ ਹੈ ਪਰ ਕੁਦਰਤ ਦੇ ਨੇੜੇ ਰਹਿਣਾ ਬਹੁਤ ਵਧੀਆ ਗੱਲ ਹੈ ਇੱਕ ਬਹੁਤ ਹੁਣ ਫਰਕ ਆ ਰਿਹਾ ਹੈ ਜਿਹੜੇ ਅੱਬਰ ਸਾਖਰ ਨੇ ਉਹ ਹੁਣ ਆਰਗੈਨਿਕ ਵੱਲ ਨੂੰ ਜਾ ਰਹੇ ਨੇ ਮੈਂ ਉਸ ਦਿਨ ਵੀ ਤੁਹਾਨੂੰ ਕਿਹਾ ਸੀ ਇਸ ਵਾਰ ਪੱਕਾ ਕਰੋ ਬਈ ਆਪਣੇ ਘਰ ਦੇ ਵਿੱਚ ਇੱਕ ਜਿਹੜੀਆਂ ਕਿਆਰੀਆਂ 5-7 ਜ਼ਰੂਰ ਲਾਓ ਜ਼ਰੂਰ ਖਰਚੇ ਨੂੰ ਛੱਡੋ ਖਰਚਾ ਦਾ ਉਹਨਾ ਕਿ ਹੋ ਜਾਂਦਾ ਜਿੰਨੀ ਕਿ ਸਬਜ਼ੀ ਤੁਸੀਂ ਲਿਉਣੀ ਆ ਪਰ ਐਟ ਹੁਣ ਜਿੰਨਾ ਅਸੀਂ ਰਸਾਇਣ ਦੇ ਯੁੱਗ ਚ ਰਹਿ ਰਹੇ ਆ ਆਪਣੇ ਆਪ ਨੂੰ ਸੰਭਿਆ ਜਾ ਡੀਟੌਕਸ ਜੇ ਵੋ ਇਹ ਗੱਲਾਂ ਕਲੈਂਜ਼ਿੰਗ ਇਹ ਕਦੇ ਸੁਣੀਆਂ ਸੀ ਉੱਥੇ ਨਹੀਂ ਸੀ ਹੁੰਦੀਆਂ ਕਿਉਂਕਿ ਉੱਥੇ ਸਫਾਈ ਕੁਦਰਤ ਹੈ ਸਰੀਰ ਇਹ ਖੁਦ ਕਰਦਾ ਇਹ ਚੀਜ਼ ਘਰ ਦੀ ਸਾਰੀ ਸਬਜ਼ੀ ਹੋਣੀ ਉਹ ਦੱਸਿਓਂ ਦੀ ਮੈਂ ਗੱਲ ਇੱਕ ਪੜ ਕੇ ਹੱਸਿਆ ਉਹ ਕਹਿੰਦਾ ਰੌਲਾ ਪੈ ਗਿਆ ਵੇ ਪਹਚਾਲ ਆ ਗਿਆ ਪਹਚਾਲ ਆ ਗਿਆ ਕਹਿੰਦਾ ਸ਼ਹਿਰੀਏ ਲੋਕ ਘਰਾਂ ਤੋਂ ਬਾਹਰ ਨੂੰ ਭੱਜ ਲੈ ਕਹਿੰਦਾ ਮੈਨੂੰ ਸਾਗ ਨੇ ਐਨੀ ਕੂਕਰ ਚੜੀ ਹੋਈ ਸੀ ਕਹਿੰਦਾ ਮੈਂ ਖਿਆ ਕੋਠੇ ਚੜ ਕੇ ਦੇਖੀ ਪਿੰਡ ਠੀਕ ਠਾਕ ਹੈ ਉੱਥੇ ਚੜ ਕੇ ਕਹਿੰਦਾ ਮੈਂ ਦੇਖਿਆ ਪਿੰਡ ਠੀਕ ਸੀ ਪੌੜੀਆਂ ਉਤਰ ਕੇ ਆ ਕੇ ਕਹਿੰਦਾ ਮੈਂ ਅੱਧ ਚ ਬੇੜੇ ਚ ਮੰਝਾ ਡਾ ਕੇ ਰਜਾਈ ਦੱਬ ਕੇ ਫੇਰ ਸੌਂਗੇ ਤਾਂ ਐਨੀ ਆਇਰਨ ਹੁੰਦੀ ਐਨਾ ਉਹਦਾ ਤੱਤ ਹੁੰਦੇ ਤੁਰਿਆ ਜਾਂਦਾ ਬੰਦਾ ਖੇਤ ਤੇ ਉਹਦੇ ਆਲੂ ਦਾਲੇ ਆਡਾਂ ਤੇ ਉੱਥੇ ਸਰੋਂ ਲੱਗਿਆ ਉੱਥੇ ਹੀ ਮੂੰਗਰੇ ਨੇ ਉੱਥੇ ਹੀ ਛਲਗੁਮਾ ਨੇ ਕੱਢ ਕੇ ਕਚਰ ਕਚਰ ਕਚਰ ਨੂੰ ਧੋ ਕੇ ਜਦ ਝੰਡ ਦਿੰਦਾ ਛਕੀ ਜਾਂਦੇ ਉੱਥੇ ਬੈਠੇ ਨਾ ਉਹਨਾਂ ਦੀ ਬੀਪੀ ਵਧਦੀ ਸੀ ਕਿਉਂਕਿ ਲੋੜ ਬੀਪੀ ਵਧਾਉਂਦਾ ਸੀ ਮੂਲੀ ਛੰਡਾ ਕਰਦੀ ਸੀ ਝਾੜ ਕੇ ਪਰਨੇ ਮੋਢੇ ਤੇ ਰੱਖ ਕੇ ਹਵਾ ਸਿਰ ਨੂੰ ਲਵਾਉਂਦੇ 1.5-2 ਕਿਲੋਮੀਟਰ ਦੂਰੋਂ ਸੰਦ ਸਮਾਨਾ ਜਿੱਥੋਂ ਪਟਿਆ ਉੱਥੇ ਹੀ ਦੱਬ ਕੇ ਚਾਲ ਬਈ ਮੱਲਾ ਚੱਲੀ ਕਦੇ ਨਹੀਂ ਸੀ ਕਹਿੰਦੇ ਰਾਹ ਦੀ ਗੱਲ ਚਾਹੀਦੀ ਐ ਕਦੇ ਨਹੀਂ ਸੀ ਕਹਿੰਦੇ ਘਰ ਦੀ ਗੱਲ ਚਾਹੀਦੀ ਐ ਜਾ ਕੇ ਘਟ ਜੂ ਵੱਧ ਜੂ ਇਹੋ ਜਿਹਾ ਕੱਚਾ ਪੱਕਾ ਨਹੀਂ ਸੀ ਕਰਦੇ ਜਾਂਦੇ ਮੰਜੇ ਡਾਹੇ ਉਹਨੇ ਬੈਠ ਲਿਆ ਉਹ ਬਈ ਪ੍ਰਸ਼ਾਦਾ ਤਾਂ ਬੁਰ ਜਦ ਕਰਦੇ 15 ਜੀ ਮੰਜੀਆਂ ਆਪਣੀਆਂ ਛੋਟੀਆਂ ਛੋਟੀਆਂ ਡਾ ਕੇ ਬੈਠੇ ਹੁੰਦੇ ਤੇ ਸੁਆਣੀਆਂ ਘਰ ਦੀਆਂ 4-5 ਇਕੱਠੀਆਂ ਸੰਯੁਕਤ ਪਰਿਵਾਰ ਦੀਆਂ ਰੋਟੀ ਲਈ ਫਿਰਦੀਆਂ ਵਿਚ ਲੱਗਦੀਆਂ ਫਿਰਦੀਆਂ ਕੋਈ ਉਧਰ ਨੂੰ ਜਾਂਦੀ ਕੋਈ ਉਧਰ ਨੂੰ ਜਾਂਦੀ ਕੋਈ ਉਧਰ ਨੂੰ ਜਾਂਦੀ ਵੇਖੀ ਕਿਤੇ ਨਿਕਾਲ ਨਾ ਟੁੱਟ ਜੇ ਇਨਾਂ ਨੇ ਚੌਂਕੜੀ ਮਾਰ ਲੜੀਆਂ ਦੁਆਰਾ ਫੇਰ ਆਸ਼ ਕਸ਼ਮੀਰਾ ਉਹ ਪੰਜਾਬ ਕਦੇ ਮੁੜਿਆ ਵੇ ਬਹੁਤ ਸੋਚ ਆ ਉੱਥੇ ਦੀ ਨੂੰ ਸਾਰਿਆਂ ਨੂੰ ਮੈਂ ਕਹਿੰਦਾ ਕਿ ਦੱਸਿਆ ਕਰੋ ਜ ਜਨੇ ਦੇ ਜਨਮ ਦਿਨ ਹੁੰਦੇ ਐ ਤੇ ਈਆਂ ਖੁਸ਼ ਹੋ ਜਾਂਦੀਆਂ ਇਹਦੀਆਂ ਗੱਲ ਤੇ ਤੇ ਉਹਨਾਂ ਨੂੰ ਟ੍ਰੈਂਡ ਵਧੀਆ ਤਰੀਕੇ ਨਾਲ ਕਰਨਾ ਚਾਹੀਦਾ ਇਸ ਤਰ੍ਹਾਂ ਹੀ ਬਹੁਤ ਨੇੜੇ ਦੇ ਮਿੱਤਰ ਨੇ ਬਾਈ ਜੀ ਰੂਪੀ ਹੋਣੀ ਰੂਪੀ ਪਠੜ ਅਸਨਪੁਰ ਤੋਂ ਇਰ ਮਿਸ ਰਹਿੰਦੇ ਆ ਕਸਟਮ ਉਹਨਾਂ ਦਾ ਬੇਟਾ ਨੋਬਲਜੀਤ ਸਿੰਘ 15 ਸਾਲ 16ਵਾਂ ਸਾਲ ਉਹਦਾ 16ਵਾਂ ਜਨਮ ਦਿਨ ਅੱਜ ਲੱਖ ਲੱਖ ਵਧਾਈ ਹੈ ਇਹਨਾਂ ਬੱਚਿਆਂ ਨੂੰ ਛੋਟੇ ਨਾ ਦੇ ਪੜ ਉਹ ਵਧੀਆ ਜਿੱਥੇ ਇਹ ਗੱਲ ਮੈਂ ਵੇਖੀ ਹੈ ਇੰਟੀਰੀਅਰ ਚ ਰਹਿੰਦੇ ਸਾਡੇ ਬੱਚੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਰਹਿੰਦੇ ਚਨੌਲਾਂ ਨਾਲ ਫਰਕ ਹੈ ਇੱਕ ਤਾਂ ਬਾਹਰਲੀ ਦੁਨੀਆ ਉੱਥੇ ਬਹੁਤ ਘੱਟ ਹੈ ਕਰਨ ਨੂੰ ਬਹੁਤ ਕੁਝ ਘੱਟ ਹੈ ਉਹ ਥਾਂਏ ਰਹਿੰਦੇ ਆ ਤੁਸੀਂ ਇਹ ਵੇਖਿਓ ਜਿੰਨੇ ਵੀ ਤੁਹਾਡੇ ਇੰਟੀਰੀਅਰ ਦੇ ਵਿੱਚ ਰਿਸ਼ਤੇਦਾਰ ਨੇ ਗੱਲ ਇਹ ਐ ਨਾ ਬੱਚਿਆਂ ਨੂੰ ਇਹਨਾਂ ਨੇ ਬਾਕੀ ਤਾਂ ਕੁਛ ਕਰੇ ਹੀ ਲੈਣਾ ਪਰ ਇਹਨਾਂ ਨੂੰ ਆਪਣੀ ਸੱਭਿਆਚਾਰ ਨਾਲ ਆਪਣੇ ਧਰਮ ਨਾਲ ਆਪਣੀ ਕੌਮ ਨਾਲ ਸਿੱਖ ਜਿਹੜਾ ਉਹ ਕੀ ਹੈ ਸਿੱਖਾਂ ਦਾ ਆਪਣਾ ਸੱਭਿਆਚਾਰ ਕੀ ਹੈ ਉਸ ਦੇ ਬਾਰੇ ਗੱਲਬਾਤ ਦਸੀ ਨੋਬਲਜੀਤ ਸਿੰਘ ਨੂੰ ਜਿੱਥੇ ਪੁੱਤਰ ਨੂੰ ਵਧਾਈਆਂ ਉੱਥੇ ਬਾਈ ਜਰੂਪੀ ਤੇ ਉਨਾਂ ਦੀ ਸਦਾਰਨੀ ਉਹਨਾਂ ਨੂੰ ਵੀ ਬਤਾਈ ਇੱਕ ਉਹ ਕਹਾਲਾ ਦਾ ਬੜਾ ਰੌਲਾ ਪਿਆ ਹੋਇਆ ਹੈ ਜਾਦੀ ਉਥੋਂ ਅੱਜ ਮੈਂ ਗੱਲ ਵੀ ਕਰਨੀ ਸ਼ਾਇਦ ਮਿਨਿਸਟਰ ਫਾਸਟ ਬੈਂਡ ਆਉਣਗੇ ਜਾਦੀ ਉਹਨਾਂ ਨੇ ਟੋਲ ਚੱਕੀ ਹੈ ਉਹਦੇ ਬਾਅਦ ਉਹਦਾ ਹੁਣ ਬਾਲੀਵਾਸੇ ਕੋਈ ਨਹੀਂ ਮੇਰਟ ਤੋਂ ਹੋਪ ਤੱਕ ਕੱਲ ਦਾ ਹਾਈਵੇ ਬੰਦ ਹੈ ਮੁੰਡੇ ਲਾਈਨਾਂ ਲਾਈ ਬੈਠੇ ਆਂ ਗਾਂਹ ਜਾਣ ਜੋਗੇ ਹੈ ਨਹੀਂ ਇਹ ਇਹ ਜਿਹੜੀ ਹੈ ਤੇ ਅਖੀਰ ਦੇ ਵਿੱਚ ਇਹੀ ਆ ਕਿ ਸਟਾਕਾਂ ਨੂੰ ਖਰੀਦ ਕੀਤਾ ਜਾ ਤੇ ਸਾਫ਼ ਕੀਤਾ ਜਾਵੇ। ਆ ਗੀਤ ਤੁਹਾਨੂੰ ਗਿੱਲ ਹਰਦੀਪ ਦਾ ਸੁਣਾਉਣਾ ਤੇ ਵਾਪਸ ਆਉਣਾ। ਜੈ ਗਰੇਵਾਲ ਸਾਡੇ ਦੋਸਤ ਨੇ ਫਰिजਨੋ ਦੇ ਵਿੱਚ ਕੈਲੀਫੋਰਨੀਆ ਚ ਉਹਨਾਂ ਦੇ ਬੇਟੇ ਦਾ ਵੀ ਅਜਨਮ ਦੇਣਾ ਜੀ 11 ਸਾਲ ਦਾ ਹੋ ਗਿਆ। ਲੱਖ ਲੱਖ ਵਧਾਈਆਂ ਬਾਈ ਜੀ। ਤੁਹਾਨੂੰ ਤੇ ਪਰਿਵਾਰ ਨੂੰ ਸਾਰਿਆਂ ਹੁਣ ਇਸ ਸਮੇਂ ਦੇ ਵਿੱਚ ਗੁਰਜਤ ਸਿੰਘ ਜੁਣੀ ਮੇਰੇ ਨਾਲ ਨੇ એનર્ਜੀ ਊਰਜਾ ਕੀ ਹੈ ਊਰਜਾ ਘਰ ਦੇ ਵਿੱਚ ਕਿਸ ਤਰ੍ਹਾਂ ਫਲੋ ਕਰਦੀ ਹੈ ਬਾਹਰ ਦੁਨੀਆ ਦੇ ਵਿੱਚ ਇਸ ਕੀ ਕੀ ਨੇ ਘਰ ਕਿਵੇਂ ਠੀਕ ਹੋ ਸਕਦੇ ਨੇ ਤੇ ਇਫੈਕਟ ਕਿਵੇਂ ਕਰਦੀ ਹੈ ਅਸਲ એનર્ਜੀ એનર્ਜੀ એનર્ਜੀ ਬਹੁਤ ਗੱਲਾਂ ਹੋ ਰਹੀਆਂ ਮੈਡੀਟੇਸ਼ਨ ਨਾਲ ਤੇ ਉਸ ਤੋਂ ਬਾਅਦ ਬਹੁਤ ਲੋਕ ਯੋਗੇ ਦੇ ਵਿੱਚ ਕਹਿੰਦੇ ਆ ਤੇ ਆਪਣੇ ਆਪ ਨੂੰ ਵਾਰਮ ਕਰੋ ਆਪਣੇ ਆਪ ਦੀ ਜਿਹੜੀਆਂ એનર્ਜੀ ਠੀਕ ਕਰੋ ਪਤਾ ਨਹੀਂ ਕੀ ਕੀ ਉਹਦੇ ਵਿੱਚ ਅਲੱਗ-ਅਲੱਗ ਫਲਸਫੀ ਹੈ ਪਰ ਜਦ ਵੀ ਇਹਦੇ ਨਾਲ ਇਲਾਜ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਜਰਮਨ ਦੇ ਵਿੱਚ ਆਸਟਰੀਆ ਦੇ ਵਿੱਚ ਉਹਦੇ ਤੇ ਗੁਰਜਤ ਸਿੰਘ ਹਣੀ ਖੋਜ ਕਰਕੇ ਕੁਝ ਨਾ ਕੁਝ ਲੱਭਦੇ ਰਹਿੰਦੇ ਆ ਤੇ ਦੱਸਦੇ ਰਹਿੰਦੇ ਆ ਤੇ ਇੱਥੇ ਮੈਂ ਫੇਰ ਤੁਹਾਨੂੰ ਦੱਸਦਿਆਂ ਕਿ ਪਲੀਜ਼ ਇਹ ਇੱਕ ਪੇਟ ਸੈਗਮੈਂਟ ਹੈ ਤੁਸੀਂ ਉਹਨਾਂ ਨੂੰ ਪਰਸਨਲ ਕੰਸਲਟੇਸ਼ਨ ਲਈ ਜਾਂ ਸੱਦਦੇ ਹੋ ਸਾਰੀ ਉਹਨਾਂ ਨਾਲ ਗੱਲ ਕਰਕੇ ਤੇ ਫੇਰ ਕਈ ਵਾਰ ਚੀਜ਼ਾਂ ਠੀਕ ਹੁਣ ਡਾਕਟਰ ਸਾਡਾ ਇਲਾਜ ਕਰਦੇ ਆ ਉਹਦੇ ਚੋਂ 10 ਬੰਦੇ ਠੀਕ ਹੁੰਦੇ ਆ 10 ਨਹੀਂ ਠੀਕ ਹੁੰਦੇ ਮਤਲਬ ਉਹ ਚ ਡਾਕਟਰ ਦੀ ਕੋਈ ਮੁਸ਼ਕਲ ਨਹੀਂ ਡਾਕਟਰ ਦੀ ਪੜ੍ਹਾਈ ਦੱਸਾਂ ਜਿਹੜੇ ਠੀਕ ਹੁੰਦੇ ਉਹਨਾਂ ਲਈ ਵੀ ਪਰ ਕਈ ਵਾਰ ਤੁਸੀਂ ਜ਼ਿੰਦਗੀ ਦੇ ਜ਼ਿੰਮੇਵਾਰੀਆਂ ਦੇ ਵਿੱਚ ਕੁਝ ਨਾ ਕੁਝ ਅਜਿਹਾ ਹੁੰਦਾ ਜਿਹੜਾ ਤੁਹਾਨੂੰ ਕੋਈ ਸਾਰਥਕ ਨਹੀਂ ਲੱਗਦਾ ਪਰ ਫੇਰ ਵੀ ਤੁਸੀਂ ਜਿਸ ਤਰ੍ਹਾਂ ਇੱਕ ਪੇਡ ਸੈਗਮੈਂਟ ਹੈ ਤੁਹਾਡਾ ਮਰਜ਼ੀ ਤੁਹਾਡੀ ਹੈ ਆਪਣਾ ਸਮਾਨ ਖਰੀਦਣਾ ਜਾਂ ਉਹਨਾਂ ਨੂੰ ਕੰਸਲਟ ਕਰਨਾ ਪਰ ਉਹ ਆਪਣੀ ਇਨਫੋਰਮੇਸ਼ਨ ਦੇ ਤੌਰ ਤੇ 2 ਹਫ਼ਤੇ ਬਾਅਦ ਆ ਕੇ ਗਲਬਤ ਕਰਦੇ ਆ ਤੁਹਾਡਾ ਸਵਾਗਤ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਅਜੀ ਤੁਹਾਨੂੰ ਤੇ ਸਭ ਸੁਣਨ ਵਾਲਿਆਂ ਨੂੰ ਪਿਆਰ ਭਰੀ ਨਿੱਗੀ ਸਤਿ ਸ਼੍ਰੀ ਅਕਾਲ ਪਹਿਲੇ ਜਿੱਦਾਂ ਪਾ ਤੁਸੀਂ ਪਹਿਲੇ ਹੀ ਗੱਲ ਦੇ ਸ਼ੁਰੂ ਵਿੱਚ ਹੀ ਕਿਹਾ ਹੈਗਾ ਕਿ ਅਸੀਂ ਇੱਥੇ ਕੋਈ ਮਿਰਕਲਸ ਗੱਲ ਨਹੀਂ ਕਰ ਰਹੇ ਹੈਗੇ ਮੈਂ ਹਰ ਸ਼ੋਚ ਚ ਕਹਿਣਾ ਔਰ बार-बार ਕਹਿਣਾ ਮਿਰਕਲਸ ਗੱਲ ਨਹੀਂ ਕਰ ਰਹੇ ਹੈਗੇ ਪਰ ਨਾ ਇਹ ਚਮਤਕਾਰ ਗੱਲ ਕਰ ਰਹੇ ਆ ਅਸੀਂ ਕਦੇ ਕਦੇ ਹਾਂ ਮੈਂ ਐਗਜ਼ਾਮਪਲ ਜ਼ਰੂਰ ਦਿੰਨਾ ਹੈਗਾ ਲਾਈਫ ਨਾਲ ਓਰੀਐਂਟਡ ਕਿਉਂਕਿ ਦੋਨੋਂ ਪਾਸੇ ਦਾ ਮੇਰਾ ਐਕਸਪੀਰੀਅੰਸ ਹੈਗਾ ਤੇ ਜੇ ਪਹਿਲੇ ਗੱਲ ਸਮਝੋ એનર્ਜੀ ਕੀ ਹੈ ਉਹਨੇ ਬੰਦਾ 20 ਸਾਲ ਦੀ ਉਮਰ ਦੇ ਵਿੱਚ ਰਾਜ ਕੇ ਸ਼ਰਾਬ ਪੀਂਦਾ ਇੱਕ ਬੰਦਾ ਹੈਲਦੀ ਖਾਣਾ ਖਾਂਦਾ ਉਹ ਸ਼ਰਾਬ ਪੀਣ ਵਾਲਾ ਕਹਿੰਦਾ ਯਾਰ ਤੇਰੀ ਮੇਰੀ ਸੇ ਵਿੱਚ ਕੀ ਫਰਕ ਹੈ ਤੂੰ ਵੀ ਉਹੋ ਜਿਹਾ ਨਹੀਂ ਉਹੋ ਜਿਹਾ ਤਾਂ ਇਹ ਤਾਂ 50 ਸਾਲ ਦੀ ਉਮਰ ਦੇ ਬਾਅਦ ਜਾ ਕੇ ਪਤਾ ਲੱਗਦਾ ਕਿ 20 ਸਾਲ ਵਾਲਾ ਜਿਹੜਾ ਸੀਗਾ ਉਹ ਖੜਕ ਗਿਆ ਪੂਰਾ ਤੇ ਦੂਸਰਾ ਬੰਦਾ ਜਿਹੜਾ ਹੀ ਸਟਿਲ ਹੈਵ ਇਜ਼ ਵੈਲ ਐਂਡ ਲੌਂਗ ਲਾਈਫ ਹੈ ਸੋ ਉਸ ਤਰੀਕੇ ਨਾਲ ਇਹ ਚੀਜ਼ਾਂ ਲਾਈਫ ਨੂੰ ਹੀ ਆਰਗੈਨਿਕ ਯੂਨਿਟੀ ਲੈ ਕੇ ਚੱਲਣਾ ਮੈਂ ਤੁਹਾਨੂੰ ਥੋੜੀ ਜਿਹੀ ਪਹਿਲੇ ਪੋਇਟਿਕ ਸੈਂਸ ਵਿੱਚ ਗੱਲ ਸੁਣਾਵਾਂਗਾ ਛੋਟੀ ਜਿਹੀ ਪੋਇਟਰੀ ਟਾਈਪ ਚ ਫਿਰ ਮੈਂ ਤੁਹਾਨੂੰ ਉਹਦਾ ਸਾਇੰਟਿਫਿਕ ਫੈਕਟ ਅਸੀਂ ਜਾਂਦੇ ਹਾਂ ਲੈਟ ਰਸ਼ ਕਰਨ ਦੌੜ ਨਹੀਂ ਹੈ ਕਿ ਵੀ ਘਰ ਚ ਕੀ ਐ એનર્ਜੀ ਐ ਤੇ ਖਾਣਾ ਕੀ ਨਾ ਆਪਾਂ ਪਹਿਲੇ ਕੰ ਸਮਝੀਏ ਕੀ ਐ ਜੇ ਨਹੀਂ ਵੀ ਸਮਝ ਆਇਆ ਤੇ 6047211004 ਤੇ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਫਿਰ ਵੀ ਨਹੀਂ ਸਮਝ ਆਂਦਾ ਮੇਰੇ ਕੋਲ ਬੈਠੋ ਚਾਹ ਪਾਣੀ ਇਕੱਠੇ ਪੀਵਾਂਗੇ ਜੀ ਗੱਲ ਸਮਝ ਆਏ ਠੀਕ ਹੈ ਨਹੀਂ ਤੇ ਕੋਈ ਅਸੀਂ ਗੱਲ ਨਹੀਂ ਹੈ ਦਿਸ ਮੈਂ ਤੁਹਾਨੂੰ ਚਾਰ ਮਹੀਨਾ ਸੁਣਾਣਾ ਬਈ ਕਵਿਤਾ ਪੜ੍ਹਦਾ ਸੀਗਾ ਤੇ ਪੋਲਿਟਿਕ ਵੀ ਹੈ ਸਿਰਫ ਆਪਾਂ ਉਹਦੇ ਵਿੱਚ ਸਾਇੰਟਿਫਿਕ ਵਿੱਚ ਜਾਵਾਂਗੇ ਲਿਖਦਾ ਹੈ ਕਿ ਕਾਇਆ ਕੋਠੜੀ ਦੇ ਵਿੱਚ ਕੈਦ ਹੋਏ ਹੋ ਕੌਣ ਹੈ ਕੋਠੀ ਬਣਾਉਣ ਵਾਲਾ ਕਿੰਨੇ ਕਾਲ ਤੇ ਕਰਮ ਦਾ ਤਾਣਾ ਬੁਣਿਆ ਵਿੱਚ ਕਰਮਾਂ ਦੀ ਤੈਨੂੰ ਫਾਹੀ ਫਸਾਉਣ ਵਾਲਾ ਮੇਰੀ ਮੇਰੀ ਕਰਕੇ ਕਿੰਨੇ ਬਣਾਇਆ ਏ ਜਿਹੜਾ ਬਣ ਕੇ ਤੈਨੂੰ ਵਹਾਉਣ ਵਾਲਾ ਕਿੰਨੇ ਲੱਖ 84 ਨੂੰ ਭੋਗਣਾ ਏ ਤੇਰੀ ਕੈਦ ਨੂੰ ਦੱਸ ਕੌਣ छुड़ाਣ ਵਾਲਾ ਕਿਹੜਾ ਅੰਦਰੋਂ ਬੋਲੀਆਂ ਬੋਲਦਾ ਏ ਬੋਲ ਕੇ ਤੈਨੂੰ ਸਮਝਾਣ ਵਾਲਾ ਕਿੰਨੇ ਅੰਦਰੋਂ ਦਿੱਤੀ ਵਿਚਾਰ ਤੈਨੂੰ ਵਿਵੇਕ ਬੁੱਧ ਦੇ ਵਿੱਚ ਕਰਾਉਣ ਵਾਲਾ ਕੌਣ ਹੈ ਮੇਰੇ ਅੰਦਰ ਕਿਹੜੀ ਊਰਜਾ ਹੈ ਜਿਹੜੀ ਕਿ ਇਮੀਡੀਏਟਲੀ ਡਿਸਾਈਡ ਕਰ ਲੈਂਦੀ ਹੈ ਠੀਕ ਹੈ ਗਲਤ ਹੈ ਇਮੀਡੀਏਟਲੀ ਬ੍ਰਹਮ ਗਿਆਨ ਦੀ ਗੱਲਾਂ ਕਰਦੀ ਹੈ ਇਹਹੀ ਊਰਜਾ ਇੱਕ ਟਾਈਮ ਦੇ ਉੱਤੇ ਇਹਹੀ ਊਰਜਾ 100 ਡਾਲਰ ਪਿੱਛੇ ਮਰਡਰ ਕਰਨ ਨੂੰ ਵੀ ਤਿਆਰ ਹੋ ਜਾਂਦੀ ਹੈ ਕਿ ਉਹ ਇਹ ਕੌਣ ਦਾ ਸਾਰੀ ਗੇਮ ਖੇਡਦਾ ਪਿਆ ਕੌਣ ਮੇਰੇ ਅੰਦਰ ਬੋਲਦਾ ਕਿੰਨੇ ਲੱਖ 84 ਦੇ ਬਸਾਇਆ ਕਿੰਨੇ ਵਿਵੇਕ ਦਿੰਦਾ ਕਿ ਕਿਹੜੀ ਪਾਵਰ ਹੈ ਜਿਹਨੇ ਮੈਨੂੰ ਡਰਾਈਵ ਕੀਤਾ ਕਿ ਤੂੰ ਯਾਰ ਇਹ ਗੱਲਾਂ ਸਮਝ ਇਹ ਕੀ ਚੀਜ਼ਾਂ ਸਮਝ ਇਹ ਕਿਹੜੀ ਚੀਜ਼ ਹੈ ਤੁਹਾਡੇ ਕੋਲ ਲਿਆਂਦੀ ਆ ਲੈ ਵੀ ਸ਼ੇਅਰ ਕਰ ਮੇਰੇ ਅੰਦਰ ਕੌਣ ਉੱਠਦਾ ਬੈਠਦਾ ਇਹ ਸਾਰੀ ਚੀਜ਼ਾਂ ਇਹ ਪੋਲਿਟਿਕ ਵੀ ਹੈ ਕਹਿੰਦਾ ਪਰ ਜਿੰਨੀ ਗੱਲ ਭਾਵੇਂ ਸੂਖਮ ਹੈ ਉੰਨੀ ਸਮਝਣੀ ਔਖੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹੈਗਾ ਕਿ ਸਾਰੇ ਸਾਰੇ ਆਪਾਂ ਸਮਝਦੇ ਹਾਂ ਇਸ ਤੋਂ ਪਹਿਲੇ ਕਿ ਮੈਂ ਸਾਇੰਟਿਸਟ ਇਫੈਕਟ ਜਾਵਾਂ ਜਿਵੇਂ ਅਸੀਂ ਸਾਰੇ ਆਪਰੇਟ ਕਰਦੇ ਹਾਂ ਇੰਦਰੀਆਂ ਨੂੰ ਹੱਥ, ਕੰਨ, ਅੱਖ, ਥੱਲੇ ਨੱਕ ਸਾਰੀ ਇੰਦਰੀਆਂ ਆ ਸਾਡੀਆਂ ਅਸੀਂ ਇੰਦਰੀਆਂ ਨੂੰ ਆਪਰੇਟ ਕਰਦੇ ਹਾਂ ਪਰ ਇੰਦਰੀਆਂ ਨੂੰ ਐਕਟਿਵੇਟ ਕੌਣ ਕਰਦਾ ਕੌਣ ਕਰਦਾ ਇੰਦਰੀਆਂ ਨੂੰ ਐਕਟੀਵੇਟ ਕੋਈ ਸਬਜੈਕਟ ਕੋਈ ਸੋਹਣੀ ਚੀਜ਼ ਮੇਰੇ ਅੱਗੇ ਆ ਗਈ ਕੋਈ ਫੂਡ ਮੇਰੇ ਅੱਗੇ ਆ ਕੇ ਸੋਹਣਾ ਆ ਗਿਆ ਇੰਦਰੀ ਚ ਪਾਣੀ ਆ ਗਿਆ ਸਬਜੈਕਟ ਮੇਰੀ ਇੰਦਰੀ ਨੂੰ ਉਹ ਕਰਦਾ ਐਕਟਿਵੇਟ ਕਰਦਾ ਪਰ ਇੰਦਰੀ ਨੂੰ ਐਕਟਿਵੇਟ ਕੌਣ ਕਰਦਾ ਫਿਰ ਤੁਸੀਂ ਦੇਖੋ ਜੋ ਜੋ ਪਿੱਛੇ ਜਾਈ ਜਾ ਉਹ ਤਾਂ ਸੁੱਕਮ ਹੋਈ ਜਾਣੀ ਹੈ ਇੰਦਰੀ ਨੂੰ ਐਕਟਿਵੇਟ ਮਨ ਕਰਦਾ ਮਨ ਕੰਦਰ ਰਸਗੁਲਾ ਇੰਦਰੀ ਉਹ ਕਰਕੇ ਵਿਸ਼ੇ ਬਣਿਆ ਰਸਗੁਲਾ ਮਨ ਨਹੀਂ ਦਿੱਤਾ ਰਸਗੁਲੇ ਦਾ ਇਹ ਤੇ ਸਵਾਦ ਨੇ ਸਾਰੇ ਮਿਲੇ ਹੋਏ ਆ ਲੇਕਿਨ ਮਨ ਨੂੰ ਮੂਵ ਕਰਦਾ ਕਹਿੰਦੇ ਹਰ ਥਾਟ 4 ਮਿਲੀਵੋਲਟ ਆਫ ਇਲੈਕਟ੍ਰਿਸਿਟੀ ਉਹ ਸਾਇੰਸ ਵਾਲੇ ਪਾਸੇ ਜਾਣਾ ਥਾਟ ਨੂੰ ਕੌਣ ਐਕਟੀਵੇਟ ਕਰ ਰਿਹਾ ਥਾਟ ਨੂੰ ਹੁਣ ਜੇ ਕਹਿਣਾ ਇਹਨੂੰ ਯੂਨੀਵਰਸਲ એનર્ਜੀ ਕਹਿੰਦੇ ਉਹ ਥਾਟ ਨੂੰ ਯੂਨੀਵਰਸ ਮੂਵ ਕਰਦਾ ਜਾਂ ਆਤਮਾ ਮੂਵ ਕਰਦੀ ਹੈ ਫਿਰ ਕੋਈ ਡਿਸਕਸ਼ਨ ਸ਼ੁਰੂ ਹੋ ਜੇ ਕਿ ਆਤਮਾ ਹੁੰਦੀ ਨਹੀਂ ਫਿਰ ਕੋਈ ਰੈਸ਼ਨਲ ਸੋਸਾਇਟੀ ਵੀ ਕੁਝ ਕਹੇਗੀ ਕੋਈ ਕੁਝ ਕਹੇਗਾ ਕੁਐਸਚਨ ਜਿਉਂ ਜਿਉਂ ਗੱਲ ਬਰੀਕ ਹੋਈ ਜਾਂਦੀ ਹੈ ਤਿਉਂ ਤਿਉਂ ਗੱਲ ਸਮਝਣੀ ਔਖੀ ਹੋ ਜਾਂਦੀ ਹੈ ਤਾਂ ਜਿਹੜੀ ਗੱਲ ਮੈਂ ਕਰਦਾ ਹੈਗਾ ਇਹ ਕੋਈ ਮਿਰਕਲ ਨਹੀਂ ਹੈ ਕੋਈ ਜਾਦੂ ਤੁਹਾਨੂੰ ਚੀਫ ਮਨ ਚੰਦੇ ਬਿਲਾ ਦੇਣਾ ਜੇ ਤੁਸੀਂ 20 ਸਾਲ ਤੋਂ ਘਰ 'ਚ ਛਿਤਰੋ ਛਿਤਰੀ ਰੋਜ਼ ਹੋ ਰਹੇ ਹੋ ਰਿਲੇਸ਼ਨ ਤੁਹਾਡਾ ਖਰਾਬ ਹੈ ਤਾਂ ਮੇਰੇ 5 ਮਿੰਟ ਨਾਲ ਕੁਝ ਨਹੀਂ ਹੋ ਜਾਣਾ ਤੇ 1 ਘੰਟਾ ਆਨ ਨਾਲ ਕੁਝ ਨਹੀਂ ਹੋ ਜਾਣਾ ਤੁਹਾਨੂੰ ਉਹਦੇ ਬਾਅਦ ਗੱਲ ਵੀ ਸਮਝ ਪੈਣੀ ਹੈ ਡਾਕਟਰ ਕੋਈ ਦਵਾਈ ਦਿੰਦਾ ਜਿੰਦਾ ਕਹਿੰਦੇ ਨੀਂਦ ਦੀ ਗੋਲੀ ਖਾ ਲਈਓ ਸ਼ਰਾਬ ਵੀ ਪੀ ਤੇ ਸਵੇਰੇ ਗੱਡ ਬੋਡੀ ਭਈ ਹੋਣੀ ਉੱਥੇ ਉੱਥੇ ਡਾਕਟਰ ਨੂੰ ਨਹੀਂ ਤੁਸੀਂ ਜਿੰਮੇਵਾਰ ਠਾਰਾ ਸਕਦੇ ਗੱਲ ਸਮਝ ਨਹੀਂ ਆਂਦੀ ਕਈ ਵਾਰੀ ਹੁਣ ਦੇਖੋ ਮੈਂ એનર્ਜੀ ਦੀ ਗੱਲ ਕਰਦਾ ਜੀਨ ਵਾਸਤੇ ਕੀ ਕੁਝ ਚਾਹੀਦਾ ਫੇਰ ਹਵਾ ਤੇਲੀ ਆਕਸੀਜਨ ਚਾਹੀਦੀ ਐ ਸਨ ਚਾਹੀਦੀ ਐ ਇਸ ਦੇ ਇਲਾਵਾ ਕੁਝ ਚਾਹੀਦਾ ਇਸ ਦੇ ਇਲਾਵਾ ਪ੍ਰੇਮ ਚਾਹੀਦਾ ਕਹਿੰਦੇ ਆ ਤਿੰਨ ਮਹੀਨੇ ਜੰਮਦੇ ਬੱਚੇ ਨੂੰ ਮਾਰ ਛਾਤੀ ਨਾਲ ਨਾ ਲਗਾ ਕੇ ਰੱਖੇ ਉਹੀ ਛੱਡ ਦੇਵੇ ਇਹਦੀ ਇੱਕ ਸਟੱਡੀ ਐ ਕਿ ਬੱਚਾ ਨਾਰਮਲ ਨਹੀਂ ਰਹਿੰਦਾ ਤੋ ਇਹਦਾ ਮਤਲਬ ਜਿਹੜੀ ਇੱਕ ਊਰਜਾ ਜਿਹੜੀ ਸਭ ਤੋਂ ਈਸੂ ਕਮ ਹੈ ਪ੍ਰੇਮ ਵਰਗੀ ਉਹ ਨਜ਼ਰ ਹੀ ਨਹੀਂ ਆਉਂਦੀ ਉਹ ਵੀ ਜੀਵਨਾਸਤੇ ਜ਼ਰੂਰੀ ਹੈਗੀ ਹੈ ਉਹ ਵੀ ਆਪਣਾ ਰੋਲ ਪਲੇ ਕਰਦੀ ਹੈ ਸਨਸ਼ਾਈਨ ਹੈ ਜੇ ਨਿਹਰਾ ਹੋ ਜਾਏ ਹੁਣ ਤੁਸੀਂ ਜਿਓਗੇ ਜੇ ਨਿਹਰਾ ਹੋ ਜਾਏ ਤੁਸੀਂ ਜਿਓ ਕਿੰਨੇ ਦਿਨ ਜਿਓਗੇ ਬਿਲਕੁਲ ਬਿਨਾ ਸਨ ਤੋਂ ਪਰ ਵਾਸਤੇ ਮੈਂ ਕੰਟਰੀਆਂ 'ਚ ਦੇਖ ਲਿਆ ਸਨ ਘਟਿਆ ਹੁਣ ਡਿਪਰੈਸ਼ਨ ਹੋ ਬਿਲਕੁਲ ਜੀ ਆ 5 ਮਹੀਨੇ 'ਚ ਬੰਦੇ ਕਮਲੇ ਹੋ ਜਾਂਦੇ ਕਮਲੇ ਹੋ ਜਾਂਦੇ ਸੋ ਇਹਦਾ ਮਤਲਬ ਹੈ ਵੀ ਸਾਨੂੰ ਨਾਲ ਵੀ ਅਸੀਂ ਜੁੜੇ ਹੋਏ ਆ ਸਨ ਵੀ ਸਾਨੂੰ ਐਨਰਜੀ ਦੇ ਰਿਹਾ ਫੂਡ ਸਾਨੂੰ ਅਲਟੀਮੇਟਲੀ ਕਿੰਦਾ ਐਨਰਜੀ ਦੇ ਰਿਹਾ ਹੁਣ ਬਸੂਕਮ ਨਗਰ ਨਹੀਂ ਆਂਦਾ ਜਿਹੜੇ ਸਾਡੇ ਮੋਲੀਕਿਊਜ਼ ਤੇ ਰਿਸਰਚ ਇਹ ਕਹਿੰਦੀ ਹੈ ਵਾਟਰ ਆ ਸਾਡੇ ਅੰਦਰ ਜਿਹੜੇ ਐਲੀਮੈਂਟਸ ਆ ਬੋਨਸ ਨਾ ਬੋਨ ਉਹਦਾ ਤੋੜਦਾ B1 ਹੂੰ B ਲਿਖ ਕੇ B1 ਇੱਕ ਨਾਲ ਜੁੜੇ ਰਹੋਗੇ ਬੋਨਸ ਵੀ ਠੀਕ ਰਹਿਣਗੇ ਸੋ ਮੈਂ ਮੇਰੀ ਮੈਂ ਚੀ ਚੀ ਤੋੜ ਤੋੜ ਕੇ ਦੇਖਦਾ ਕਿ ਹੀ ਬਲੱਡ ਆ ਵੀ ਲੋੜ ਕੇ ਕਿਹੜਾ ਕਿਹੜਾ ਲੋੜ ਲੱਗਦੇ ਫਿਰਦੇ ਪਏ ਹੋ ਨਾਲ ਨਾਲ ਵਾਟਰ ਉਹ ਪ੍ਰੋਟੀਨ ਵੀ ਆ ਉਹਦੇ ਚ ਡੀਐਨਏ ਆ ਕਾਰਬੋਹਾਈਡਰੇਟਸ ਆ ਸਭ ਕੁਝ ਜਿਹੜਾ ਹੈ ਇਹ ਪਾਣੀ ਵਿੱਚ ਫਲੋਟ ਕਰਿਆ ਸੋ ਸਭ ਤੋਂ ਇੰਪੋਰਟੈਂਟ ਚੀਜ਼ ਕੀ ਪਾਣੀ ਉਹ ਪਾਣੀ ਵਿੱਚ ਕੀ ਐਨਰਜੀ ਨਹੀਂ ਹੈਗੀ ਪਾਣੀ ਪਾਣੀ ਕੀ ਕਰਿਆ ਤੁਸੀਂ ਗੱਟਰ ਦਾ ਪਾਣੀ ਪੀਲੋਗੇ ਨਹੀਂ ਪੀਓਗੇ ਬਿਦਾ ਤੁਸੀਂ ਕਹੋਗੇ ਵੀ ਇਹ ਖਰਾਬ ਕੀ ਕਰੂਗਾ ਖਰਾਬ ਕਿਉਂਕਿ ਪਾਣੀ ਇਨਫੋਰਮੇਸ਼ਨ ਕੈਰੀ ਕਰਦਾ ਇੱਕ ਬੁੱਕ ਹੈ ਜੇ ਕਿਸੇ ਵੀ ਸੱਜਣ ਨੇ ਪੜ੍ਹਨੀ ਹੋਏ ਮੈਸੇजेस ਡਾਕਟਰ ਤੇ ਮੈਥੋਡੀ ਮੈਸੇजेस ਫਰਮ ਥੀ ਵਾਟਰ ਇਹ ਰਿਸਰਚ ਕੀਤੀ ਸੀ ਜਪਾਨੀ ਡਾਕਟਰ ਨੇ ਕਿ ਪਾਣੀ ਕੋਲ ਅੰਡਰਸਟੈਂਡਿੰਗ ਹੈ ਪਾਣੀ ਰਿਐਕਟ ਕਰਦਾ ਉਹਦਾ ਜੇ ਤੁਸੀਂ ਬਹੁਤ ਗੁੱਸੇ ਨਾਲ ਬੋਲਦੇ ਹੋ ਤਾਂ ਕ੍ਰਿਸਟਲਾਈਨ ਸਟਰਕਚਰ ਪਾਣੀ ਦਾ ਹੋਰ ਤਰ੍ਹਾਂ ਦਾ ਹੋ ਜਾਂਦਾ ਜੇ ਪ੍ਰੇਮ ਨਾਲ ਬੋਲਦੇ ਹੋ ਕ੍ਰਿਸਟਲਾਈਨ ਸਟਰਕਚਰ ਹੋਰ ਤਰ੍ਹਾਂ ਦਾ ਹੋ ਜਾਂਦਾ ਤਾਂ ਹੁਣ ਤੁਸੀਂ ਸੋਚੋ ਮੈਨੂੰ ਇੱਕ ਪੁਰਾਣਾ ਗਾਣਾ ਤੁਸੀਂ ਸੁਣਾਉਣਾ ਪਾਣੀ ਦਾ ਪਾਣੀ ਤੇਰਾ ਰੰਗ جیسا ਜਿਸਨੇ ਮਿਲਾ ਦੋ ਉਸੇ ਰੰਗ ਜੈਸਾ ਹੈ ਹੁਣ ਜੇ ਪਾਣੀ ਦੇ ਵਿੱਚ ਅਸੀਂ ਮੈਂ ਲਾਲ ਰੰਗ ਘੋਲ ਦਿੰਦਾ ਉਹ ਲਾਲ ਹੋ ਜਾਂਦਾ ਉਹ ਉਹੋ ਇਨਫੋਰਮੇਸ਼ਨ ਦਿੰਦਾ ਗਟਰ ਵਾਲਾ ਪਾਣੀ ਪੀਣਾ ਉਹ ਗਟਰ ਵਰਗੀ ਇਨਫੋਰਮੇਸ਼ਨ ਅੰਦਰ ਲੈ ਕੇ ਜਾਂਦਾ ਕਤੋਂ ਤੁਸੀਂ ਸੋਚੋ ਜਿਹੜਾ ਪਾਣੀ ਨੂੰ ਗੁੱਸੇ ਨਾਲ ਪੀਂਰਿਆ ਗੁੱਸੇ ਦੀ એનર્ਜੀ ਡੂ ਯੂ ਥਿੰਕ ਉਹ એનર્ਜੀ ਅੰਦਰ ਨਹੀਂ ਜਾਦੀ ਹਮ ਔਰ ਜਦੋਂ ਲੈਟਸ ਕੋਲ ਆਇਆ ਬਾਈ ਵਾਈਫ ਹੈ ਹਮ ਵਾਈਫ ਨੇ ਵਾਈਫ ਨੂੰ ਕੁਝ ਚੰਗਾ ਮਾਰਾ ਕਿਆ ਵਾਈਫ ਕੋ ਦੋ ਆਲਟਰਨੇਟਾ ਜਾਂ ਤਾਂ ਵਾਪਸ ਕਰੇ ਵਾਰ ਜੋ ਵਾਪਸ ਵਾਰ ਕਰਦੀ ਹੈ ਤੁਹਾਨੂੰ ਪਤਾ ਮੇਰਾ ਨਰਿਸ਼ਨ ਖਰਾਬ ਹੁੰਦਾ ਹਮ ਉਹ ਚੁੱਪ ਕਰ ਜਾਂਦੀ ਹੈ ਉਹ ਚੁੱਪ ਕਰ ਜਾਂਦੀ ਹੈ ਪਰ ਕੀ ਤੁਸੀਂ ਕਹਿੰਦੇ ਜਦੋਂ ਤੁਹਾਨੂੰ ਕੋਈ ਮਾਰਾ ਕਵੇ ਗਾਲਾਂ ਕੱਢੇ ਤਾ ਤੁਹਾਡੇ ਅੰਦਰ ਕੋਈ ਹਲਚਲ ਨਹੀਂ ਹੋਊਗੀ ਅੰਦਰ ਕੁਝ ਤਾਂ ਹਲਚਲ ਹੋਊਗੀ ਨੰਦਰ ਕੁਝ ਵਾਪਸ ਮਾਰਾ ਨਹੀਂ ਕਹਿੰਦੇ ਹਨਾ ਤੁਹਾਡਾ ਕੋਈ ਪਰਮ ਮਿੱਤਰ ਚਾਨਣ ਤੋਂ ਬੰਦਰ ਉਸਕੇ ਤੁਸੀਂ ਕਹਿੰਦੇ ਕੋਈ ਤੁਹਾਡੇ ਅੰਦਰ ਕੋਈ ਹਲਚਲ ਨਹੀਂ ਹੋਊਗੀ ਮੈਂ ਕਹਿੰਦਾ ਜਿੰਨਾ ਮਰਜੀ ਵੱਡਾ ਬੰਦਰ ਹੋਵੇ ਅੰਦਰ ਸੱਚੇ ਦਾ ਗੁਰੂ ਹਲਚਲ ਜ਼ਰੂਰ ਹੋਊਗੀ ਉਹ ਜਿਹੜੀ ਹਲਚਲ ਉਹ ਮੂਵਮੈਂਟ ਆਫ એનર્ਜੀ ਆ ਉਹਨੂੰ એનર્ਜੀ ਬਾਹਰ ਜਾਣਾ ਚਾਹੁੰਦੀ ਹੈ ਕਿਉਂਕਿ ਅਸੀਂ ਸੋਸ਼ਲ ਬੀਂਗ ਆਈਆਂ ਸੀ ਉਸ એનર્ਜੀ ਨੂੰ ਬਾਹਰ ਨਹੀਂ ਜਾਣ ਦੇ ਸਕਦੇ ਅਸੀਂ ਉਸ એનર્ਜੀ ਨੂੰ ਸੁਪਰੈਸ ਕਰ ਲੈਂਦੇ ਆ ਉਹ એનર્ਜੀ 네ਗੇਟਿਵ એનર્ਜੀ ਆ ਐਂਗਰੀ એનર્ਜੀ ਆ ਹਿੱਟਰ ਦੀ એનર્ਜੀ ਹੈ ਜਾਂ ਕਨਫਿਊਜ਼ਨ ਦੀ એનર્ਜੀ ਹੈ ਮੇਰੇ ਕੋਲ ਇਹ ਜੀ ਕਿਹੜੀ ਗੱਲ ਹੋ ਗਈ ਕਿ ਮੇਰਾ ਖਾਸ ਮਿੱਤਰ ਨਾਰਾਜ਼ ਹੋ ਗਿਆ ਜਾਂ ਮੇਰੀ ਵਾਈਫ ਨੇ ਯਾਰ ਐ ਕਿਉਂ ਕਰ ਦਿੱਤਾ ਜਾਂ ਵਾਈਸਪਾਸਾ ਜਾਂ ਬੱਚੇ ਨੇ ਤੁਸੀਂ ਕੁਝ ਕਿਹਾ ਬੱਚੇ ਕੋਲ ਦੋ ਆਪਸ਼ਨ ਫਾਦਰ ਤੇ ਇਕਨੋਮਿਕਲੀ ਡਿਪੈਂਡੈਂਟ ਹੈ ਉਹ ਹੁਣ ਤਾਂ ਕੁਝ ਨਹੀਂ ਕਹਿੰਦਾ ਤੁਹਾਨੂੰ ਨਾਲੇ ਕਹਿੰਦਾ ਮੈਂ ਮੇਰਾ ਫਾਦਰ ਆ ਕਹਾਨੂੰ ਕਹਿਣਾ ਲੇਕਿਨ ਜੇ ਇਹ એનર્ਜੀ ਹਲਚਲ ਹੋਈ ਉਹਨੇ ਕੀ ਕੀਤੀ ਉਹ ਸੁਖਮ ਗੱਲ ਹੈ ਉਹਨੂੰ ਉਹਨੇ ਦਬਾ ਲਿਆ ਜਦੋਂ ਦਬਾ ਲਿਆ ਉਹ ਬਿਮਾਰੀ ਬਣ ਉਂ ਤਾਂ ਐਨੀਆ ਬੁੱਕਸ ਐਸ ਦੇ ਉੱਪਰ ਲਿਖਿਆ ਹੋਇਆ ਕਿ ਡਾਕਟਰ ਵੀ ਉਦਾਂ ਕਹਿੰਦੇ ਕਿ ਮੈਂ ਡਾਕਟਰ ਨਹੀਂ ਹਾਂ ਡਾਕਟਰ ਕਹਿੰਦੇ 90% ਪ੍ਰੋਬਲਮ ਸਾਈਕੋਸਮੈਟਿਕ ਹੈ ਅਗਰ ਅੱਜ ਤੁਹਾਨੂੰ ਕੈਂਸਰ ਵੀ ਹੋਇਆ ਹੋਇਆ ਤਾਂ ਉਹ ਕਹਿੰਦੇ ਕਿ ਤਨਾਂ ਕਿਤੇ ਤੁਸੀਂ એનર્ਜੀ ਠੀਕ ਕਰਕੇ ਨਾ ਟਕਲ ਨਹੀਂ ਕੀਤੀ ਕੋਈ ਇਮੋਸ਼ਨ ਐਨੀ ਦਿਵਾ ਲਈ ਇਮੋਸ਼ਨਸ ਸੋ ਪਾਵਰਫੁਲ ਕਿ ਜਦੋਂ ਉਹ ਟੋਲਰੇਟ ਨਹੀਂ ਹੁੰਦੀਆਂ ਉਹ ਫਿਜ਼ੀਕਲ ਬਾਡੀ ਤੇ ਆ ਜਾਂਦੀਆਂ ਉਹ એનર્ਜੀ ਜਿਹੜੀ ਹੈ ਤੁਹਾਨੂੰ ਤੁਹਾਡੇ ਅੰਦਰ ਡਿਜ਼ੀਜ਼ ਕ੍ਰੀਏਟ ਕਰਦੀ ਹੈ ਡਿਜ਼ੀਜ਼ ਹੈ ਕੀ ਹੈ ਥਿਸ ਈਜ਼ ਜੇ ਤੁਹਾਡੀ ਵਾਰਿਸ ਤੁਹਾਨੂੰ ਚ ਪਰ ਤੁਸੀਂ ਆਪਣੀ ਈਜ਼ੀ ਸਿਚੁਏਸ਼ਨ ਤੋਂ ਪੜੇ ਰੱਟ ਗਏ ਕ੍ਰੀਏਸ਼ਨ ਆਫ ਬਿਜ਼ਨਸ ਸ਼ੁਰੂ ਹੋ ਗਈ ਆ ਸਿਰਫ ਆਮੇ ਸਾਲ ਬਾਅਦ ਆ ਜਿਹੜੀਆਂ ਚਾਈਨੀਜ਼ ਟਰੈਡੀਸ਼ਨਲ ਕੰਮ ਜਿਸ ਤਰ੍ਹਾਂ ਉਹ ਤੁਹਾਡੀ ਰੁਕੀ ਹੋਈ એનર્ਜੀ ਤੌਰ ਤੇ ਬਿਲਕੁਲ 372 ਪੁਆਇੰਟ ਉੱਤੇ ਕੇ ਚੱਲਦੇ ਆ ਚ ਹੈਗੇ ਉਹ ਉੱਤੇ ਪਿੰਨਾ ਲਗਾਉਂਦੇ ਆ ਤਾਂ ਕਿ ਉਹ ਕਹਿੰਦਾ ਇੱਥੇ એનર્ਜੀ ਬਲੌਕ ਹੋ ਗਈ એનર્ਜੀ ਦੀ ਮੂਵਮੈਂਟ ਉੱਤੇ ਸ਼ੁਰੂ ਹੋ ਗਈ ਅਗਰ ਉਹ 372 ਪੁਆਇੰਟਸ ਦੇ ਵਿੱਚ એનર્ਜੀ ਠੀਕ ਫਲੋ ਕਰਦੀ ਆ ਤੇ ਉਹਨਾਂ ਉਹਨਾਂ ਦੀ ਫਲਸਫੀ ਕਹਿੰਦੀ ਆ ਤੁਹਾਨੂੰ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਤੁਹਾਡੀ ਵਾਲੀ ਫਲਸਫੀ ਉਹਨਾਂ ਨਾਲੋਂ ਅਲੱਗ ਕਿਵੇਂ ਮੇਰੀ ਗਿਆਨ ਦੀ ਫਿਲਾਸਫੀ ਆ ਰਹੀ ਮੈਂ ਬੁਮਾਈ ਠੀਕ ਕਰੀ ਨਹੀਂ ਰਿਹਾ ਪਹਿਲੇ ਤੋਂ ਬਿਮਾਰੀਆਂ ਜੇ ਸ਼ਰਾਬ ਨਹੀਂ ਪੀਂਦੇ 20 ਸਾਲ ਦੀ ਉਮਰ 'ਚ ਇੱਕ ਬੰਦਾ ਡਿਸਟਿਊਟ ਸਾਲ ਦੀ ਉਮਰ 'ਚ ਕੇ ਤੁਸੀਂ ਜਿਆਦਾ ਹੈਲਥੀ ਹੋਵੋਗੇ ਉਹ ਘੱਟ ਹੈਲਥੀ ਹੋਏਗਾ ਮੈਂ ਤੁਹਾਨੂੰ ਦੇਖੋ ਜੇ ਪਾਣੀ ਅਸੀਂ ਪੀਤਾ ਉਹ ਪਾਣੀ ਨੂੰ ਅਸੀਂ ਗੁੱਸੇ ਨਾਲ ਪੀਤਾ ਡਾਕਟਰ ਮਕੈਟੋ ਦੇ ਸਾਬ ਨਾਲ ਕ੍ਰਿਸਟਲਾਈਨ ਸਟਰਕਚਰ ਸਾਰਾ ਟੁੱਟ ਗਿਆ ਹੋਇਆ ਪੁਰਾਣੇ ਜ਼ਮਾਨੇ ਪਾਸ ਕਰਨ ਦੇ ਜਗ੍ਹਾ ਬੈਠੇ ਸਤਾਰਨ ਜੀ ਵਾਹਿਗੁਰੂ ਕਹਿ ਕੇ ਹੁੰਦੇ ਸੀਗੇ ਪੁੱਛਣਾ ਕੁਝ ਇਹ ਕੋਈ ਇਹ ਕੋਈ ਨੋਸ਼ਨ ਨਹੀਂ ਸੀ ਭਾਜੀ ਇਹ ਸਾਇੰਸ ਹੈਗੀ ਪਿੱਛੇ ਉਹਦਾ ਕ੍ਰਿਸਟਲਾਈਨ ਸਟਰਕਚਰ ਇਮੀਡੀਏਟਲੀ ਚੇਂਜ ਹੁੰਦਾ ਮੈਂ ਕਿਹਾ ਜਿਸ ਸੱਜਣ ਨੇ ਪੜ੍ਹਨੀ ਹੋਏ ਜਾਂਦੀ ਹੈ ਲੈ ਕੇ ਪੜ ਲਓ ਨੇ ਵਾਟਰ ਦੇ ਉੱਪਰ ਕਿੰਨਾ ਕੁਝ ਕਿਹਾ ਔਰ 70% ਬਾਟਰ ਹੈ ਬੋਡੀ ਦਾ ਕਈ 78% ਕਹਿੰਦੇ ਲੇਕਿਨ ਮੋਲੀਕਿਊਲਸ ਤੋਂ ਕਹਿੰਦੇ 99% ਅੰਦਰ ਸੈਲ ਦੇ ਉਹ ਕਰਦੇ ਹੁਣ ਵਾਟਰ ਦੀ ਤਿੰਨ ਸ਼ੇਪਸ ਸਾਨੂੰ ਸਭ ਨੂੰ ਪਤਾ ਸੋਲਿਡ ਲਿਕਵਿਡ ਐਂਡ ਵਿਪਰ ਲੇਕਿਨ ਡਾਕਟਰ ਕਹਿੰਦੇ ਆ ਇੱਕ ਡਾਕਟਰ ਪੁੱਲ ਕਰਕੇ ਆ ਗਿਆ ਉਹ ਕਹਿੰਦੇ ਵੀ ਜੈ ਜਿਹੜੀ ਜੈਲ ਫਾਰਮ ਹੈ ਪਾਣੀ ਦੀ ਜੈਲੀ ਫਾਰਮ ਇਸ ਦੀ ਮੋਸਟ ਇੰਪੋਰਟੈਂਟ ਫਾਰਮ ਲੇਕਿਨ ਉਹ ਪਾਣੀ ਤੁਹਾਡੇ ਦੇ ਬੱਚਾ ਮਾਂ ਦੇ ਚੜਚ ਹੁੰਦਾ ਕਿਉਂਕਿ ਪਾਣੀ ਇਨਫਰਮੇਸ਼ਨ ਕੈਰੀ ਕਰਦਾ ਉਹਦੇ ਆਸ-ਪਾਸ ਜਿਹੜਾ ਪਾਣੀ ਹੈ ਉਹ ਬਾਡੀ ਦੇ ਆਸ-ਪਾਸ ਜਿਹੜਾ ਪਾਣੀ ਹੈ ਉਹ ਕੰਟੀਨਿਊਸly ਛੁੱਕੇ ਚ ਬੱਚਾ ਡਿਵੈਲਪ ਨਹੀਂ ਹੋਊਗਾ ਇੱਕ ਸਿੰਗਲ ਮੋਲੀਕੂਲ ਤੋਂ ਬੱਚਾ ਡਿਵੈਲਪ ਹੋਇਆ ਉਹ ਪਾਣੀ ਕਿਉਂਕਿ ਇਨਫਰਮੇਸ਼ਨ ਕੈਰੀ ਕਰਦਾ ਉਸ ਟਾਈਮ ਜੋ ਮਾਂ ਸੋਚਦੀ ਆ ਜੋ ਪਿਓ ਸੋਚਦਾ ਜੋ ਕਰਦਾ ਉਹ ਸਾਰਾ ਵਾਟਰ ਦੇ ਇਫੈਕਟ ਲੱਗ ਨੂੰ ਅਸੀਂ ਕਿਸ ਤੋਂ ਲੈ ਕੇ ਆਇਆ ਸੈਂਟੀਫਿਕਲੀ ਦੇਖੋ ਕਿ ਪਾਣੀ ਕਿਉਂਕਿ ਜੇ ਡਾਕਟਰ ਮੈਂ ਉਹਨੂੰ ਠੀਕ ਸਮਝਦੇ ਹੋ ਤੇ ਪਾਣੀ ਕਿਉਂਕਿ ਚੀਜ਼ਾਂ ਕੈਰੀ ਕਰਦਾ ਸਾਰੀ ਹਰ ਚੀਜ਼ ਦੀ ਇਨਫਰਮੇਸ਼ਨ ਕੈਰੀ ਕਰਦਾ ਸੋ ਪਾਣੀ ਦੇ ਵਿੱਚੋਂ ਬੱਚਾ ਫਲੋਟ ਕਰਿਆ ਜਿਹੋ ਜਿਹਾ এনवायरमेंट ਉਸ ਪਾਣੀ ਨੇ ਕ੍ਰੀਏਟ ਕੀਤਾ ਉਹੋ ਜਿਹਾ এনवायरमेंट ਕੱਲ ਨੂੰ ਉਥਾਰ ਬਸ ਅਜਿਹਾ ਜਿਹਾ ਬੱਚਾ ਸਰੀਰ ਚ ਬਾਇਗਾ ਉਹ ਐਸਾ ਕਰੇਗਾ ਮੈਂ ਇਹ ਕਹਿਣਾ ਚਾਹਨਾ ਕਿ ਬੜੀ ਸੂਖਸ਼ਮ ਲੈਵਲ ਤੇ ਇਹ ਸਾਰੀਆਂ ਗੱਲਾਂ ਅਸਰ ਕਰਦੀਆਂ ਤੇ ਮੇਰੀ ਸਾਰੀ ਬਾਡੀ ਕਈ ਟ੍ਰਿਲੀਅਨ ਕੰਟੀਨਿਊਸਲੀ ਵਾਈਬਰੇਟ ਕਰ ਰਿਆ ਔਰ ਹਰ ਸੈਲ ਜਿਹੜਾ ਵਾਟਰ ਉਹ ਚ ਮੇਨ ਰੋਲ ਰੋਲ ਪਲੇ ਕਰਦਾ ਜਿ ਪੜਦੇ ਵੀ ਆ ਤਾਲਾ ਪਾਣੀ ਜੀਵ ਹੈ ਵੀ ਪਾਣੀ ਵਿੱਚ ਲਾਈਫ ਹੈਗੀ ਹੈ ਸਾਡੇ ਗੁਰੂਆਂ ਨੇ ਕਈ ਜਰ ਪਹਿਲੇ ਦਾ ਕਿਹਾ ਗਿਆ ਪਾਣੀ ਦੇ ਵਿੱਚ ਲਾਈਫ ਹੈਗੀ ਹੈ ਲੇਕਿਨ ਔਰ ਇਹ ਪਾਣੀ ਜੀਵ ਵੀ ਕਰਦਾ ਜੇ ਤੁਹਾਡੀ ਉਂਗਲ ਜੇ ਕਿਤੇ ਕੱਟ ਲੱਗ ਗਿਆ ਸਰੀਰ ਤੇ ਇੱਕਦਮ ਉਹ ਬਲੱਡ ਜਿਵੇਂ ਉੱਪਰ ਹੌਲੀ ਹੌਲੀ ਉਹ ਹੀਲ ਕਰ ਦਿੰਦਾ ਤਾਂ ਹੁਣ ਤਾਂ ਇੱਕ ਥਿਊਰੀ ਇੱਕ ਸਟੱਡੀ ਇਹ ਚੱਲ ਰਹੀ ਹੈ ਮੈਂ ਜਾਣਾ ਸਮਿਲਾ ਰਿਹਾ ਟੈਂਡ ਕਰਨਾ ਸਪੈਸ਼ਟਰੀਆ ਉਹ ਕਹਿੰਦੇ ਕਿ ਵਾਟਰ ਇਟਸੈਲਫ ਇਜ਼ ਅ ਹੀਲਰ ਪਾਣੀ ਬਹੁਤ ਕੁਝ ਹੀਲ ਕਰ ਸਕਦਾ ਪਰ ਜੇ ਪਾਣੀ ਦੀ ਲਾਈਫ ਫੋਰਸ એનર્ਜੀ ਜ਼ਿਆਦਾ ਹੋਵੇ ਜਿਵੇਂ ਇੱਕ ਸਾਇੰਟਿਸਟ ਹੋਇਆ ਬਾਬਿਸ ਉਹ ਕਹਿੰਦਾ ਜੇ ਪਾਣੀ ਦੀ ਬਾਬਿਸ ਯੂਨਿਟ 600 ਤੋਂ ਘੱਟ ਆ ਤੇ ਬੋਡੀ ਫ੍ਰੈਂਡਲੀ ਨਹੀਂ ਹੈ ਪਾਣੀ ਦੀ ਬਾਬਿਸ ਯੂਨਿਟ ਬਹੁਤ ਲੱਖ ਤੋਂ ਉੱਪਰ ਹੋਣੀ ਚਾਹੀਦੀ ਹੈ ਸੋ ਇੰਨੇ ਜ਼ਿਆਦਾ ਸਾਇੰਟਿਫਿਕ ਜਾਣਾਲੇ ਤਾਂ ਵੀ ਕਈ ਸੁਣਨਾਂ ਵਾਲੇ ਕਹਿੰਦੇ ਹੁੰਦੇ ਨੇ ਕਿ ਟੂ ਮੱਚ ਹੋ ਗਿਆ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਹਾਂ ਕਿ ਸਭ ਕੁਝ એનર્ਜੀ ਹੈ ਇਸੇ ਤਰੀਕੇ ਨਾਲ ਜਿਹੜਾ ਪਤਾਲੇ ਵੀ ਕਦੇ ਗੱਲ ਕੀਤੀ ਹੈ ਜੇ ਸਭ ਕੁਝ એનર્ਜੀ ਹੈ ਤੇ ਮੇਰੇ ਆਸ-ਪਾਸ ਵੀ ਲਾਈਟ ਕ੍ਰੀਏਟ ਹੁੰਦੀ ਹੈ ਜਿਹਨੂੰ ਔਰਾ ਜਿਹਨੂੰ ਆਬਾ ਬੰਡਲ ਕਹਿੰਦੇ ਆ ਉਹ ਨੌਤਕੇ ਦੇਖਿਆ ਗਿਆ ਕਿ ਜਿੰਦੇ ਬੰਦ 2.8 ਮੀਟਰ ਦਾ ਹੁੰਦਾ ਜਦੋਂ ਮਰ ਜਾਂਦਾ 1 ਮੀਟਰ ਦਾ ਰਹਿ ਜਾਂਦਾ ਜਾਂ ਜੇ ਕੋਈ ਕੈਂਸਰ ਪੇਸ਼ੈਂਟ ਦਾ 1 ਮੀਟਰ ਤੋਂ ਉੱਪਰ ਦਾ ਨਹੀਂ ਹੁੰਦਾ ਨਾਪਿਆ ਜਾ ਸਕਦਾ ਇਹ ਫੋਟੋਆਂ ਖਿੱਚੀਆਂ ਜਾ ਸਕਦੀਆਂ ਹਨ ਕਿ ਕੈਰੀਲੀਨ ਕੈਮਰ ਨੇ ਬਹੁਤ ਕੁ ਜੇ ਹਰ ਸੂਖਮ ਲੈਵਲ ਦੇ ਉੱਪਰ ਆਪਾਂ ਨੂੰ ਪਾਣੀ ਹੁਣ ਅੱਜ ਤੁਸੀਂ ਪਾਣੀ ਗੰਦਾ ਪੀਂਦੇ ਤੇ ਅੱਜ ਤਾਂ ਨਹੀਂ ਬਿਮਾਰ ਹੋ ਜਾਂਦਾ ਹਮ ਕਿਤੇ ਮਹੀਨੇ 6 ਮਹੀਨੇ ਸਾਲ ਦੋ ਸਾਲ 20 ਸਾਲ 25 ਸਾਲ ਹੁਣ ਇੰਡੀਆ ਚ ਕੋ ਸਾਰੇ ਮਾੜਾ ਪਾਣੀ ਹੈ ਕੋ ਸਾਰੇ ਇੱਕੋ ਜਿਹਾ ਕੋਰਾ ਤੋਰਾ ਸਾਰੇ ਸਰੀਰ ਛੱਡ ਗਏ ਇਹ ਚੀਜ਼ਾਂ ਸਿਰੋ ਇਫੈਕਟ ਕਰਦੀਆਂ ਹੁਣ ਜੇ એનર્ਜੀ ਪਾਣੀ ਦੀ ਹੌਟ ਪ੍ਰੋਸੈਸ ਪਾਣੀ ਦਾ ਇਹ ਸਾਨੂੰ ਇਸ ਤਰੀਕੇ ਨਾਲ ਇਫੈਕਟ ਕਰਦਾ ਪਿਆ ਐਮ ਆਈ ਟੀ ਦੇ ਵਿੱਚ ਵੀ ਸਟੱਡੀ ਚੱਲ ਰਿਹਾ ਪਾਣੀ ਕੋਲ ਪੋਜ਼ਿਟਿਵ 네ਗੇਟਿਵ ਆਇੰਸ ਹਰ ਸਾਲ ਚ ਪੋਜ਼ਿਟਿਵ ਵਰ ਨੈਗੇਟਿਵ ਆਇਨਾ ਜੇ ਤੁਸੀਂ ਕੋਈ ਚੀਜ਼ ਇਹੇ ਜੀ ਅੰਦਰ ਸੁੱਟ ਦਿਓ ਖਾਸ ਕੋਈ ਇਹੇ ਜੀ ਮੈਡੀਸਿਨਸ ਸੁੱਟ ਦਿਓ ਜਿਹੜੀ ਕਿ ਮੋਲੀਕਿਊਲ ਦੀ ਪੋਲੈਰਿਟੀ ਡਿਸਟਰਬ ਕਰ ਦਿੰਦੀ ਆ ਉਹਨੇ ਤੁਹਾਡੇ ਕ੍ਰੀਏਟ ਕਰਨੀ ਕਰਨੀ ਜੋ ਊਡ ਬੀ ਅ ਡਿਜ਼ੀਜ਼ ਸੰਦੇਸ਼ ਲੈ ਲੀਏ ਬਾਪ ਸੌਣਿਆ ਜੀ ਗੁਰਜਤ ਸਿੰਘ ਉਹਨੇ ਗੱਲਬਾਤ ਕਰ ਰਹੇ 604 721 1004 એનર્ਜੀ ਬੇਸਡ ਇਹ ਗੱਲਾਂ ਆ ਤੁਹਾਨੂੰ ਇਹਦੇ ਚ ਸਮਝ ਜਿੰਨੀ ਕਿ ਲੱਗਦੀ ਆ ਹੋਰ ਉਹਦੇ ਬਾਰੇ ਜਾਣਕਾਰੀ ਲੈਣੀ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ ਪਲੀਜ਼ ਫੇਰ ਅੰਜੇ ਮੈਂ ਕਈ ਵਾਰ ਤੁਸੀਂ ਡਿਸਪਾਇੰਟਡ ਹੋ ਕੇ ਦੱਸਦੇ ਹਾਂ ਔਨ ਇਅਰ ਪਿਛਲੀ ਵਾਰ ਇੱਕ ਭੈਣ ਜੀ ਨੇ ਗੱਲ ਦੱਸੀ ਸੀ ਉਹ ਜਿਹਾ ਨਾ ਕਰਦੇ ਹੋ ਕੋਈ ਵੀ ਚੀਜ਼ ਤੁਸੀਂ ਖਰੀਦਦੇ ਹੋ ਕਿਤੇ ਉਹ ਤੁਹਾਡਾ ਆਪਣਾ ਉਹਦੇ ਤੇ ਸੁਭਾਅ ਹੈ ਤੇ ਤੁਸੀਂ ਆਪਣੇ ਤਰੀਕੇ ਨਾਲ ਉਹਦੀ ਪਰਚੋਲ ਕਰਨੀ ਹੈ ਤੇ ਫਿਰ ਉਸ ਲਾਗੂ ਕਰਨਾ ਕੋਈ ਚੀਜ਼ਾਂ ਠੀਕ ਰਹਿੰਦੀਆਂ ਕੋਈ ਚੀਜ਼ ਠੀਕ ਨਹੀਂ ਰਹਿੰਦੀ ਸੋ ਇਹ ਉਸ ਦਿਨ ਉਹਨਾਂ ਦਾ ਗੁੱਸਾ ਜਿਹੜਾ ਜਾਇਜ਼ ਸੀ ਫਿਰ ਉਹਨਾਂ ਨੇ ਤੇ ਵੀ ਮੈਨੂੰ ਦੱਸਿਆ ਪਰ ਫਿਰ ਵੀ ਮੈਂ ਫਿਰ ਇੱਥੇ ਕਹਿੰਦਾ ਕਈ ਪ੍ਰਮੋਟ ਕਰਦੇ ਹਾਂ ਅਸੀਂ ਇਹ ਪੇੜ ਪ੍ਰੋਗਰਾਮ ਦੇ ਵਿੱਚ ਗਰਜਸਿੰਗ ਉਹਨੇ ਆਪਣੀ ਫਿਲਾਸਫੀ ਦੱਸਦੇ ਆ ਤੁਹਾਨੂੰ ਠੀਕ ਲੱਗਦੀ ਹੈ ਉਹਨੂੰ ਇੰਪਲੀਮੈਂਟ ਕਰੋ ਨਹੀਂ ਠੀਕ ਲੱਗਦੀ ਉਹਨੂੰ ਨਾ ਕਰੋ ਜਿਵੇਂ ਹੋਰ ਪੇੜ ਪ੍ਰੋਗਰਾਮ ਨੇ ਸਾਰੀਆਂ ਚੀਜ਼ਾਂ ਸਾਡੇ ਕਹੇ ਤੇ ਤਾਂ ਤੁਸੀਂ ਖਰੀਦਦੇ ਨਹੀਂ ਪਰ ਬਿਜ਼ਨਸ ਦੇ ਵਿੱਚ ਜਿਸ ਤਰ੍ਹਾਂ ਬਾਕੀ ਪੇੜ ਪ੍ਰੋਗਰਾਮ ਨੇ ਕੋਈ ਆਪਣਾ ਪ੍ਰੋਡਕਟ ਦੇ ਬਾਰੇ ਗੱਲਬਾਤ ਕਰਨੀ ਚਾਹੁੰਦਾ ਉਹਨਾਂ ਨੂੰ ਓਪਰਚੁਨਿਟੀ ਦੇਣੀ ਸਾਡਾ ਫਰਜ਼ ਹੈ ਬਿਲਕੁਲ ਜੀ ਕੋਈ ਤੇਲ ਵੇਚਦਾ ਕੋਈ ਇੰਸ਼ੋਰੈਂਸ ਮਿੰਟ ਹੋਏ ਨੇ ਗੁਰਜਤ ਸਿੰਘ ਗੋਣੀ ਮੇਰੇ ਨਾਲ ਨੇ ਅੱਛਾ ਭਾਈ ਜੀ ਮੈਨੂੰ ਇਹੋ ਦੱਸੋ ਪ੍ਰੈਕਟੀਕਲ ਆਪਾਂ ਗੱਲ ਕਰੀਏ ਜਰਮਨੀ ਦੇ ਵਿੱਚ ਤੇ ਆਸਟ੍ਰੇਲੀਆ ਦੇ ਵਿੱਚ ਇਹਦੀ ਪ੍ਰੈਕਟਿਸ ਹੁਣ ਕਿੰਨੀ ਕੁ ਹੋ ਰਹੀ ਹੈ ਇਹ ਲੋਕ ਇਹਨੂੰ ਕਿਉਂਕਿ ਇੱਥੇ ਜਦ ਨਵੀਂ ਚੀਜ਼ ਹੈ ਇਸ ਨੂੰ ਮੰਨਣੋ ਲੋਕ مانندے نے یا نہیں مانندے نوما ایک ویشا پر شروع کیتا 2 مہینے پہلا اوتھے کس طرح دی اے پریکٹس ہے کتنا ک لوک کردے ہیں دیکھو جی میں تا ایتھے تک سنا میرا کزن رہندا ہے اک اوتھے میں تا خود وی گیا ہاں کئی کئی کرتے ہیں جیہڑے دا پہلا کوسچن ਤੁਸੀਂ ای چیزاں میں نہیں کہہ رہا نو گوگل کرو پڑھو کر کے ڈاکٹر جو اینتھا انفارمیشن پہ یا ڈونٹ ٹرسٹ می وہ پہلا کوسچن ہی جا کے پوچھدے ہیں بندے نوں کہ بی تو تیرا سوندا کتھے ہے جی خاص کر جے کوئی سیریس ڈیزیز ਉਹ ਕੰਮ ਇਹ ਪਹਿਲੇ ਬੋ ਡਾਇਓਲੋਜਿਸਟ ਬੋਲਦੇ ਐ ਇਸ ਕੰਮ ਨੂੰ ਉਹ ਬੋ ਡਾਇਓਲੋਜਿਸਟ ਨੂੰ ਹਾਇਰ ਕਰਦੇ ਐ ਕਹਿੰਦੇ ਪਹਿਲੇ ਇਹ ਕਰ ਜੀਓਪੈਥਿਕ ਸਟ्रेस ਚੈੱਕ ਕਰਕੇ ਮੇਰੀ ਕੋਸ਼ਿਸ਼ ਜਾਰੀ ਹੈ ਇੰਡੀਆ ਤੋਂ ਅੱਛਾ ਤੁਹਾਨੂੰ ਬੜੀ ਉਹ ਤਾਂ ਕਾਹੀ ਰਹੇ ਕਿ ਇੱਕ ਬੰਦਾ ਹੈਗਾ ਜਿਹੜਾ ਕਿ ਕੈਂਸਰ ਸਰਵਾਈਵਰ ਹੈਗਾ ਉਹਦਾ ਮੇਰੀ ਗੱਲਬਾਤ ਚੱਲ ਰਹੀ ਹੈ ਚੰਦਰਸ਼ੇਖਰ ਕਰਕੇ ਜਿੱਦਾਂ ਕੋਈ ਟਾਈਮ ਹੋਵੇ ਤੁਹਾਡੇ ਪ੍ਰੋਗਰਾਮ ਤੇ ਲੈ ਕੇ ਆਉਂਗਾ ਤੁਹਾਨੂੰ ਪਹਿਲੇ ਸਾਰੀ ਈਮੇਲ ਕਰੂਗਾ ਆਪਣੀ ਰਿਪੋਰਟਾਂ ਤੇ ਬਾਅਦ ਤੁਹਾਨੂੰ ਦੱਸ ਇਦਾਂ ਮੇਰੇ ਕੋਲ ਇੱਕ ਹੋਰ ਜਿਹੜੇ ਜਿਹੜੇ ਕੇਸ ਵੀ ਜਗੇ ਆ ਮੈਂ ਤੁਹਾਡੇ ਪ੍ਰੋਗਰਾਮ ਤੇ ਲੈ ਕੇ ਆਉਂਗਾ ਜਿਹੜੀ ਪੂਰੀ ਕੋਸ਼ਿਸ਼ ਚੱਲ ਰਹੀ ਲੱਗੇ ਕੇ ਆਵਾਂ ਸੋ ਉਹ ਬਹੁਤ ਬਾਰੇ ਬੋਲ ਦਿੰਦੇ ਵੀ ਜਾ ਕੇ ਪਹਿਲੇ ਇਸ ਘਰ ਦੇ ਵਿੱਚੋਂ ਜੀਓਪੈਥਿਕ ਸਟ੍ਰੈਸ ਦੂਰ ਕਰ ਕਿਉਂਕਿ ਜੇ ਉਹ ਰਿਹਾ ਤੇ ਰਿਕਵਰੀ ਵੀ ਚਾਹੇ ਸੀ ਮੈਡੀਕਲ ਦੰਦੇ ਵੀ ਰਹੇ ਰਿਕਵਰੀ ਵੀ ਸਲੋ ਹੋਊਗੀ ਔਰ ਮੈਡੀਸਨ ਦਾ ਅਸਰ ਘੱਟ ਹੁੰਦਾ ਪਹਿਲੇ ਇਸ ਘਰ ਦੀ એનર્ਜੀ ਹਿਊਮਨ એનર્ਜੀ ਦੇ ਤਾਂ ਜੇ ਜੋ ਵੀ ਹੋ ਜਾਏ ਉਹ ਕਿਸੇ ਵੀ ਕ੍ਰੋਨਿਕ ਡਿਜ਼ੀਜ਼ ਵਿੱਚ ਪਹਿਲੇ ਚੈੱਕ ਕਰਵਾਉਂਦੇ ਆ ਫਿਰ ਬਾਅਦ ਵਿੱਚ ਆਪਣਾ ਰੈਗੂਲਰ ਕੋਰਸ ਸ਼ੁਰੂ ਕਰਦੇ ਆਪਣੇ ਅੰਦਰ ਨਹੀਂ ਗਏ ਤਾਂ ਸਿੱਧਾ ਤੱਕ ਲਿਖਣਾ ਸ਼ੁਰੂ ਕਰ ਦਿੱਤਾ ਯੂ ਸੋ ਉਹ ਕਾਫੀ ਪ੍ਰਚਲਿਤ ਪ੍ਰੈਕਟਿਸ ਹੈਗੀ ਹੈ ਇਸੇ ਤਰ੍ਹਾਂ ਦੇਖੋ ਅਖਬਾਰ ਚ ਆਰਟੀਕਲ ਸੀ ਤੁਹਾਨੂੰ ਪੜ੍ਹਾਉਂਗਾ ਮੌਕਾ ਮਿਲਿਆ ਤੇ ਬੰਬੇ ਪੁਨੇ ਹਾਈਦਰਾ ਉੱਪਰ ਉਹ ਇੱਕ ਰਿਸਰਚ ਕਰ ਰਹੇ ਆ ਬੰਬੇ ਪੁਨੇ ਹਾਈਦਰਾ ਜਿਹੜੇ ਮੈਕਸਿਮਮ ਐਕਸੀਡੈਂਟ ਪ੍ਰੋਨ ਏਰੀਆਜ਼ ਹੈਗੇ ਆ ਬਹੁਤ ਐਕਸੀਡੈਂਟ ਇੱਕ ਜਗ੍ਹਾ ਤੇ ਹੁੰਦੇ ਆ ਹਾਂ ਇੱਕ ਜਗ੍ਹਾ ਦੇ ਉੱਥੇ ਉਹਨੇ ਸਟੱਡੀ ਕੀਤੀ ਆ ਵੀ ਉਹਨੇ ਪਤਾ ਨਹੀਂ 40 ਮਾਰਕ ਕੀਤੇ ਆ ਸਾਰੇ 83 93 ਕਿਲੋਮੀਟਰ ਆਈਪੀ ਦੇ ਉੱਪਰ ਕਿ ਨਹੀਂ ਪਤਾ 14 ਛੇ ਸਮਥਿੰਗ ਐਗਜ਼ੈਕਟ ਨੰਬਰ ਯਾਦ ਨਹੀਂ ਜਿੱਥੇ ਕਿ ਡਰਾਈਵਰ ਕਹਿੰਦੇ ਸੀ ਬਲੈਂਕ ਹੋ ਗਿਆ ਜਿਹੜਾ ਐਕਸੀਡੈਂਟ ਹੋਇਆ ਬਲੈਂਕ ਹੋ ਗਿਆ ਸੀ ਉੱਥੇ ਉਹਨਾਂ ਨੇ ਜੀਓਫਿਜ਼ਿਕਸ ਸਟ੍ਰੈਸ ਚੈੱਕ ਕਰਨਾ ਸ਼ੁਰੂ ਕੀਤਾ ਉੱਥੇ ਇਹ ਇੱਕ ਮੇਰੀ ਬਣਾਈ ਦੀ ਗੱਲ ਨਹੀਂ ਕੋਈ ਪੜ ਸਕਦਾ ਉੱਥੇ ਉਹਨਾਂ ਨੇ ਕਈ ਪੁਆਇੰਟਸ ਤੇ ਉਹ ਦੂਰ ਕੀਤਾ ਪਰ ਕਿਉਂਕਿ ਐਨ ਲਾਰਜ ਸਕੇਲ ਤੇ ਕਰਨਾ ਤਾਂ ਬੀ ਵੈਰੀ ਉਸ ਜਗ੍ਹਾ ਤੋਂ ਉਹਨਾਂ ਨੇ ਦੂਰ ਕੀਤਾ ਔਰ ਉਹਨਾਂ ਦੇ ਰਿਜ਼ਲਟ ਦੇ ਫਾਈਂਡ ਆਊਟ ਦਿੱਤੇ ਕਿ ਰੇਟ ਐਕਸੀਡੈਂਟ ਕਰ ਜਿਹੜੀ ਬ੍ਰੈਂਕਨੈਸ ਹੁੰਦੀ ਸੀ ਉਹ ਨਹੀਂ ਹੁੰਦੀ ਸੀ ਸੋ ਉਹਨਾਂ ਨੇ ਅਗੇਨ ਇਹਨੂੰ ਮਿਸਕੋਟ ਨਾ ਕਰੇ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਕਿ ਦਿਸ ਇਜ਼ ਦੀ ਓਨਲੀ ਰੀਜ਼ਨ ਉਹ ਕਹਿ ਵਨ ਆਫ ਦੀ ਰੀਜ਼ਨਸ ਇਹ ਵੀ ਇੱਕ ਰੀਜ਼ਨ ਆ ਸਾਨੂੰ ਉੱਥੋਂ ਦੀ ਉਹ એનર્ਜੀ ਪ੍ਰੋਪਰਟ ਕਰਨੀ ਚਾਹੀਦੀ ਹੈ ਗਵਰਨਮੈਂਟ ਦਾ ਥੋੜਾ ਖਰਚੀ ਵੀ ਹੋ ਜਾਂਦਾ ਫਰਕ ਇਹਨਾਂ ਆ ਕਿ ਉਹਨਾਂ ਕੰਟਰੀਆਂ ਚ ਜਰਮਨੀ ਮਲੇਸ਼ੀਆ ਅਸੀਂ ਕੋਈ ਨਵਾਂ ਐਕਸਪੈਰੀਮੈਂਟ ਕਰ ਸਕਦੇ ਆ ਅਸੀਂ ਕਰਦੇ ਆ ਇੱਥੇ ਕੀ ਹੁੰਦਾ ਕਿ ਅਸੀਂ ਕੋਈ ਨਵਾਂ ਐਕ ਅਸੀਂ ਜੇ ਕਹੇ ਵੀ ਕਿ ਤੱਕ ਦੇਖੋ ਗੱਲਾਂ ਸਾਰੇ ਬ੍ਰਹਮ ਗਿਆਨ ਦੀਆਂ ਕਰਦੇ ਨੇ ਗੁੱਸਾ ਨਾਲ ਵੀ ਕਰੇ ਗੱਲ ਦਾ ਗੱਲਾਂ ਸਾਰੇ ਬ੍ਰਹਮ ਗਿਆਨ ਦੀ ਕਰਦੇ ਆ 100 ਡਾਲਰ ਪਿੱਛੇ ਮਰਨ ਮਰਨ ਨੂੰ ਤਿਆਰ ਹੋ ਜਾਂਦੇ ਆ ਉਹ ਸਾਰਾ ਬ੍ਰਹਮ ਗਿਆਨ ਭੁੱਲ ਜਾਂਦਾ ਹਣਾ ਉਦੋਂ ਜੀ ਇਹ ਹੋ ਗਿਆ ਔਰ ਹਰ ਬੰਦਾ ਨੈਗੇਟਿਵਿਟੀ ਜੀ ਇੰਟਰਸਟ ਲੈਂਦਾ ਕਿ 100 ਚੰਗੇ ਕੰਮ ਹੋਏ ਆ ਮੈਂ ਜੇ ਕਿਸੇ ਦੇ ਘਰ ਗਿਆ ਉਹ ਕਹਿੰਦਾ ਮਨ ਭੂਤ ਪ੍ਰੇਤ ਨਜ਼ਰ ਆਉਂਦੇ ਆ ਘਰ ਇੰਨਾ ਗੰਦਾ ਕਿ ਪੈਰ ਰੱਖਣ ਦੀ ਜਗ੍ਹਾ ਨਹੀਂ ਮੈਂ ਕਹਿੰਦੀ ਘਰ ਸਾਫ਼ ਕਰ ਦਿਓ ਤੁਹਾਡੇ ਕੋਲ ਟਾਈਮ ਨਹੀਂ ਜੀ ਤੇ ਇਹ ਵਨ ਬਈ ਉਹ ਘਰ ਸਾਫ ਕੰਦਰ ਟਾਈਮ ਨਹੀਂ ਇੰਨਾ ਗੰਦਾ ਘਰ ਆ ਭੂਤ ਭਰੇਤ ਮੈਨੂੰ ਆਉਂਦੇ ਮੈਂ ਕਿਹਾ ਭਾਈ ਸਾਹਿਬ ਨਾਮ ਪੰਜੀ ਨਾਮ ਹੈ ਤੰਤਰੀਕਾ ਨਾਮ ਨੂੰ ਤੰਤਰ ਮੰਤਰ ਜੰਤਰ ਤੇ ਕੋਈ ਮੇਰਾ ਕੋਈ ਵਿਸ਼ਵਾਸ ਨਹੀਂ ਹੈ ਨਹੀਂ ਮੇਰਾ ਭੂਤ ਦੇਤਾਂ ਦੇ ਵਿਸ਼ਵਾਸ ਹੈ ਤੁਸੀਂ ਜਾਂ ਤਾਂ ਫੇਕ ਟ੍ਰਿਕ ਨਹੀਂ ਦਿਹਾਲੋ ਇਹ ਨਹੀਂ ਨਹੀਂ ਮਰਜੀ ਤੁਸੀਂ ਫੇਰ ਵੀ ਟਿਕ ਕਰ ਦੋ ਦੇਖੋ ਇਹਨਾਂ ਚੀਜ਼ਾਂ ਨਾਲ ਮੈਂ ਬਾਰ ਬਾਰ ਕਹਿੰਦਾ ਇਹਨਾਂ ਚੀਜ਼ਾਂ ਨਾਲ ਨਾ ਕੋਈ ਭੂਤ ਭਰੇਤ ਦੌੜ ਜਾਣੇ ਇਹਨਾਂ ਕੁਝ ਇਹ ਇੱਦਾਂ ਜਿਹੜਾ ਸ਼ਰਾਬ ਨਾਲ ਪੀਣ ਵਾਲਾ ਬੰਦਾ ਜ਼ਿਆਦਾ ਟਾਈਮ ਕੱਢ ਜਿੰਦਾ ਪੋਜ਼ਿਟਿਵ એનર્ਜੀ ਹੋਏਗੀ ਯੂ ਵਿਲ ਲਿਵ ਹੈਪੀ ਕਈ ਪੋਜ਼ਿਟਿਵ ਚੀਜ਼ਾਂ ਤੁਹ longer range ਜਦ ਮੈਂ ਕਹਿੰਦਾ ਇਲੈਕਟ੍ਰੋਮੈਗਨੈਟਿਕ ਫੀਲਡ ਹੁਣ ਬੰਬੇ ਦੇ ਵਿੱਚ ਕਾਨਫਰੰਸ ਹੋ ਰਹੀ ਹੈ 26 ਕੰਟਰੀਸ ਤੋਂ ਲੋਕ ਆ ਰਹੇ ਆਂ ਜੈਟ ਵਟ ਡਰ ਗੋਇੰਗ ਹੋ ਚੁੱਕੀ ਹੈ ਉਹ ਕਹਿੰਦਾ ਸੀ ਮਨ ਦੋਸਤ ਸੈਰ ਇੱਕੋ ਹੀ ਡਿਸਕਸ਼ਨ ਹੋਣੀ ਹੈ ਜਿਹੜੇ ਇਲੈਕਟ੍ਰੋਮੈਗਨੈਟਿਕ ਫੀਲਡ ਹੈ ਔਰ ਇਹ ਹੈ ਜਿਹੜਾ ਸਭ ਥਾਟ ਪ੍ਰੋਸੈਸਰ ਜਿਹੜੇ એનર્ਜੀ ਜਿਹੜੇ ਘਰਾਂ ਚ ਭਰੇ ਨੇ ਉਹ ਕਿੱਦਾਂ ਇਹ ਸੱਤ ਕਰਦੇ ਦੁਨੀਆ ਕਰ ਰਹੀਏ ਕੰਮ ਉਹ ਤੇ ਪਰ ਆਪਾਂ ਲੋਕ ਸ਼ਾਇਦ ਰੋਜ਼ਮਰਾਂ ਤੋ ਜਿਹੜੀ ਰੋਜ਼ਮਰਾਂ ਦੀ ਤੇਜ਼ ਜ਼ਿੰਦਗੀ ਆ ਇਸ ਨੂੰ ਜਗ੍ਹਾ ਹੈ ਨਹੀਂ ਇਹਦੇ ਕਰਕੇ ਲੋਕ ਡਿਸਪੁਆਇੰਟ ਹੋ ਰਹੇ ਨੇ ਕਿਉਂਕਿ ਇਹ ਮੈਂ ਹੁਣ ਬਿਮਾਰ ਆ ਮੈਂ ਤਾਂ ਜਦੋਂ ਡਾਕਟਰ ਤੇ ਜਾਣਾ ਦਵਾਈ ਲਈ ਟੀਕਾ ਲਾਇਆ ਠੀਕ ਕਿਉਂਕਿ ਇਹ ਸਮਾਂ ਲੱਗਦਾ ਇਸ ਚੀਜ਼ ਦੇ ਵਿੱਚ ਪਰ ਉਦੋਂ ਤੋਂ ਪਹਿਲਾਂ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਤਾਂ ਤੁਸੀਂ ਕਰ ਸਕੋ ਉਸ ਤੋਂ ਪਹਿਲੇ ਗੱਲ ਸਮਝਣ ਨੂੰ ਤਿਆਰ ਰੱਖੋ ਮਾਈਂਡ ਓਪਨ ਰੱਖੋ ਮਾਈਂਡ ਨੂੰ ਬਿਲਕੁਲ ਓਪਨ ਰੱਖੋ ਜੇ ਮੇਰੇ ਨਾਲ ਗੱਲ ਕਰ ਰਹੇ ਹੋ ਤਾਂ ਮੇਰੇ ਨਾਲ ਗੱਲ ਕਰਨਾ ਮਤਲਬ ਇਹ ਕਿ ਯੂਰੋਪ ਲਾਈਜ਼ ਕੰਮ ਕਰਨਾ ਹੀ ਹੈ ਗੱਲ ਸਮਝੋ ਹਣਾ ਜਿੰਨ ਮੈਡੀਟੇਸ਼ਨ ਸੈਟਰਡੇ ਕਰਦਾ ਹੈਗਾ ਮਿੱਤਰਾਂ ਨੂੰ ਕਹਿੰਦਾ ਆਓ ਆਓ ਗੱਲ ਸਮਝੋ ਕੋਈ ਛੇਤੀ ਕਰਨ ਦੀ ਲੋੜ ਨਹੀਂ ਹੈ ਲੇਕਿਨ ਜਦੋਂ ਮਨ ਨੂੰ ਗੱਲ ਸਮਝ ਆਵੇ ਉਦੋਂ اٹਕਣ ਦੀ ਲੋੜ ਨਹੀਂ ਹੁੰਦੀ ਔਰ ਮੈਰਕਲ ਦੀ ਉਮੀਦ ਤਾਂ ਕਦੇ ਕਰਨੀ ਹੋਈ ਇਸ ਦੁਨੀਆ ਵਿੱਚ ਇੱਕ ਇੱਕ ਮੈਂ ਸੰਤ ਨੂੰ ਪੜਦਾ ਸੀ ਉਹ ਕਹਿੰਦਾ ਦੁਨੀਆ 'ਚ ਕਦੇ ਕੋਈ ਚਮਤਕਾਰ ਨਹੀਂ ਹੋਇਆ ਸਿਰਫ ਚਮਤ ਜਿਹੜੀ ਵੀ ਚੀਜ਼ ਨੂੰ ਚਮਤਕਾਰ ਲੱਗਦੀ ਹੈ ਉਹ ਚੀਜ਼ ਹੈ ਜਿਹਦੀ ਤੁਹਾਨੂੰ ਨੌਲੇਜ ਨਹੀਂ ਚੀਜ਼ਾਂ ਸਾਰੀਆਂ ਸਿਸਟਮ ਨਾਲ ਹੀ ਹੁੰਦੀਆਂ ਇਹ ਜਸਤੀ ਜਸਾਰੇ ਸਿਸਟਮ ਨਾਲ ਹੀ ਹੁੰਦੀਆਂ ਹੁਣ ਜੇਕਰ ਕੋਈ ਕਹਿੰਦਾ ਹੈਗਾ ਵੀ ਇਹ ਸੂਰਜ ਈਸਤੋਂ ਨਿਕਲਦਾ ਵੈਸਟ ਵੱਲ ਜਾਂਦਾ ਤੇ ਜਦ ਸੂਰਜ ਸੂਰਜ ਨਿਕਲਦਾ ਕਈ ਲੋਕ ਸਵੇਰੇ ਸਵੇਰੇ ਯੂਵੀ ਇੰਡੈਕਸ 1 ਤੋਂ ਘੱਟ ਹੋਵੇ ਉਹ ਕਹਿੰਦੇ ਦੇਖੋ ਕਈ ਕਈ ਕਈ ਫੋਰ ਅਗੇ ਕਈ ਅਗੇਂਸਟ ਹੈ ਉਹ ਮੇਰਾ ਇੱਕ ਦੋਸਤ ਆ ਉਹ ਵੀ ਉਤਰ ਗਿਆ ਮੈਨੂੰ ਤਾਂ ਨਹੀਂ ਦਿਖਦਾ ਲੱਗਦੀ ਮੇਰੀ ਅੱਖ ਲੱਗੀ ਹੋਈ ਆ ਉਹ ਕਹਿੰਦਾ ਵੀ ਯੂਵੀ ਇੰਡੈਕਸ ਘੱਟ ਹੋਵੇ ਸਵੇਰ ਨੂੰ ਦੇਖੋ ਤੇ ਇੱਕ ਚੰਗਾ ਚੰਗੀ ਇਸ ਤਰ੍ਹਾਂ ਸੂਰਜ ਨਿਕਲਦਾ ਉਸ ਟਾਈਮ એનર્ਜੀ ਇਹੋ ਜੀ ਹੁੰਦੀ ਹੈ ਉਹ ਉਹਦੀ ਇੱਕ ਵਾਰ ਐਕਸਪੀਰੀਅੰਸ ਹੈ ਇੱਕ ਇੱਕ ਕਰਨਾ ਚਾਹੁੰਦਾ ਮਾਈਂਡ ਵੀ ਕਲੋਜ਼ ਰੱਖਿਆ ਨਾ ਕੀਤਾ ਨਾ ਕਰਨਾ ਚਾਹੁੰਦਾ ਫਲਾਣੇ ਨੇ ਇਹ ਕਹਿੰਦਾ ਫਲਾਣੇ ਨੇ ਉਹ ਕਹਿੰਦਾ ਮੇਰੀ ਆਦਤ ਹੈ ਭਾਜੀ ਚਾਹੇ ਉਹ ਅਧਿਆਤਮ ਹੋਵੇ ਚਾਹੇ ਇਹ ਇਹ ਦਾ ਫੀਲਡ ਹੋਵੇ ਘਰਾਂ ਵਿੱਚ એનર્ਜੀ ਤੁਹਾਨੂੰ ਇਫੈਕਟ ਕਰਦੀ ਹੈ ਤੁਸੀਂ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਮੇਰਾ ਅਨੁਭਵ 6047211004 ਗੁਰਜਤ ਸਿੰਘ ਉਹਨਾਂ ਦਾ ਨੰਬਰ ਹੈ ਅਕੀਰ ਦੇ ਵਿੱਚ 10 ਸੈਕਿੰਡ ਹੋਰ ਸਰਜੂਰੀ ਨੰਬਰ 323687211004 ਐਲੀਸੀਆ E L Y S I A e n e energy.com میری ویب سائٹ ہے ਉੱਥੇ ਤੁਸੀਂ ਜਾ ਕੇ پڑھ ਸਕਦੇ ਹੋ اور جو فون چپس ਕੇ اچھا ਸਤਿ ਸ਼੍ਰੀ ਅਕਾਲ ਦਾ ਨੰਬਰ ਹੈ ਮੈਂ ਫੇਰ ਇੱਥੇ ਬੇਨਤੀ ਕਰਾਂ ਕਿ ਤੁਸੀਂ ਆਪ دریاਪਤ ਕਰਕੇ ਫੇਰ ਉਹਨਾਂ ਨਾਲ ਗੱਲਬਾਤ ਕਰਕੇ ਜੇ ਤੁਹਾਨੂੰ ਚੀਜ਼ ਓਕਾਟ ਕਰਦੀ ਹੈ ਮੰਨਦੇ ਹੋ ਤੁਸੀਂ ਤੁਹਾਡੇ ਦਿਮਾਗ ਤੇ ਗੱਲ ਚੜਦੀ ਹੈ ਤਾਂ ਫੇਰ ਉਹਨਾਂ ਨੂੰ ਤੁਸੀਂ ਫੋਨ ਕਰਕੇ ਸਬਸਕ੍ਰਾਈਬ ਕਰਦੇ ਜਿਵੇਂ ਬਹੁਤ ਚੀਜ਼ਾਂ ਟਰਾਈ ਅਸਲ ਗੱਲ ਤਾਂ ਇਹ ਹੈ ਜਿਹੜੇ ਸੁਖੀ ਨੇ ਉਹਨਾਂ ਨੂੰ ਕੋਈ ਤੰਗੀ ਨਹੀਂ ਜਿਹੜੇ ਦੁੱਖ ਚ ਨੇ ਉਹ ਤਾਂ ਕੋਈ ਸਵਾਦ ਹੀ ਪੁੜੀ ਵੀ ਕਿਤੇ ਕੋਈ ਕਹੇ ਉੱਥੇ ਨੂੰ ਭੱਜਦਾ ਡਿਪੈਂਡ ਕਰਦਾ ਵੀ ਤੁਸੀਂ ਸਿਚੁਏਸ਼ਨ ਕਿਹੜੀ ਚੋਂ ਤੋਂ ਇਸ ਲਈ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਐਕਸਪਰਟ ਨੇ ਇਸ ਗੱਲ ਦੇ ਨਾਲ ਉਹ ਚੱਲ ਰਹੇ ਨੇ ਜਿਸ ਦਾ ਜਿਹੜਾ ਫੋਨ ਵਾਲੀ ਚਿਪ ਉਦੇ ਬਾਰੇ ਵੀ ਉਹਨਾਂ ਨੇ ਇਸ ਨੂੰ ਅਮਰੀਕਾ ਦੇ ਵਿੱਚੋਂ ਕੈਲੀਫੋਰਨੀਆ ਇੰਸਟੀਚਿਊਟ ਤੋਂ ਚੈੱਕ ਕਰਵਾਇਆ ਤੇ ਉਸ ਗੱਲ ਤੇ ਕਿ ਰੇਡੀਏਸ਼ਨ ਉਹ 90% ਤੱਕ ਘਟਾ ਦਿੰਦੀ ਹੈ ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰਿਓ 600 721 1004 ਤੇ ਫਿਰ ਉਸ ਤੋਂ ਅੱਗੇ ਤੁਹਾਡਾ ਮਨ ਹੋਵੇ ਤੁਸੀਂ ਉਸ ਨੂੰ ਪਰਸਿਊ ਕਰ ਸਕਦੇ ਤੇ ਖਬਰਾਂ ਬੰਦ ਨੂੰ ਮੈਂ ਹੁਣ ਤੁਰਾ ਨਿਊਜ਼ੀਲੈਂਡ ਦੇ ਵਿੱਚ ਘਟਨਾ ਹੋਈ ਹੈ ਕੁਦਰਤ ਜਿਹੜੀ ਹੈ ਨਾ ਉਹ ਬਹੁਤ ਬਲਵਾਨ ਹੈ ਉਹਨੂੰ ਉਸਨੇ ਇਸ ਨੂੰ ਕੀ ਕਰਨਾ ਹੈ ਕਿਹੜੇ ਇਨਸਾਨ ਨੂੰ ਕਿੱਥੇ ਲਿਜਾਣਾ ਕਿਹੜੀ ਜੂਨੀ ਨੇ ਕਿੱਥੇ ਜਾਣਾ ਹੈ ਇੱਕ ਪਾਇਲਟ ਵੇਲਸ ਨੇ ਇਹ ਜਿੰਨੇ ਵੀ ਮਾਮਲਸ ਨੇ ਇਹ ਹਰ ਇੱਕ ਬੰਦੇ ਦਾ ਆਪਣਾ ਆਪਣਾ ਪਿਆਰ ਹੈ ਇਹ ਬਹੁਤ ਮੈਨੂੰ ਚੰਗੇ ਲੱਗਦੇ ਆ ਨਿੱਜੀ ਤੌਰ ਤੇ ਜਿਸ ਤਾ ਸਾਡੀ ਔਰਕਾ ਹੈ ਕਿਲਰ ਵੇਲ ਬਹੁਤ ਇਹ ਜਦ ਕਮਿਊਨੀਕੇਟ ਕਰਦੇ ਆ ਚੀਕਾਂ ਮਾਰਦੀ ਆ ਵਿਸਲ ਮਾਰਦੀ ਆ ਤੇ ਇਹ ਪਾਇਲਟ ਵੇਲਸ ਨੇ ਜਿਹੜੀਆਂ ਡਾਲਫਿਨ ਵਰਗਾ ਇਹਨਾਂ ਦਾ ਮੂੰਹ ਹੈ ਤੇ ਉਹ ਤੋਂ ਵੱਡੀਆਂ ਨਿਊਜ਼ੀਲੈਂਡ ਦਾ ਇੱਕ ਰਿਮੋਟ ਬੀਚ ਹੈ ਉਧਰ ਤੇ 400 ਦੇ ਕਰੀਬ ਇਹ ਵੇਲਸ ਕੰਢੇ ਤੇ ਆ ਗਈਆਂ ਹਾਈ ਕਰਕੇ ਆ ਗਈਆਂ ਅਕਸਰ ਕਿਲਰ ਨੂੰ ਹੰਟ ਕਰਦੇ ਤੁਸੀਂ ਸੀਲਸ ਨੂੰ ਵੇਖਿਆ ਹੋਊਗਾ ਸੀਲ ਦੇ ਪਪਸ ਨੂੰ ਛੋਟਿਆਂ ਨੂੰ ਕਿਲਰ ਵੇਲਸ ਹੋ ਕੇ ਆਉਂਦੀਆਂ ਪਾਣੀ ਦੀ ਛੱਲ ਲੈ ਕੇ ਜਾਂਦੀਆਂ ਤੇ ਬਾਹਰੋਂ ਫਿਰ ਜਦੋਂ ਸੀਲਜ਼ ਅੰਦਰ ਕੰਡੇ ਤੇ ਬੈਠੀਆਂ ਬਾ ਅੰਦਰ ਆ ਜਾਂਦੀਆਂ ਤਾਂ ਉਹਨਾਂ ਨੂੰ ਫੜ ਲੈਂਦੇ ਇਹਦਾ ਹੁਣ ਕਾਰਨ ਪਹਿਲਾਂ ਵੀ ਨਿਊਜ਼ੀਲੈਂਡ ਦੇ ਵਿੱਚ ਦੁਨੀਆ ਦੇ ਵਿੱਚ ਸਾਰੀ ਜਗ੍ਹਾ ਹੀ ਇਹ ਜਿਹੜੀਆਂ ਪਾਇਲਟ ਵੇਲਜ਼ ਪਾਈਆਂ ਜਾਂਦੀਆਂ ਸਾਡੇ ਐਟਲੈਂਟਿਕ ਓਸ਼ੀਅਨ ਦੇ ਵਿੱਚ ਵੀ ਨੇ ਇਹ ਤੇ ਸੌਤ ਮਾਰਕਨ ਜਿਹੜੇ ਦੇਸ਼ ਨੇ ਉਹਨਾਂ ਦੇ ਕੰਡਿਆਂ ਤੇ ਵੀ ਨੇ 400 ਦੇ ਕਰੀਬ ਇਹ ਵੇਲਜ਼ ਕੰਡਿਆਂ ਤੇ ਆ ਤੇ ਆ ਗਈਆਂ ਉਧਰੋਂ ਪਾਣੀ ਮੁੜ ਗਿਆ ਤੇ ਇਹ ਰੇਤੇ ਤੇ ਬਰੇਤੀ ਤੇ ਫਸ ਗਈਆਂ ਕਿਸੇ ਨੇ ਵੇਖ ਲਿਆ ਜਾਨੂ ਆਲਦ ਵਾਲੇ ਪਿੰਡਾਂ ਦੇ ਨੇੜੇ-ਨੇੜੇ ਕਸਬਿਆਂ ਦੇ ਲੋਕ ਜਦ ਭੱਜੇ ਉਥੇ ਨੂੰ ਉਦੋਂ ਤੱਕ 300 ਦੇ ਕਰੀਬ ਵੇਲਸ ਮਰ ਚੁੱਕੀਆਂ ਇਹ ਸਾਊਥ ਆਈਲੈਂਡ ਦੇ ਆਈਲੈਂਡ ਦੇ ਸੌਥ ਵਾਲੇ ਪਾਸੇ ਫੇਰ ਵੀ ਉੱਥੇ 400 ਦੇ ਕਰੀਬ ਬਿਲਕੁਲ ਰਿਮੋਟ ਜਦ ਲੋਕ ਭੱਜੇ ਜੀਨਸ ਕੱਪੜੇ ਕਾਟਨ ਲੈ ਕੇ ਬਾਲਟੀਆਂ ਲੈ ਕੇ ਕਿ ਕਿ ਮੈਨਾਂ ਕਿ ਮੈਂ ਨੂੰ ਪਾਣੀ ਤੋਂ ਬਾਹਰ ਬਚਾਇਆ ਜਾ ਸਕੀ ਕਿਉਂਕਿ ਬਾਹਰ ਚਲੇ ਗਈਆਂ ਪਾਣੀ ਪਿੱਛੇ ਮੁੜ ਗਿਆ ਬਰੀਤੀ ਜਿਵੇਂ ਗਿੱਲਾ ਰੇਤਾ ਉਹਦੇ ਤੇ ਉਹ ਫਸ ਗਈਆਂ ਪਾਣੀ ਮੁੜ ਕੇ ਆਉ ਤਾਂ ਉਹ ਵਾਪਸ ਜਾਣ ਗਈਆਂ ਚਿਰ ਉਹਨਾਂ ਨੇ 100 ਦੇ ਕਰੀਬ ਵੇਲਜ਼ ਬਚਾ ਲਈ ਉਹਨਾਂ ਦੇ ਕੱਪੜੇ ਸਿੱਟ ਪਾਣੀ ਸਿੱਟ ਗਿੱਲਾ ਜਿਹੜਾ ਰੇਤਾ ਉਹਨਾਂ ਤੇ ਮਲ ਤੇ ਨਾਲ ਰੋ ਰਹੇ ਨੇ ਲੋਕ ਉਹ ਵੀਡੀਓ ਕਿ ਕੇ ਵੇਖਿਆ ਯਾਰ ਕੁਦਰਤ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਹੀ ਵਧੀਆ ਇੱਥੇ ਅਲਦ ਆਲਿਆ ਵੀ ਤਾਂ ਹੀ ਵਧੀਆ ਲੋਕ ਬਹੁਤ ਚੰਗੇ ਨਹੀਂ ਵੇਲ ਆ ਉਹ ਮਰੀ ਹੋਈ ਹੈ ਤੇ ਅਗਲਾ ਕਹਿੰਦਾ ਮਰ ਗਈ ਮਰ ਗਈ ਸੇ ਅਸੀਂ ਕੀ ਕਰੀਏ 500 ਦੇ ਕਰੀਬ ਲੋਕ ਇਕੱਠੇ ਹੋ ਗਏ ਘਰਾਂ ਦੇ ਵਿੱਚ ਮੈਸੇਜ ਭੇਜ ਤੇ ਫੇਸਬੁੱਕ ਤੇ ਭੱਜਲੇ ਲੋਕ ਬਾਲਟੀਆਂ ਲੈ ਕੇ ਜਿਵੇਂ ਪਿੰਡ ਚੱਕ ਲੱਗੀ ਆ ਬੁਝਾਉਣ ਜਾਂਦੇ ਆ ਲੋਕ ਤੇ ਉਹ ਵੇਲਸ ਦੀਆਂ ਦੇਖ ਕੇ ਫੋਟੋਆਂ ਜਿਹੜੀਆਂ ਇਕੱਠੀਆਂ ਮਰੀਆਂ ਪਈਆਂ ਉਹ ਦਿਲ ਨੂੰ ਧਾ ਪੈਂਦੀ ਧਾ ਨਿਕਲਦੀ ਹੈ ਤੇ ਇਹ ਜਗਾ ਜਿਹੜੀ ਹੈ ਇੱਥੇ ਪਹਿਲਾਂ ਵੀ ਹੋਇਆ 1918 ਦੇ ਵਿੱਚ ਹਜ਼ਾਰ ਦੇ ਕਰੀਬ ਪਾਇਲਟ ਵੇਲਜ਼ ਮਰੀਆਂ 1985 450 ਆਕਲੈਂਡ ਦੇ ਨੇੜੇ ਇਹ ਵੇਲਜ਼ ਮਰੀ ਬਸ ਉਹ ਆ ਜਾਂਦੀ ਇਹ ਇਹ ਬਹੁਤ ਟ੍ਰਿਕੀ ਹੈ ਆਈਲੈਂਡ ਦਾ ਇਸ ਹਿੱਸੇ ਤੇ ਨਿਊਜ਼ੀਲੈਂਡ ਦੇ ਵਿੱਚ ਤੇ ਪਾਣੀ ਮੁੜ ਗਿਆ ਤੇ ਇਹ ਬਾਹਰ ਆ ਗਈਆਂ ਤੇ ਮੁੜ ਕੇ ਬਰੇਤੀ ਤੇ ਫਸ ਗਈਆਂ ਦੇ ਪਾਣੀ ਬਿਨਾਂ ਮਰ ਜਾਂਦੀ ਐ ਤੇ ਪਰ ਫੇਰ ਵੀ ਦੇਖੋ ਲੋਕਾਂ ਨੇ ਪਾਣੀ ਆਉਂਦੇ ਤੱਕ ਉਹਨਾਂ ਨੂੰ ਰੱਖ ਕੇ ਗਿੱਲਾ ਹੰਡਾ ਰੱਖ ਕੇ ਉੱਪਰ ਪਾਣੀ ਸਿੱਟ ਕੇ ਕੱਪੜੇ ਸਿੱਟ ਕੇ ਉਹਨਾਂ ਨੂੰ ਬਚਾਇਆ 100 ਦੇ ਕਰੀਬ ਉਹ ਬਚ ਗਏ ਇਹ ਹਿਮਲਟੀ ਆ ਇਹ ਇਨਸਾਨੀਅਤ ਆ ਇਹਨਾਂ ਦੇਸ਼ਾਂ ਦੇ ਵਿੱਚ ਤੇ ਲੋਕ ਭੱਜਦੇ ਅਗਲੀ ਗੱਲ ਡੋਲਰ 트ੰਪ ਦੀ ਅਮਰੀਕਾ ਵਾਲੇ ਪਾਸੇ ਅਮਰੀਕਾ ਦੇ ਵਿੱਚ ਉਸਦੇ ਬੈਨ ਨੂੰ ਰੋਕਣ ਦੇ ਲਈ ਜਿਹੜਾ ਸਰਕਾਰਾਂ ਆਪਣੇ ਕੋਰਟ ਨੇ ਅਦਾਲਤ ਨੇ ਉਹਦੇ ਤੇ ਬੰਦਸ਼ ਲਾਈ ਸੀ ਉਹਦੇ ਲਈ ਕੇਸ ਕੀਤਾ ਸੀ ਸਰਕਾਰ ਨੇ ਉਹ ਬੈਨ ਉਸ ਤਰ੍ਹਾਂ ਦਾ ਉਸ ਤਿੰਨ ਜੱਜਾਂ ਨੇ ਆਪਣੇ ਸੈਨ ਫ੍ਰਾਂਸਿਸਕੋ ਦੇ ਵਿੱਚ 3 0 ਦੇ ਨਾਲ ਉਹ ਵਰਡਿਕਟ ਦਿੱਤਾ ਕਿ ਨਹੀਂ ਇਹ ਇਸ ਤਰ੍ਹਾਂ ਹੀ ਰੱਖਿਆ ਜਾਏਗਾ ਇਹ ਚੇਂਜ ਨਹੀਂ ਕੀਤਾ ਜਾਏਗਾ ਇਸ ਨੂੰ ਇਸ ਤਰ੍ਹਾਂ ਹੀ ਰੱਖਿਆ ਜਾਏਗਾ ਬੈਨ ਜਿਹੜਾ ਇਸ ਤੇ ਰੋਕ ਲਾਈ ਜਾਏਗੀ ਹੁਣ ਸੁਪਰੀਮ ਕੋਰਟ ਚ ਗੱਲ ਜਾਊ ਪਰ ਇਮੀਗ੍ਰੇਸ਼ਨ ਦੀ ਜਿਹੜੀ ਇਨਫੋਰਸਮੈਂਟ ਦੀ ਯੂਨਿਟ ਆ ਉਸ ਜਿਵੇਂ ਕੱਲ ਮੈਂ ਤੁਹਾਨੂੰ ਦੱਸਿਆ ਕਿ ਅਰੀਜ਼ੋਨਾ ਦੇ ਵਿੱਚ 36 ਸਾਲਾਂ ਦੀ 36 ਸਾਲਾਂ ਦੀ ਜਿਹੜੀ ਇੱਕ ਸ੍ਰੀ 14 ਸਾਲ ਦੀ ਇੱਥੇ ਆਈ ਤੇ 22 ਸਾਲ ਹੋ ਗਏ ਰਹਿੰਦੇ ਨੂੰ ਦੇ ਦੋ ਬੱਚੇ ਨੇ ਉਸ ਨੂੰ ਰਿਪੋਰਟ ਕਰ ਦਿੱਤਾ ਉਸ ਦੇ ਲਈ ਅੱਜ ਅਰੀਜ਼ੋਨਾ ਦੇ ਵਿੱਚ ਜਿੰਨੇ ਵੀ ਹਿਊਮਨ ਰਾਈਟਸ ਗਰੁੱਪ ਨੇ ਉਸ ਗੱਲ ਤੇ ਬਹੁਤ ਦੁਖੀ ਨੇ ਕਿ ਇਹ ਕੀ ਕੀਤਾ ਇਹ ਕੀ ਹੋਇਆ ਹੁਣ ਪਤਾ ਨਹੀਂ ਕੀ ਗਲਤੀ ਹੈ ਇੱਕ 22 ਸਾਲਾਂ ਦੀ ਜਿਹਨੂੰ ਸਰਕਾਰ ਇੱਕ ਦੇਸ਼ ਰੱਖੀ ਬੈਠਾ ਉਸ ਤੇ ਤਰਸ ਕਰਕੇ ਜਾਂ ਉਸ ਤੇ ਉਹਦੇ ਗਾਂ ਬੱਚੇ ਹੋ ਗਏ ਜਿਹੜੇ ਅਮਰੀਕਨ ਸਿਟੀਜ਼ਨ ਐ ਅਮਰੀਕਨ ਹੁਣ ਉਹ ਮਾਂ ਚੱਕ ਕੇ 22 ਸਾਲਾਂ ਬਾਅਦ ਛਾੜਤੀ ਇਹ ਬੜੀ ਹਿਰਦੇ ਵਿਧਕ ਗੱਲ ਹੈ ਜਾਂ ਤਾਂ ਉਹਨਾਂ ਨੂੰ ਮੋੜ ਦਿੱਤਾ ਜਾਂਦਾ ਹੈ ਤੇ ਦੂਜੀਆਂ ਮੈਨੇਜਮੈਂਟਸ ਨੇ ਦੂਜਾ ਜਿਹੜਾ ਪ੍ਰੈਜ਼ੀਡੈਂਟ ਹੈ 8 ਸਾਲ ਉਸਨੇ ਕੁਝ ਨਹੀਂ ਕਿਹਾ ਤੇ ਹੁਣ ਉਹਦੀ ਬਾਤ ਸੀ ਇਹ ਗੱਲਾਂ ਨਵੀਆਂ ਹਰ ਰਹੀਆਂ ਨੇ ਨਾਲ ਮਾਈਕਲ ਫਲੈਨ ਜਿਹੜਾ ਟਰੰਪ ਦਾ ਸਕਿਉਰਿਟੀ ਐਡਵਾਈਜ਼ਰ ਹੈ ਉਹ ਕਹਿੰਦਾ ਸੈਂਕਸ਼ਨ ਜਿਹੜੀਆਂ ਰਸ਼ੀਆਂ ਤੇ ਉਹਦੇ ਤੇ ਅਸੀਂ ਹਲੇ ਪੱਕੇ ਨਹੀਂ ਕਾਨੂੰਨੀ ਪਤਾ ਸੀ ਉਹ ਸੈਂਕਸ਼ਨਸ ਨੇ ਜਿਹੜੀਆਂ ਉਹ ਲਾਵਾਂਗੇ ਜਾਂ ਨਹੀਂ ਲਾਵਾਂਗੇ ਜਾਂ ਕਿਹੋ ਜਿਹੀਆਂ ਲੱਗਣਗੀਆਂ ਇਸ ਦੀ ਗੱਲ ਵੀ ਮੈਨੂੰ ਨਹੀਂ ਲੱਗਦਾ ਕਿ ਇਹ ਸੈਂਕਸ਼ਨਸ ਜਿਹਾ ਲੱਗਣ ਅ ਪਰ ਕਿਹਾ ਜਾ ਰਿਹਾ ਹੈ ਦੇ ਵਿੱਚ ਵੇਖ ਲੋ ਹੁਣ ਆਈਸਿਸ ਨਾਲ ਸੰਬੰਧਿਤ ਚਾਰ ਜਣੇ ਫੜਿਆ ਉਹ ਚ ਇੱਕ 16 ਸਾਲ ਦੀ ਬੱਚੀ ਆ ਸਿਰਫ ਜਿਹੜੀ ਸੁਇਸਾਈਡ ਬੰਬਰ ਬਣਨੂ ਇੱਕ 20 ਸਾਲ ਦਾ ਲੜਕਾ 16 ਸਾਲ ਦੀ ਲੜਕੀ ਆ ਤੇ ਇੱਕ 33 26 ਦਾ ISIS ਦੇ ਨਾਲ ਇਹ ক্লোਜ਼ ਨੇ ਬੰਦੇ EP P ਜਿਹੜਾ ਤਮਾਖੇ EATP ਜਿਹੜਾ ਤਮਾਖੇ ਖੇਜ਼ ਪਦਾਰਥ ਹੈ ਉਸ ਨੂੰ ਪੁਲਿਸ ਨੇ ਫੜਿਆ ਕਿ ਤਨਾ ਕਿ ਟਿਪ ਮਿਲ ਗਈ ਤੇ ਸੁਇਸਾਈਡ ਬੰਬਰ ਬਣ ਲਈ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਤਿਆਰ ਸੀ ਤੇ ਇਹਨਾਂ ਨੇ ਦੁਆਰਾ ਇਹ ਹਮਲਾ ਜਿਹੜਾ 프랑ਸ ਦੇ ਵਿੱਚ ਕਰਨਾ ਸੀ ਇਸ ਤਰ੍ਹਾਂ ਦਾ ਹਮਲਾ ਜਿਹੜਾ 2015 ਦੇ ਵਿੱਚ ਪੈਰਿਸ 'ਚ ਹੋਇਆ ਇਸ ਤਰ੍ਹਾਂ ਦੇ ਇਹੀ ਪੀਏਟੀਪੀ ਜਿਹੜਾ ਵਰਤਿਆ ਗਿਆ 2016 ਦੇ ਵਿੱਚ ਬਰਸਲਸ ਦੇ ਵਿੱਚ ਤੇ ਆਈਸਿਸ ਇਸ ਦੇ ਨਾਲ ਸੀ ਇਹ ਚਾਰੇ ਜਣੇ ਹੁਣ ਫੜਿਆ ਪੁਲਿਸ ਨੇ 16 ਸਾਲ ਦੀ ਇੱਕ ਲੜਕੀ ਆ 20 ਸਾਲ ਦਾ ਇੱਕ ਲੜਕਾ ਇੱਕ 33 ਦਾ ਇੱਕ 26 ਦਾ ਮਰਦ ਚਾਰੇ ਇਹਨਾਂ ਨੂੰ ਜਦੋਂ ਪੁਲਿਸ ਫੜਿਆ ਇਹਦੇ ਕੋਲ ਹੋਰ ਗੱਲ ਬਾਹਰ ਨਿਕਲੇਗੀ ਵਪਾਰਕ ਸੰਮੇਲਨ ਤੋਂ ਬਾਅਦ ਸਾਡੇ ਕੰਟੇਨਰ ਟਰੱਕਸ ਦਾ ਇਸ਼ੂ ਆ ਜਿਹੜਾ ਉਹ ਬਹੁਤ ਚਿਰਾਂ रहा ਲੰਮਕੜਿਆ 2005 ਦੀ स्ट्राइक, 2014 ਦੀ ਸਟ੍ਰਾਈਕ ਤੇ ਹਲੇ ਗੱਲ ਨਾ ਬਣੀ 14 ਨਿਕਾਤੀ ਪ੍ਰੋਗਰਾਮ ਲਈ ਕੀਤਾ ਗਿਆ ਉਹਨਾਂ 14 नकाती प्रोग्रामा ਦੇ ਵਿੱਚ ਫੇਰ ਕੁਝ ਕਮੀਆਂ ਰਹਿ ਗਈਆਂ ਤੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਗਗਨ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਖੁੱਲ ਕੇ ਇਹ ਗੱਲ ਦੱਸੀ ਕੰਟੇਨਰ ਟਰੱਕਰ ਜਿਹੜੇ ਕੰਮ ਕਰ ਰਿਹਾ ਪੋਰਟ ਮੈਟਰੋ ਵੈਨਕੂਵਰ ਤੇ ਉਹ ਮੁਸ਼ਕਲ ਦੇ ਵਿੱਚ ਨੇ ਉਹਨਾਂ ਦੇ ਘੱਟ ਟੁੱਟ ਰਹੇ ਨੇ ਫਾਈਨੈਂਸ਼ਲੀ ਉਹਨਾਂ ਦੀ ਪ੍ਰੋਬਲਮ ਆ ਸਰਕਾਰ ਕੁਝ ਉਦਦਮ ਕਰਨ ਜਾ ਰਹੀ ਹੈ ਉਹਦੇ ਲਈ ਮਿਨਿਸਟਰ ਪੀਟਰ ਫਾਸਬੈਂਡ ਮੇਰੇ ਨਾਲ ਗੱਲਬਾਤ ਕਰਨਗੇ ਮਿਨਿਸਟਰ ਗੁੱਡ ਆਫਟਰਨੂੰ ਵੈਲਕਮ ਟੂ ਸ਼ੋ ਆਂਕੀ ਯੂ ਥੈਂਕ ਯੂ ਸੋ ਮੱਚ ਫਾਰ ਯੂਅਰ so let's start with it is um, ongoing from last 12 years and uh, still they feel they are in crisis so what is government is doing nowadays uh, to solve those issues which is uh, what can i say long due now yeah well let me let me address it because i think there is some either misinformation or misunderstanding that's happening Number 1 as you know when we had the disruption previously the provincial government minister stone the premier myself mm -hmm. minister verk we all got engaged in trying to find a solution and mm -hmm. we had vince reddy and kareen bell who uh, worked with the truckers and came up with a 14 point action plan that 14 point action plan has been fully implemented by the province minister stone put out a report card indicating that all of the province's commitments have been met. There are some details within it. For example, the truck tag issue that still needs more work and that work uh is going to be done by the commissioner. And so um what I think is important is for the truckers throughout the province but especially in the lower mainland to know that we are doing everything we can as the province to make sure that we solve any of the outstanding issues some of the major complaints that are going on at the moment are still wait times at the port and the ongoing work in terms of doing the appropriate audits of the companies to make sure that every trucker gets paid their back wages and gets treated properly by the companies the commissioner is doing okay. that and the other day minister stone sent him a letter and had a conversation with him uh giving him more resources to move that process along uh faster to make sure that all of the audits are completed as soon as possible and there are a number of them and that's why it's taking some time the other thing okay. that he did is he sent a letter to his federal counterpart saying that the issues that are of major concern to the truckers wait times and some of the other items um and that they're compensated for their wait times and to improve some of the efficiencies at the port truly falls under the ports authority and the federal government now mr singh the other day i think was inferring that it's the provinces issue when indeed we are advocating constantly with the federal government and the port that they need to solve those issues on behalf of the truckers yeah there there is there is some uh, federal issues some provincial some port at vancouver what he was saying in that press conference it started with misbehave all the drivers are facing at the port metro vancouver specifically on delta port they were feeling just like slaves is still there why is not been addressed from where it started the, the another thing the wait time why it takes 18 months to address that issue if well, it in, in i wish i could answer that for you but as i said the wait times are the federal uh issues and the port authority minister stone and myself we've met with some of the federal mp's we've also talked to the federal minister to robin silvester who's the head of the port mm -hmm. and quite honestly i'm frustrated mm -hmm. it has taken this long to deal with that issue and uh, mm -hmm. i have said so publicly and on behalf of the truckers continue to advocate for those issues to be resolved mr the normal person just like me or a truck driver he have ability to talk to the company company takes the issue to the port port takes to you and you take to federal the normal person what do i have to talk to the your federal partners he he He'll can write to the rut. mp listen yeah. please he he can write to the mp mp is not taking care for them that's what exactly he said in the press conference and uh, agreement is done 18 months ago now we have 3 months away from elections now government wants to solve it and, no, and it's not it's not a fair it's not it, that is not, not a going, fair it's not going that to happen not, still that is not a fair comment we have been advocating and encouraging and uh, pushing the federal government and the port to do what they need to do we cannot force them okay and we've not just been doing it the last little while uh the truckers who know me know that I have been talking about this minister stone has been talking to his federal counterparts about it but we can't force the federal government or the port to do anything We have lived okay. up to our commitments. We have a commissioner now who's working on the issues that are under the provincial legislation. Some of them take some time to change. They they just don't happen overnight. But to blame the province of British Columbia or Minister Stone or any of us that it's our problem that the wait times on the port facility is our problem and our responsibility is not a fair comment. oh but still uh, who and the strike your minister was there and the union representative was there, there and premier was there that's the only message goes out when the strike is over and agree agreement is binded then who will implement you are saying federal federal saying you you are saying P port metro vancouver where the strikers will go and they wow. they are their families been tarnished money is not coming it takes 4 hours from entering the port to get the line where they call on intercom that i am here to take up a load which call the chaos line on that line they are saying you are late 4 hours go back and i don't know who will solve all these things that is the point that i was making i've met with the truckers and i have sat down with them minister stone has we have said to the port that the implementation of the gps system uh of better wait times so that the truckers are compensated for wait times that all falls under the responsibility of port of vancouver and mm -hmm. the provincial government cannot force the port it's a federal jurisdiction i'm frustrated that it's taken this long i know the truckers are and they're being affected by it and as i've said i continue as does minister stone and the premier and our government to our federal partners that they need to fix the issue and i am frustrated that it's taken this long too you know we implemented the 14 points very quickly after we put the commissioner's office in place he's meeting with representatives of the industry there are still mm -hmm. issues there's no question but to suggest that we don't care and that we are not looking after the truckers is not true. I do care about the truckers in this province and in my community and they know that because I've met with them face to face. Well there are a few Telvins sold on the time when person is disappointed a minister he he can finger anywhere if is everyone is happily living and working no one will say anything to anything when a problem comes that not been solved for 18 months then things are getting worse that's what exactly happening in my community when i talk about the containers they are lined up for 2 hours on my show and crying on on air no one wants that. to cry on air i know that and that is why when uh, mr singh had his press conference again Minister Stone immediately sent the letters to the bodies again uh, but it is important that you know when someone points a finger at the provincial government they have to have their facts and the facts are we have delivered on the 14 points the commissioner still has work to do on the tag issue and he's committed to doing that minister stone is now again given more resources to finish the audits you know we've already seen the payment of about 1.6 million dollars of past wages to the truckers as a result of the audits so he's also provided more resources so the commissioner's office can a, um, you know investigate some of the other allegations that are being made about unfair treatment of the truckers mm -hmm. so all of those things are being done by the province and they are being moved on every day the frustration is that the port has not implemented the gps system they have not implemented the reduced wait times and we are frustrated is the province of british columbia for the lack of action as well mm -hmm. so uh the waiting time how about other ports the cn or cp uh, is there the wait time will be implemented they are too or only on delta port well let's delta port it's the port of vancouver of course both supports uh, are affected under port of vancouver um the cn yards or the cp yards are the purview of the companies and again they fall under the federal railway legislation not under provincial legislation um if i am sitting as a truck driver and you are telling me all this and i am listening it from 18 months i don't look any way out this minister i'm bleeding from inside when i listen my brothers their families been gone kids are sitting home and people are suiciding and they are totally broken if government or federal government or court anyone is not taking care for all these guys it will be disaster in coming days Well, This is my word to you. I well, may can assure you and all of your listeners who are truckers or their family that we will continue to push hard to make sure that the issues the federal government and the port needs to deal with, we will continue to support the commissioner's office to have the resources that he needs in order to do the job that he's been charged under the provincial legislation. but the real issues on wait times and all of those things again we have said time and time again to our federal partners okay. you need to deal with that issue we're dealing with the issues that fall under the province and we've made significant progress already and we'll continue to work with them and here's the bottom okay. line mm -hmm. we care about the truckers we're going to continue to work with them and for them they make a significant contribution to the economy of the province and they need to be respected for that and treated fairly okay so there is a legislation also what is the difference between 14 points and legislation well the 14 points were the agreement the legislation was brought in to enable uh, much of what was in the 14 points it established the commissioner's office as an independent third party who would meet with the industry both the companies with drivers representatives and would be able to enact changes to regulations as it relates to those things that fall under the provincial jurisdiction and under the purview of his office and so we have lived up to that and i need to tell you that in you know, order to change things like the tag issues is not a small thing as you well know one of the complaints was that there was too many trucks and there wasn't enough work to keep all of those trucks busy that's why the tag issue has to be addressed and the commissioner is working on that and has the resources that he needs to bring that forward and make uh, changes to the regulations so at the end could you tell me how long do they have to wait you have any idea i hope they don't have to wait long for the port issues and the federal issues um the letter mm -hmm. that minister stone sent to the callie made to his federal counterpart i hope that they take this seriously and and as i said we are equally frustrated that some of those things have not moved as quickly i think it uh, is not that complicated i know it takes Uh, some additional investments in terms of the gps systems and so on to improve the wait times and also to track them properly um you know my hope is that we can get this resolved in the coming weeks and to see the action at the port that is necessary to uh, make those changes mr i will wait for that day when you come and announce again on air that everything is been sorted out thanks for uh thanks again for your time and uh, have a wonderful long weekend well thank you and uh, please make sure that you reinforce with your listeners and your the truckers in our communities that we are going to continue to advocate for them and work on their behalf thank you bhai will thank you very much thank you minister fast bender das raji ji tusi samjhe honge jinne bhi drivers sunde ho ਇਸ ਸਾਡਾ ਜ਼ੋਰ ਲੱਗਿਆ ਹੋਇਆ ਪਰ ਕੁਝ ਚੀਜ਼ਾਂ ਸਾਡੇ ਹੱਥ 'ਚ ਨਹੀਂ ਹੈ ਫੈਡਰਲ ਗਵਰਨਮੈਂਟ ਹੈ ਜਿਹੜੀ ਉਹਨਾਂ ਦੇ ਹੱਥ 'ਚ ਹੈ ਕੁਝ ਸਪੋਰਟ ਮੈਟਰੋ ਵੈਨਕੂਵਰ ਦੇ ਹੱਥ 'ਚ ਹੈ ਪਰ ਮੈਨੂੰ ਨਹੀਂ ਸਮਝ ਆਉਂਦਾ ਕਿ ਸੂਬੇ ਦੇ ਹੱਥ 'ਚ ਕੀ ਹੈ ਸੂਬੇ ਦੇ ਹੱਥ ਦੇ ਵਿੱਚ ਹੜਤਾਲ ਖਤਮ ਕਰਕੇ ਸਾਈਨ ਉੱਥੇ ਜਿਹੜੇ 14 ਪੁਆਇੰਟ ਹੋਏ ਉਹਨਾਂ ਨੂੰ 18 ਮਹੀਨੇ ਹੋ ਗਏ ਹਾਲੇ ਤੱਕ ਕਿਉਂਕਿ ਮੈਂ ਜੇ ਟਰੱਕ ਡਰਾਈਵਰ ਹਾਂ ਮੇਰਾ ਤਾਂ ਸੂਬੇ ਦੀ ਸਰਕਾਰ ਜਾਂ ਕੋਰਟ ਤੱਕੇ ਜ਼ੋਰ ਆ ਫੈਡਰਲ ਗਵਰਨਮੈਂਟ ਆਟਵਾ ਦੇ ਵਿੱਚ ਨਿਹਾਲੇ ਦੀ ਮਾਸੀ ਕਿੱਥੇ ਰਹਿੰਦੀ ਹੈ ਕਿਹਨੇ ਦੱਸਣੀ ਆ ਜਿਹੜੇ ਸਾਡੇ 3-4 ਇੱਥੇ ਵਿੱਚ ਲੱਗਦੇ ਫਿਰਦੇ ਆ ਇਹ ਨਹੀਂ ਸਾਡੀ ਬਾਦ ਪੋਸ ਜਹਾਜ਼ ਚੜ ਜਾਂਦੇ ਕਿਉਂਕਿ ਇਹਨਾਂ ਦੀ ਹਲੇ ਇਲੈਕਸ਼ਨ ਦੂਰ ਆ 19 ਚ ਆਏ ਤਾਂ ਫਿਰ 18 ਦੇ ਅੱਧ ਤੋਂ ਬਾਅਦ ਆ ਕੇ ਲੱਗਣਗੇ ਹਲੇ ਇਹਨਾਂ ਨੇ 1.5 ਸਾਲ ਨਗਾਉਣਾ ਹਲੇ ਹਲੇ ਹਨੀਮੂਨ ਪੀਰੀਅਡ ਚੱਲ ਰਿਹਾ ਹੁਣ ਮੈਨੂੰ ਨਹੀਂ ਪਤਾ ਲੱਗਦਾ ਕਿ ਮਿਨਿਸਟਰ ਨੇ ਤਾਂ ਆਪਣੇ ਵੱਲੋਂ ਕਹਿਣਾ ਹੀ ਆ ਵੀ ਸਾਡਾ ਸੁਬਾ ਮੇਰਾ ਅਸੀਂ ਜ਼ਿੰਮੇਵਾਰ ਨਹੀਂ ਪੋਰਟ ਮੈਟਰੋ ਵੈਨਕੂਵਰ ਪਰ ਹੁਣ ਕੋਈ ਨਾ ਕੋਈ ਤਾਂ ਵਾਲੀ ਬਾਤਸ ਹੈ ਫਿਰ ਕੌਣ ਹੈ ਜਿਹੜਾ ਸੰਭੂਗਾ ਫੈਡਰਲ ਗਵਰਨਮੈਂਟ ਪ੍ਰੋਵੈਂਸ ਨੂੰ ਕਹਿ ਦਿੰਦੀ ਆ ਪ੍ਰੋਵੈਂਸ ਕਹਿ ਦਿੰਦਾ ਪੋਰਟ ਨੂੰ ਪੋਰਟ ਕਹਿ ਦਿੰਦੀ ਆ ਮੈਂ ਇੰਡੀਪੈਂਡੈਂਟ ਆ ਸੂਬਾ ਕਹਿ ਰਿਹਾ ਮੈਂ ਨਹੀਂ ਪਰ ਫਿਰ ਵੀ ਮਿਨਿਸਟਰ ਨੇ ਕਿਹਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ ਕਿ ਇਹ ਜਿਹੜੇ ਇਸ਼ੂਜ਼ ਨੇ ਸੋਲਵ ਹੋ ਜਾ ਇਹ ਤੱਕ ਜੁਗੋ ਕਹਿੰਦੇ ਤੁਸੀਂ ਦੱਸ ਦਿਓ ਮੈਂ ਦੱਸ ਰਿਹਾ ਤੁਹਾਨੂੰ ਜਿਵੇਂ ਉਹਨਾਂ ਨੇ ਸੁਣਿਆ ਤੁਸੀਂ ਸਾਰੇ ਸਮਝਦੇ ਵੀ ਹੋ ਇੰਨੀ ਅੰਗਰੇਜ਼ੀ ਮੈਸਰ ਫਾਸ ਬੈਂਡਰ ਨਾਲ ਤੁਸੀਂ ਗੱਲਬਾਤ ਸੁਣ ਕੇ ਹਟਿਓ ਇਹ ਹੀ ਮੁਸ਼ਕਲਾਂ ਹੁੰਦੀਆਂ ਜਦ ਤੁਹਾਡੀ ਯੂਨਿਟੀ ਆਪਣੀ ਟੁੱਟਦੀ ਹੈ ਫਿਰ ਸਰਕਾਰਾਂ ਇੱਕ ਦੂਜੇ ਤੇ ਬਲੇਮ ਗੇਮ ਕਰਦੀਆਂ ਗੁੱਡ ਕੌਪ ਬੈਡ ਕੌਪ ਦੀ ਗੇਮ ਹੈ ਚੱਲਦੀ ਹੈ ਉੱਪਰ ਵਾਲੇ ਜਿਹੜੇ ਨੇ ਫੈਡਰਲ ਵਾਲੇ ਪ੍ਰੋਵਿੰਸ ਨੂੰ ਕਹਿੰਦੇ ਪ੍ਰੋਵਿੰਸ ਫੈਡਰਲ ਨੂੰ ਕਹਿੰਦਾ ਇਸ ਤੋਂ ਹੁਣ ਫੈਡਰਲ ਗਵਰਨਮੈਂਟ ਦੇ ਅੰਡਰ ਆਉਂਦੀਆਂ ਗੱਲਾਂ ਨੂੰ ਕਹਿ ਗਏ ਕਿ ਉਹ ਹੀ ਕਰਨਗੇ, ਪੋਰਟ ਮੈਟਰੋ ਵੈਨਕੂਵਰ ਦੇ ਥੱਲੇ ਆਉਂਦੀਆਂ ਗੱਲਾਂ ਨੂੰ ਉਹ ਕਰਨਗੇ। ਸਮਝ ਨਹੀਂ ਆਉਂਦੀ ਫਿਰ ਕੋਆਰਡੀਨੇਸ਼ਨ ਕਿੱਥੋਂ? ਸਰਕਾਰਾਂ ਜਿਹੜੀਆਂ ਚੁਣੀਆਂ ਜਾਂਦੀਆਂ ਹਰ ਸੂਬੇ ਦੀ ਸਰਕਾਰ ਫੈਡਰਲ ਗਵਰਨਮੈਂਟ ਦੇ ਨਾਲ ਜਾਂ ਲੋਕਲ ਜਿਹੜੇ ਉਹਨਾਂ ਦੇ ਕਾਊਂਟਰਪਾਰਟ ਨੇ ਉਹਨਾਂ ਨਾਲ ਗੱਲਬਾਤ ਕਰਕੇ ਸਿੱਧੀ ਗੱਲ ਕਰਦੀ ਨਾ ਸਰਕਾਰਾਂ ਧਿਰ ਨੇ ਸਾਡੀ ਪੋਰਟ ਮੈਟਰੋ ਵਾਲੇ ਸਾਨੂੰ ਬਣਨਾ ਦੇਣ, ਆਟਵਾ ਵਾਲੇ ਸਾਨੂੰ ਖੰਗੜਨਾ ਦੇਣ, ਸਾਡੀ ਜਗ੍ਹਾ ਕੌਣ ਰਹਿਗੀ ਸਾਡੇ ਐਮਐਲਏ? ਤੇ ਸਾਡਾ ਸੂਬੇ ਦੇ ਜਿਹੜੀ ਸਰਕਾਰ ਪਰ ਮੈਨੂੰ ਇਹਦਾ ਤਣਪੱਤਣ ਲੱਗਦੀ ਗੱਲ ਹਲੇ ਦਿਖਦੀ ਨਹੀਂ ਜੇ ਮੇਰਾ ਦਿਲ ਪੁੱਛਾਂ ਤੁਸੀਂ ਹਰਜੀਤ ਸਿੰਘ ਲਾਈਨ ਨੰਬਰ 2 ਹਲੋ ਸਸੀ ਕਾਲ ਹਰਜੀਤ ਸਿੰਘੀ ਸਸੀ ਕਾਲ ਬਾਈ ਜੀ ਹਰਜੀਤ ਸਿੰਘ ਜੀ ਤੁਸੀਂ ਅੱਜ ਪੀਟਰ ਫਾਸਮੈਂਟ ਨਾਲ ਵੀ ਗੱਲ ਕੀਤੀ ਹੋਸੇ ਸਰੀ ਦੀ ਆਪਣਾ ਨਿੰਦਾ ਆਪਣਾ ਵੀ ਗੱਲ ਕੀਤੀ ਦੇਖੋ ਇਹ ਲੀਡਰਾਂ ਨੇ ਕਦੇ ਵੀ ਪੈਰਾਂ ਦੇ ਪਾਣੀ ਨੀ ਪੈਣ ਦੇਣਾ ਤੁਸੀਂ ਜਿੰਨੇ ਮਰਜੀ ਆਪਣੀ ਆਪਣੀ ਸਰੰਗੀ ਵਜਾਉਂਦੇ ਆ ਆਪਣੀ ਕਿਸੇ ਦੀ ਨਹੀਂ ਸੁਣਦੇ ਵੀ ਜਿਹੜਾ ਬੰਦਾ ਜਿਹੜੇ ਕੋਈ ਲੋਕ ਰੌਲਾ ਪਾਉਂਦੇ ਨੇ ਯਾਰ ਤੇ ਆਖੇ ਉਹਨਾਂ ਦੀ ਗੱਲ ਨਹੀਂ ਸੁਣਦੇ ਆਪਣੀ ਕਦੇ ਹਾਂਜੀ ਉਹੀ ਗੱਲ ਅਸੀਂ ਆ ਕਰ ਰਹੇ ਆ ਪੇਪਰਾਂ 'ਚ ਅਸੀਂ ਇਹਦੇ ਨਾਲ ਗੱਲ ਕਰ ਰਹੇ ਆ ਉਹਦੇ ਨਾਲ ਗੱਲ ਕਰ ਰਹੇ ਮਤਲਬ ਪੈਰਾਂ ਦੇ ਪਾਣੀ ਨਹੀਂ ਪੈਣ ਦੇਣਾ ਦੂਜੀ ਗੱਲ 6 ਮਹੀਨੇ ਪਹਿਲਾਂ ਆਪਣੇ ਗਗਨ ਸਿੰਘ ਉਹਨਾਂ ਨੇ ਮੀਟਿੰਗ ਰੱਖੀ ਤਾਜ ਹੋਟਲ ਦੇ ਵਿੱਚ ਤੇ ਉੱਥੇ ਆਪਣੇ ਆਏ ਸੀ ਆਪਣੇ ਸਰੀ ਵਾਲੇ ਐਮਪੀ ਸਰਾਏ ਤੇ ਦੂਜੇ ਆਪਣੇ ਦੂਜੇ ਜਿਹੜੇ ਤੇ ਉਹ ਉਹ ਖੜੇ ਹੋ ਗਏ ਉਹ ਉਹਨਾਂ ਨੇ ਲੈਕਚਰ ਸ਼ੁਰੂ ਨੂੰ ਅਜੇ ਤੱਕ ਪ੍ਰੋਬਲਮਾਂ ਨੇ ਨਹੀਂ ਪਤਾ ਲੱਗਿਆ ਦੇਖੋ ਤੁਸੀਂ ਕਿਸੇ ਕਿਸੇ ਹੱਥ ਹੋਈ ਨਹੀਂ ਗੱਲ ਕਿੰਨਾ ਰੋਲਾ ਪਿਆ ਕੀ ਕੁਝ ਹੋ ਗਿਆ ਉਹਨਾਂ ਨੂੰ ਅਜੇ ਤੱਕ ਇਹੀ ਨਹੀਂ ਪਤਾ ਲੱਗਿਆ ਕਹਿੰਦੇ ਸਾਨੂੰ ਲਿਖ ਕੇ ਦਿਓ ਪ੍ਰੋਬਲਮਾਂ ਕੀ ਆ ਤੇ ਦੂਜੀ ਗੱਲ ਇਹਨਾਂ ਨੇ ਉਹ ਜਿਹੜਾ ਅਪੁਆਇੰਟ ਕੀਤਾ ਸੀ ਕਮਿਸ਼ਨਰ ਦੇਖ ਲਓ ਉਹਨੂੰ 2.25 ਲੱਖ ਡਾਲਰ ਉਹਨੂੰ ਤੇ ਉਹ ਕਹਿੰਦੇ ਜੀ ਤੇ ਸਿੰਗਲ ਇੱਕ ਪਰਸਨ ਨੂੰ ਵੀ ਉੱਥੋਂ ਕੋਈ ਵੀ ਉਹਦਾ ਕੋਈ ਮਸਲਾ ਆਲੀ ਹੋਇਆ ਕੋਈ ਜਿਸ ਨੂੰ ਪੈਸਾ ਨਹੀਂ ਵਾਪਸ ਮਿਲਿਆ ਕੋਈ ਉਹਨਾਂ ਨੇ ਜਵਾਬ ਨਹੀਂ ਦਿੱਤਾ ਉਹ ਐਵੇਂ ਉਹ 2.25 ਲੱਖ ਉਹਨੂੰ ਪਰੋਸ ਕੇ ਦਿੱਤਾ ਉਹ ਹੁਣ ਮੈਨੂੰ ਲੱਗਦਾ ਉਹ ਵੀ ਉਹਨੇ ਹਟਾ ਦੇਣਾ ਉਹਨਾਂ ਨੇ ਉਹਦਾ ਕੋਈ ਫਾਇਦਾ ਨਹੀਂ ਹੋਇਆ ਬਾਕੀ ਹੋਰ ਦੇਖ ਲਓ ਤੁਸੀਂ ਕਿੰਨੇ ਮਸਲੇ ਆ ਕਿਸੇ ਵੀ ਗੱਲ ਤੇ ਪੈਰਾਂ ਤੇ ਪਾਣੀ ਨਹੀਂ ਦੇ ਪੈਣ ਦੇ ਤੇ ਜਿਹੜਾ ਰੇਟ ਕਹਿੰਦੇ ਅਸੀਂ 25 ਡਾਲਰ ਚਾਰ ਦਿਨ ਕੋਈ 3-3 ਸਾਧਾ ਕੋਈ 4 ਦਿਨ ਚਾਰ ਲਵਾ ਕੇ ਮੋੜਨਾ ਕੋਈ ਛੇ ਲਵਾ ਕੇ ਮੋੜਨਾ ਉਹਨੂੰ ਕੀ ਕਰਨਾ ਇਹਦੇ ਵਿੱਚ ਕੋਈ ਮਸਲਾ ਇਹਨਾਂ ਦਾ ਹੱਲ ਹੋਣਾ ਹੀ ਨਹੀਂ ਜੀ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਉਸ ਦਿਨ ਸੁੱਚਾ ਸਿੰਘ ਇੱਕ ਆਪਣੇ ਕੰਪਨੀ ਦੇ ਮਾਲਕ ਆਏ ਸੀ ਉਹ ਕਹਿੰਦਾ ਮੇਰੇ 20 ਟਰੱਕ ਡੈਲਟਾ ਪੋਰਟ ਤੇ ਗਏ ਐਂਟਰੀ ਤੋਂ ਲੈ ਕੇ ਜਿੱਥੇ ਜਾ ਕੇ ਇੰਟਰਕਾਮ ਤੇ ਦੱਸਣਾ ਅਸੀਂ ਆ ਗਏ ਉਹ ਕਹਿੰਦਾ ਤੁਸੀਂ ਤਾਂ ਲੇਟ ਹੋ ਪਰ ਘੰਟੇ 4 ਹੋ ਗਏ ਸੀ ਬਾਹਰ ਇੰਟਰਸੈਕਸ਼ਨ ਤੋਂ ਬਾਹਰਲੀ ਜਗ੍ਹਾ ਤੋਂ ਅੰਦਰ ਤੱਕ ਜਾਂਦੇ ਸਿਕਿਉਰਿਟੀ ਵਾਲ ਪਹਿਲੀ ਸਿਕਿਉਰਿਟੀ ਵਾਲ ਦੂਜੀ ਸਿਕਿਉਰਿਟੀ ਵਾਲ ਤੀਜੀ ਈਜੀ ਤੇ ਜਾਖ ਹੋ ਗਿਆ 4 ਘੰਟੇ ਲੇਟ ਆ 20000 ਇੱਕ ਦਿਨ ਚ ਕਹਿੰਦੇ ਮੈਨੂੰ ਕਟਾ ਪਿਆ 19 ਡਰਾਈਵਰ ਮੇਰੇ ਉਨੀ ਟਰੱਕ ਮੈਂ ਵਾਪਸ ਮੰਗਾਏ ਕੋਰਟ ਤੋਂ ਇਹ ਕੰਪਨੀ ਦੇ ਮਾਲਕ ਦੀ ਗੱਲ ਸੀ ਤੋਂ ਇਹ ਤਨ ਪੱਤਰ ਲੱਗ ਸਕਦੀ ਹੈ ਜੇ ਤੁਸੀਂ ਇਕੱਠੇ ਹੋਵੋ ਮਿੱਤਰੋ ਜੇ ਤੁਸੀਂ ਇਕੱਠੇ ਨਾ ਨਾ ਹੋਏ ਇਹ ਤਨ ਨਹੀਂ ਲੱਗਣੀ ਤੇ ਬਹੁਤ ਚਿਰ ਹੋ ਗਿਆ ਮੈਨੂੰ ਲੱਗਦਾ 2014 ਤੋਂ ਜਿਸ ਦਿਨ ਸਟ੍ਰਾਈਕ ਤੋਂ ਸ਼ੁਰੂ ਕੀਤੀ ਉੱਥੇ ਜਾ ਕੇ ਬਹੁਤ ਉਤਸ਼ਾਹ ਸੀ ਬਸ ਦੁੱਖ ਹੀ ਹੈ ਜਿਹਨੂੰ ਚੂਰੀ ਮਿਲ ਜਾਂਦੀ ਨਾ ਇੱਕ ਬੰਨੇ ਥੀਸੇ ਚ ਪਾ ਤੂੰ ਮੂੰਹ ਚ ਪਾ ਤੇ ਆ ਬਾਅਦ ਚ ਤੇਰੀ ਹੋਰ ਉਹ ਕਹਿੰਦਾ ਮੈਂ ਤੁਹਾਡੇ ਚੋਂ ਬਾਹਰ ਆ ਬਈ ਉਹ ਕਹਿੰਦਾ ਤੂੰ ਕਿਵੇਂ ਮੈਨੂੰ ਚੂਰੀ ਮਿਲ ਗਈ ਮੈਂ ਚੂਰੀ ਵਾਲੇ ਆ ਹੁਣ ਅਸੀਂ ਉਹ ਨਾ ਰਹਿ ਗਏ ਜੀ ਚੂਰੀ ਵਾਲੇ ਬਣ ਕੇ ਚੂਰੀ ਵਾਲੇ ਬਣ ਗਏ ਕਹਿੰਦੇ ਆ ਫਿਰ ਬਾਕੀ ਜਿਹੜੇ ਘਰੋਂ ਲੈ ਕੇ ਗਏ ਬਹੀਆਂ ਆਥ ਨੇ ਜਿਨ੍ਹਾਂ ਨੇ ਖਾਣੀਆਂ ਦੁਆਰਾ ਠੰਡੀਆਂ ਹੋਈਆਂ ਉਹ ਕਹਿੰਦੇ ਸਾਡੇ ਕੋਲ ਤਾਂ ਇਹੀ ਹੈ ਫਿਰ ਉਹ ਇੱਕ ਦੂਜੇ ਵੱਲ ਚਾਹਦੇ ਤੇਰੇ ਕੋਲ ਉਹ ਕਹਿੰਦਾ ਮੇਰੇ ਕੋਲ ਵੀ ਇਹੀ ਹੈ ਕਹਿੰਦਾ ਚਲੋ ਆਪਾਂ ਤਾਂ ਰਹੀਏ 80% ਇੰਡਸਟਰੀ ਸਾਡੇ ਕੋਲ ਹੋਵੇ ਕੰਸਟਰਕਸ਼ਨ ਦੀ ਡਿਵੈਲਪਮੈਂਟ ਦੀ ਟਰੱਕਿੰਗ ਦੀ ਟੈਕਸੀ ਦੀ ਅਸੀਂ ਥਾਂ ਥਾਂ ਠੋਕਰਾਂ ਖਾਂਦੇ ਫਿਰਿਏ ਤ੍ਰੇਗਾ ਸਾਡੇ ਤੇ ਸਾਡੀ ਮੁਸ਼ਕਲ ਹੈ ਇਹ ਸਰਕਾਰਾਂ ਦੀ ਨਹੀਂ ਮੁਸ਼ਕਲ ਸਰਕਾਰਾਂ ਕੰਮ ਕਰਦੀਆਂ ਜੇ ਕਰਾਉਣ ਵਾਲੇ ਹੋਣ ਲੋਕ ਕੋਈ ਕਿਤੇ ਬਹਿ ਗਿਆ ਕੋਈ ਕਿਤੇ ਬਹਿ ਗਿਆ ਕੋਈ ਕਹਿੰਦਾ ਮੈਂ ਤਾਂ ਹੁਣ ਰਿਟਾਇਰ ਹੋ ਗਿਆ ਕੋਈ ਕਹਿੰਦਾ ਮੈਨੂੰ ਇੱਥੇ ਲਾ ਦਿਓ ਕੋਈ ਕਹਿੰਦਾ ਮੈਨੂੰ ਉੱਥੇ ਲਾ ਦਿਓ ਖਤਮ ਕਹਾਣੀ ਲੈ ਤੈਨੂੰ ਚਾਰ ਟੈਗ ਦੇ ਦਈਏ ਤੈਨੂੰ ਆਹ ਦੇ ਦਈਏ ਤੈਨੂੰ ਆਹ ਕਰ ਜਿਹੜੇ ਕੰਪਨੀਆਂ ਵੱਡੀਆਂ ਵਾਲੇ ਨੇ ਉਹ ਕਿੜ-ਕੜ ਆ ਪੰਜਾਬ ਵਾਲੀ ਉਹ ਕਹਿੰਦੇ ਦੂਜੇ ਲੋਕ ਠੋਕਾਂਗੇ ਆਜੋ ਅੰਦਰ ਵੜੋ ਇੱਕ ਵਾਰ ਉਹ ਕਹਿੰਦਾ ਮੇਰੇ ਕੋਲ ਹੁਣ ਸਿਸਟਮ ਆਇਆ ਠੀਕ ਹੈ ਮੈਂ ਆਪਣੀਆਂ ਗੱਲਾਂ ਠੀਕ ਕਰਨੀਆਂ ਉਹ ਰੱਬ ਜਾਣਦਾ ਪਰ ਫੇਰ ਵੀ ਕੋਸ਼ਿਸ਼ ਕੀਤੀ ਤੁਹਾਡੇ ਲਈ ਸਦਾ ਆਪਾਂ ਨੰਗੇ ਧੜ ਇਸ ਮੰਚ ਨੇ ਤੁਹਾਡੇ ਨਾਲ ਨਾਲ ਮੋਢ ਨਾਲ ਮੋਢਾ ਕਮਿਊਨਿਟੀ ਦਾ ਕੋਈ ਕੰਮ ਲਈ ਇਹ ਮੰਚ ਖੜਿਆ ਤੇ ਤੁਸੀਂ ਮੰਚ ਦੇ ਨਾਲ ਖੜੇ ਹੋ ਪਿਛਲੇ 2 ਸਾਲ ਹੋ ਗਏ 2 ਨਹੀਂ 2.5 ਹੋਣ ਲੱਗੇ ਨੇ ਇਹ ਆਵਾਜ਼ਾਂ ਜਿਹੜੀਆਂ ਬੰਦ ਕਰਨ ਲਈ ਨਿਤ ਕੁਛ ਨਾ ਕੁਛ ਕੀਤਾ ਜਾਂਦਾ ਪਰ ਗੁਰੂ ਦੀ ਕਿਰਪਾ ਨਾਲ ਜਦ ਤੁਸੀਂ ਨਾਲੋਂ ਇਹ ਆਵਾਜ਼ਾਂ ਬਲੰਦ ਨੇ ਬਲੰਦ ਇਹ ਕਹਿੰਦਾ ਨੇ ਇਹ ਤਾਂ ਮੋਟਰ ਤੇ ਬਹਿ ਵੀ ਗੱਲਾਂ ਵਧੀਆ ਹੁੰਦੀਆਂ ਕੁਲਜਿੰਦਰ ਬਹੁਤ ਧੰਨਵਾਦ ਤੁਸੀਂ ਕੋਸ਼ਿਸ਼ ਬਹੁਤ ਕਰਦੇ ਪਰ ਆਪਣੇ ਵੀਰਾਂ ਦੇ ਵਿੱਚ ਵੀ ਗਲਤੀਆਂ ਬਹੁਤ ਜੀ ਇੱਕ ਤਾਂ ਪ੍ਰੋਪਰ ਅੰਨੇ ਕੱਪੜੇ ਨਹੀਂ ਪਾਉਣੇ ਨਾ ਚਲ ਹੁਣ ਸੇਫਟੀ ਸ਼ੂ ਦੇ ਨਾਲ ਵੇਟਿੰਗ ਪੀਰੀਅਡ ਦਾ ਕੁਜਿੰਦਰ ਕੋਈ ਮਤਲਬ ਨਹੀਂ ਹੈ ਆਈ ਐਮ ਲਿਸਨਿੰਗ ਯੂ ਦਾ ਡਸਨਟ ਮੇਕ ਐਨੀ ਡਿਫਰੈਂਸ ਲਿਸਨ ਟੂ ਮੀ ਫਸਟ ਸੇਫਟੀ ਸ਼ੂ ਤੇ ਬੰਦਾ ਵਧੀਆ ਲੱਗਦਾ ਹੋਵੇ ਚਾਹੇ ਲਾਈਆਂ ਹੁੰਦੀਆਂ ਤੁਸੀਂ ਨਹੀਂ ਤੁਸੀਂ ਤੁਸੀਂ 3 ਪੀਸ ਪਾ ਕੇ ਚਲੇ ਜਾਓ ਟਰੱਕ ਤੇ ਤੁਹਾਨੂੰ ਉਹ ਅੱਗੇ ਜਾਣ ਮੈਂ ਸੁਣਨਾ ਯੂ ਬਲੇਮ ਆਵੋ ਓਨ ਪੀਪਲ ਆਲਵੇਸ ਮੈਂ ਨਹੀਂ ਦੇ ਆਰ ਆਲ ਇਨ ਕ੍ਰਾਈਸਿਸ ਉਹ ਪਹਿਲਾਂ ਹੀ ਕ੍ਰਾਈਸਿਸ ਦੇ ਤੁਸੀਂ ਆਪਨੇ ਆ ਕੇ ਐਡਵੋਕੇਸੀ ਕਰਨ ਲੱਗ ਜੰਦੇ ਹੋ ਇਹ ਨਹੀਂ ਪਾਉਂਦੇ ਉਹ ਇਹ ਨਹੀਂ ਪਾਉਂਦੇ ਕੀ ਪਾਉਣ ਉਹ ਬਿਨਾਂ ਕਿਸੇ ਤੁਰੇ ਫਿਰਦੇ ਕਾਲਤਾ ਸੁਣ ਲੋ ਇਹਨਾਂ ਨੇ ਏਕਾ ਹੈਗਾ ਕਿਸੇ ਦਾ ਫੇ ਆਗਾ ਮਿਲੋ ਆ ਗੱਲ ਕਰੋ ਫਿਨਿਸ਼ ਤੱਕ ਭਾਈ ਜੀ ਪਹਿਲਾਂ ਫਿਨਿਸ਼ ਤੱਕ ਲੰਮਾ ਨਾ ਕਰੋ ਕਾਲਤਾ ਸੁਣੋ ਮੈਂ ਫਿਨਿਸ਼ ਕਰਦਾ ਤੁਸੀਂ ਫਿਨਿਸ਼ ਕਰੋ ਗੱਲ ਆ ਕਰੋ ਜਿਹੜੀ ਕਰਨ ਵਾਲੀ ਆ ਵੈਸਟਾਂ ਵਾਲੀ ਗੱਲ ਨਹੀਂ ਹੈ ਦੇ ਵਿੱਚ ਕਾਲ ਨੇ ਏਕਾ ਦਾ ਕੋਈ ਇੰਡਸਟਰੀ ਲਾ ਦਿਓ ਪੰਜਾਬੀ ਪੰਜਾਬੀ ਬਲੱਡ ਦੇ ਵਿੱਚ ਅੰਡਰ ਕਟਿੰਗ ਹੈਗੀ ਆ ਕੋਈ ਕੋਈ ਇੰਡਸਟਰੀ ਲਾ ਲੋ ਰੀਸੈਂਟਲੀ ਦੇਖ ਲੋ ਸਾਰੇ ਇੰਡਸਟਰੀ ਕੱਟਡਾਊਨ ਕਰਕੇ ਪੱਠਾ ਬਿਠਾਇਆ ਪਿਆ ਨੰਬਰ 2 ਜੇ ਏਕਾ ਹੋਵੇ ਟਾਂਡੀ ਮੰਗਦਾ ਇੰਨਾ ਆਪਾਂ ਨੂੰ ਨਿਕਲਦਾ ਸਾਨੂੰ ਉਹ ਤਾਂ ਇਹਨਾਂ ਨੂੰ ਸਿੱਧਾ ਨਹੀਂ ਆਇਆ ਤੇ ਗਵਰਨਮੈਂਟ ਨੇ ਆਨੇ ਬੰਗਾਲਾਣਾ ਕਮਾਲ ਇਹ ਕਾ ਕਰੋ ਇਹ ਕਾ ਕਰੋ ਏਕਾ ਨਾ ਟਾਂਡੀ ਮੰਗਤੇ ਦੀ ਲੋੜ ਆ ਨਾ ਉਹਨੂੰ ਸਿੱਧਾ ਕਰਨ ਦੀ ਲੋੜ ਆ ਏਕੇ ਵਾਲੀ ਗੱਲ ਠੀਕ ਆ ਪੁਆਇੰਟ ਤੇ ਰਿਹਾ ਕਰੋ ਆਪਣੇ ਆਪ ਨੂੰ ਬਲੇਮ ਕਰਨ ਵਾਲੀ ਗੱਲ ਆ ਉਹ ਬੰਦ ਕਰ ਜਿੰਦਰ ਕਰੋ ਦੇਸ ਆਲਰੇਡੀ ਦੇ ਉਹ ਆਲਰੇਡੀ ਕ੍ਰਾਈਸਿਸ ਚ ਭਾਈ ਜੀ ਅਸੀਂ ਉਹਨਾਂ ਦੀ ਬੋਮੇ ਨਹੀਂ ਪੁੱਛੀ ਕਦੇ ਫੇਰਦੇ ਹੁੰਦੇ ਨਾ ਚਾਚਾ ਕਰ ਉਹਦੇ ਨਾਲ ਟਾਈਮ ਦੀ ਕੋ ਗੱਲ ਕਰਦੇ ਕੋਈ ਟਾਈਮ ਦੀ ਕਦੇ ਕਦੇ ਜਿਵੇਂ ਨਾਲ ਹੀ ਪੁਆਇੰਟ ਦਿੱਤੀ 10 ਵਜੇ ਦਾ ਜਾ ਕੇ ਪਹੁੰਚਦੇ ਉੱਥੇ ਕੋਈ ਕਦੇ ਕਾਦੇ ਟਾਈਮ ਦੀ ਆਪਣਾ ਪੰਜਾਬੀ ਬੰਦਾ ਕੰਸਟਰਕਸ਼ਨ ਗੋ ਟੂ ਹੈਵਨ ਸਵਰਗ ਚ ਜਾਣਾ ਪੈਣਾ ਜਿੱਥੇ ਸਾਰਾ ਕੁਝ ਠੀਕ ਹੋਵੇ ਕਲਜੰਦਰ ਦੁਨੀਆ ਚ ਰਹਿੰਦੇ ਹੋਏ ਸਾਰੀਆਂ ਕਮਿਊਨਿਟੀਾਂ ਚ ਮੁਸ਼ਕਲਾਂ ਨੇ ਨਾਟ ਅਬੋਨ ਜਦ ਮੈਂ ਕੋਈ ਗੱਲ ਕਰਦਾ ਤੁਸੀਂ ਆ ਕੇ ਉਸੇ ਸਮੇਂ ਸ਼ੁਰੂ ਹੋ ਜਾਂਦੇ ਆ ਆਪਣੇ ਆ ਨਹੀਂ ਕਰਦੇ ਆਪਣੇ ਆ ਨਹੀਂ ਕਰਦੇ ਫਿਰ ਇਹਨਾਂ ਤੋਂ ਵੋਟਾਂ ਮੰਗਦਾ ਜਾਂ ਸਦੀ ਦੀਆਂ ਇਲੈਕਸ਼ਨਾਂ ਚ ਖੜਦਾ ਤੇ ਮੈਨੂੰ ਹੁਣ ਆਪਣੇ ਆ ਮੈਨੂੰ ਵੋਟਾਂ ਪਾਓ ਇਹੋ ਨਹੀਂ ਇਹ ਠੀਕ ਹੈ ਵੀ ਸਾਨੂੰ ਅਨੁਸ਼ਾਸਨ ਦੀ ਲੋੜ ਆ ਅਨੁਸ਼ਾਸਨ ਦੇ ਸਮੇਂ ਅਨੁਸ਼ਾਸਨ ਦੀਆਂ ਗੱਲਾਂ ਮੈਂ ਕਰਦਾ ਦੱਸਦਾ ਉਹਨਾਂ ਨੂੰ ਆਹ ਕਰੋ ਆਹ ਕਰੋ ਆਹ ਕਰੋ ਪਰ ਇਹ ਹੁਣ ਉਹਨਾਂ ਦੇ ਉਹ ਗਾਲ੍ਹਾਂ ਕੱਢਦੇ ਆ ਉਹਨਾਂ ਦੀ ਪ੍ਰੋਬਲਮ ਆ 4-4 ਘੰਟੇ ਅੜਿੱਕਣ ਤੋਂ ਬਾਅਦ ਉਹਨਾਂ ਨੂੰ ਘਰੇ ਭੇਜਦੇ ਆ ਉਹ ਕੀ ਕਰ ਸਾਰੀ ਇੰਡਸਟਰੀ ਦੀ ਬਾਰੇ ਮੈਂ ਪਹਿਲਾਂ ਗੱਲ ਕਰ ਪਕੇ ਹਾਂ ਤੁਹਾਡੇ ਕੋਲ 80% ਤੁਸੀਂ ਇੰਡਸਟਰੀ ਓਨ ਕਰਦੇ ਹੋ ਸਿੰਘ ਇਕੱਠੇ ਹੋਵੋ ਉਹ ਕਹਿ ਕੇ ਹਟੇ। ਹੁਣ ਤੁਸੀਂ ਜਿਹੜੀ ਕਬੀਸ਼ਰੀ ਕਰਦੇ ਹੋ ਇਹਦੀ ਸ਼ੂ ਪਾਉਂਦੇ ਵੈਸਟਰ ਨਹੀਂ ਪਾਉਂਦੇ। ਕੰਪਨੀਆਂ ਦੇ ਰੂਲ ਨੇ ਤੇ ਸੇਫਟੀ ਸ਼ੂ ਤੇ ਵੈਸਟ ਤੋਂ ਬਿਨਾ ਉਹਨਾਂ ਨੂੰ ਉੱਥੋਂ ਲੋਡ ਨਹੀਂ ਮਿਲਦਾ ਉਹ ਸਾਰਿਆਂ ਦੇ ਪਾਈਆਂ ਹੁੰਦੀਆਂ। ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਕਰਦੇ ਆ। ਟਰੱਕਾਂ ਦੇ ਵਿੱਚ ਮਿਸ਼ਨ ਕੰਟਰੋਲ ਦੇ ਲਈ ਉਹਨਾਂ ਨੇ ਇਕੁਪਮੈਂਟਸ ਲਾਏ ਸਾਰਿਆਂ ਨੂੰ ਲਾਏ ਹੋਏ ਆ ਕਿ ਨਹੀਂ? ਜਿਹੜੀ ਚੀਜ਼ ਇੰਪਲੀਮੈਂਟ ਕਰਨ ਲਈ ਉਹ ਕਰਦੇ ਆ। ਪਰ ਹੁਣ ਜੇ ਵੈਸਟ ਆਪ ਤਿੰਨ ਪਵਾ ਦੇਣਗੇ ਕੱਲ ਨੂੰ ਤੁਸੀਂ ਉਹਨਾਂ ਦੀ ਬੇਇੱਜ਼ਤੀ ਹੋਣੀ ਬੰਦ ਕਰਾ ਦਿਓ ਤੇ ਉਹਨਾਂ ਨੂੰ ਵੇਟ ਟਾਈਮ ਲੈ ਦਿਓ ਮੈਂ ਕੱਲ ਨੂੰ ਤਿੰਨ ਪਵਾ ਕੇ ਭੇਜਦਾ ਵੈਸਟ ਵੈਸਟ ਦਾ ਰੌਲਾ ਨਹੀਂ ਹੈ ਰੌਲਾ ਜਿਹੜਾ ਅਸਲ ਹੈ ਉਹ ਇਹ ਹੈ ਗੱਲ ਗਾਲਾਂ ਕੱਢਦੇ ਉਹ ਜਿਹੜੇ ਵਰਕਰ ਇਹਨਾਂ ਦੇ ਮੁੰਡਿਆਂ ਨੂੰ ਉੱਥੋਂ ਸਾਇਕ ਸ਼ੁਰੂ ਹੋਈ ਸੀ ਕਿ ਹਰ ਰੋਜ਼ ਇੱਕ ਵਾਰ ਨਹੀਂ 20 ਟਾਕ ਸ਼ੋਅਾਂ ਦੇ ਵਿੱਚ ਉਹਨਾਂ ਦੱਸਿਆ ਸਾਨੂੰ ਗਾਲਾਂਫ ਤੋਂ ਬਿਨਾਂ ਬੋਲਦੇ ਨਹੀਂ ਜਿਹਨੂੰ ਚਾਰ ਸ਼ਬਦ ਅੰਗਰੇਜ਼ੀ ਦੇ ਤੇਰੇ ਵਰਗੇ ਨੂੰ ਵੀਰਿਆ ਬੋਲਣੇ ਆਜਮ ਨੇ ਉਹ ਫਿਰ ਦੂਜੇ ਵਾਲੇ ਪਾਸੇ ਖੜ ਜਾਂਦਾ ਸਪੀਕਸ ਵਿਦਆਊਟ ਐਕਸੈਂਟ ਕਮਾਂ ਜਿਹੜੇ ਬਲੇਮ ਗੇਮ ਤਾਂ ਜਿਹੜੀ ਉਹ ਪਹਿਲਾਂ ਕਰਕੇ ਗਿਆ ਮਨਿਸਟਰ ਤੇ ਆਪਾਂ ਫੇਰ ਆਪਣਿਆਂ ਨੂੰ ਬਲੇਮ ਕਰਦੇ ਠੀਕ ਆ ਕਮੀਆਂ ਹੈਗੀਆਂ ਕਮੀਆਂ ਦੇ ਬਾਰੇ ਮੈਂ ਕਹਿ ਕੇ ਹਟਿਆ ਪਹਿਲਾਂ ਵੀ ਆਹ ਇੰਡਸਟਰੀਆਂ 80% ਤੁਸੀਂ ਆਕੂਪਾਈ ਕਰਦੇ ਹੋ ਇਹਦੇ ਤੇ ਪੈਰਾ ਦੋ ਇਕੱਠੇ ਹੋਵੋ ਕਹਿ ਕੇ ਹਟਿਆ ਮੈਂ ਕੁਝ ਕਾਲਰ ਵੇਟ ਕਰ ਰਹੇ ਨੇ ਜੀ ਮਨਿੰਦਰ ਸਿੰਘ ਜੀ ਲਾਈਨ ਨੰਬਰ 2 ਆਂਦੀ ਪੜੀ ਸਤਿ ਸ੍ਰੀ ਅਕਾਲ ਹਰਜੀਤ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਜੀ ਗੱਲ ਇਦਾਂ ਆ ਪੀਟਰ ਨੂੰ ਇੱਕ ਤਾਂ ਪਤਾ ਨਹੀਂ ਲੱਗਦਾ ਜੇ ਹੋਰ ਕਿਸੇ ਰੈਡੂਏ ਤੇ ਇੰਟਰਵਿਊ ਕਰਦਾ ਇਹਨੂੰ ਇਹ ਨਹੀਂ ਹੁੰਦਾ ਵੀ ਮੈਂ ਨਹੀਂ ਗੱਲ ਕਰਦਾ ਨੰਬਰ 2 ਇਹ ਰੱਜ ਕੇ ਝੂਠ ਬੋਲਦੇ ਆ ਇਹ ਨਹੀਂ ਕੁਛ ਨਹੀਂ ਕੀਤਾ ਸਮਾਂ ਕੇ ਹੋਰ ਬੇੜਾ ਕਰਕ ਕਰਤਾ ਆ ਹੂੰ ਰੇਡ ਗਏ ਆ ਉੱਤੇ ਆਣੀ ਹੁੰਦੀ ਪੋਟਾਂ ਤੇ ਅਗਲੇ ਧੇ ਪੇ ਕੇ ਜੁੱਤੀਆਂ ਮਾਰਦੇ ਆ ਹਰ ਇੱਕ ਕੰਨਾਂ ਤੇ ਵੱਜਣ ਨੂੰ ਕੰਨ ਵਿੱਚ ਨੂੰ ਦੇ ਲੈਂਦੇ ਆ ਸਿਰ ਬਾਹਰ ਨੂੰ ਕੱਢ ਲੈਂਦੇ ਆ ਕੋਈ ਨਹੀਂ ਕੋਸ਼ਕਦਾ ਜਿੰਨਾ ਚਿਰ ਭਾਜੀ ਆਪਣੇ ਚੋਂ ਡੋਗਰਾਪਣ ਨਹੀਂ ਨਿਕਲਦਾ ਝੋਲੀ ਚੁੱਕ ਨਹੀਂ ਨਿਕਲਦੇ ਉਨਾ ਚਿਰ ਆਪਣਾ ਕੁਛ ਨਹੀਂ ਹੁਣ ਆਹ ਦੇਖ ਲਓ ਉੱਥੇ ਵੈਂਟਰ ਨੂੰ ਜਾਣਦੇ ਉਹ ਪੁਲਿਸ ਯਾਰ ਡੀਓਟੀ ਵਾਲਾ ਰੋਜ਼ ਖੜ ਜਾਂਦਾ ਆ ਉਹ ਜਦੋਂ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਆ ਹਰੇਕ ਦਾ ਖੂਨ ਜਿਹੜਾ ਸੁੱਕਣ ਲੱਪਨ ਦਾ ਪਤਾ ਨਹੀਂ ਇਹ ਕੀ ਕਰਦਣਾ ਜੇ ਕੈਸੀ ਕੈਸੀ ਤੇ ਉੱਪਰ ਸੋ ਪਈ ਆ 400 ਦੀ ਟਿਕਟ 500 ਦੀ ਇਹ ਕੋਈ ਲੈਟ ਨਹੀਂ ਜਗਦੀ ਤਾਂ ਉਹ ਰੋਜ਼ ਬੈਠਾ ਹੁੰਦਾ ਉਪਰ ਇਹ ਸਾਰਾ ਕੁਝ ਪੋਟਾਂ ਵਾਲੇ ਆਪ ਕਰਾਉਂਦੇ ਆ ਇਹ ਵੀ ਇਹਨਾਂ ਨੂੰ ਆਪਣੀ ਪੰਜਾਬੀ ਕਮਿਊਨਿਟੀ ਸਾਰਿਆਂ ਨਾਲੋਂ ਜ਼ਿਆਦਾ ਟਰੱਕਾਂ ਦੇ ਵਿੱਚ ਆ ਇਸ ਕਰਕੇ ਜੈਲਸ ਕਰਦੇ ਆ ਵੀ ਇਹ ਲੋਕੀ ਕੰਮ ਕਰਦੇ ਹਾਰਡ ਵਰਕਰ ਆ ਇਹਨਾਂ ਨੂੰ ਤੰਗ ਕਰੀਏ ਇਹ ਨਵੇਂ ਟਰੱਕ ਲੈਣ ਹੁਣ ਜਿਨ੍ਹਾਂ ਦੇ ਟਰੱਕ ਭਾਜੀ ਚੱਲਦੇ ਆ ਐਨੇ ਪੈਸੇ ਕਿੱਥੋਂ ਕੱਢ ਲੈਣੇ ਆ ਤੇ ਨੇ ਰੱਖ ਲੈਣ ਨੂੰ ਇਸ ਕਰਕੇ ਕੁਛ ਨਹੀਂ ਕਰਦੇ ਵੋਟਾਂ ਤੋਂ ਪਹਿਲਾਂ ਪਹਿਲਾਂ ਕਰ ਲੋ ਜੇ ਕੁਛ ਕਰਨਾ ਨਹੀਂ ਤਾਂ ਬਾਅਦ ਵਿੱਚ ਇੱਦੀ ਜੁੱਤੀਆਂ ਪਹਿਣੀਆਂ ਨਾਲੇ ਭਾਈ ਜਿਹੜੇ ਧੋਗਰੇ ਸੀਗੇ ਉਹ ਫੀ ਛੱਡ ਗਏ ਉਹ ਆਵਾਜ਼ਾਂ ਕਹਿ ਆਪਣੇ ਦੇ ਵਿੱਚ ਬਹੁਤ ਉਹ ਕਿੰਨਾ ਚਿਰ ਆਪਾਂ ਨੂੰ ਸਮਝ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਇਹ ਇੱਦੀ ਕੁੱਟ ਖਾਈ ਜਾਣੀ ਆ ਤਾਂ ਇਹਨਾਂ ਨੇ ਵਿੱਚ ਰਲ ਕੇ ਇੱਦੀ ਆਪਣੇ ਜੁੱਤੀਆਂ ਮਰਾਈ ਜਾਣੀਆਂ ਇਹਨਾਂ ਨੇ ਬਹੁਤ ਕੁਝ ਗੰਦਲਾ ਕਰਤਾ ਬਾਕੀ ਆ ਵੋਟਾਂ ਤੋਂ ਪਹਿਲਾਂ ਪਹਿਲਾਂ ਹੋ ਸਕਦਾ ਜੇ ਕਰਨਾ ਹੋਵੇ ਕੁਝ ਵੀ ਲਾਲਜੋਤ ਸਿੰਘ ਜੀ ਹਾਂਜੀ ਭਾਈ ਭਾਜੀ ਸਿੰਘ ਜੀ ਸਤਿਕਾਰ ਜੀ ਸਮਾਂ ਦੇਣ ਦਾ ਪੀਟਰ ਸੈਸਮਨ ਜੀ ਦੀ ਜਿਹੜੀ ਹੈਗੀ ਆ ਉਹ ਇੰਟਰਵਿਊ ਮੈਂ ਦੂਜੇ ਜਿਹੜੀ ਤੇ ਵੀ ਸੁਣੀ ਨਹੀਂ ਆ ਉਹ ਕੰਸਲਟੈਂਟ ਜਿਹੜੇ ਕਰਦੇ ਟਰਕਿੰਗ ਨੂੰ ਵੀ ਉਹ ਦੱਸ ਰਿਹਾ ਗਗਨ ਸਿੰਘ ਕੇ ਜਿਹੜੇ ਮਨਿਸਟਰ ਆ ਉਹ ਕੁੜਕੀ ਦਿੰਦੇ ਆ ਤੇ ਤੇ ਦੇਖ ਲਓ ਫਿਰ ਤੁਸੀਂ ਜੇ ਏਦਾਂ ਕਰਦੇ ਸਾਡੀ মিডিਆ ਤੇ ਜਾ ਕੇ ਪਤਨਾਮੀ ਕਰਦੇ ਵੀ ਅਸੀਂ ਤੁਹਾਨੂੰ ਜਿਸ ਤਰ੍ਹਾਂ ਗੁੱਝੇ ਸ਼ਬਦਾਂ ਦੇ ਵਿੱਚ ਹੁੰਦੀ ਆ ਤੇ ਉਸ ਤੋਂ ਬਾਅਦ ਮਨਿਸਟਰ ਆ ਕੇ ਕਹਿੰਦਾ ਨਹੀਂ ਅਸੀਂ ਐ ਨਹੀਂ ਕਰਦੇ ਹੁਣ ਗੱਲ ਇਹ ਆ ਮੇਨ ਮੁੱਦਾ ਜੇ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਕੋ ਆ ਬੀਪੀ ਕ੍ਰੈਸਟੀ ਕਰਾਰ ਮਿਸਟਰ ਵੇਰਕ ਅਮਰੀਕ ਵੇਰਕ ਕੋ ਪਾਵਰ ਨਹੀਂ ಸಿਗੀ ਕਿ ਕਿ ਜਿਹੜਾ 14 ਨਗਾਤੀ ਪ੍ਰੋਗਰਾਮ ਅਸੀਂ ਕਰਾਂਗੇ ਔਰ ਕਰਕੇ ਇਹਨੂੰ ਸਿਰੇ ਚੜਾਂਗੇ ਔਰ ਜੇ ਪਾਵਰ ਨਹੀਂ ਸੀ ਹੁੰਦੀ ਕਿ ਉਦੋਂ ਬਹੁਤ ਵੱਡੀ ਮਿਸਟੇਕ ਸਾਡੇ ਜਿਹੜੇ ਸੀਗੇ ਆਪਣੇ ਕਮਿਊਨਿਟੀ ਦੇ ਨਮਾਇਦੇ ਔਰ ਜਿਹੜੇ ਸਾਡੇ ਕਮਿਊਨਿਟੀ ਦੇ ਐਮ.ਐਲ.ਏ ਉਹਨਾਂ ਕੋਲੋਂ ਇਹ ਉਹਨਾਂ ਨੇ ਕਰਵਾਤੀ ਕਿ ਸਟ੍ਰਾਈਕ ਜਿਹੜੀ ਆ ਉਹ ਸਮਾਪਤ ਕਰਾਤੀ ਬਹੁਤ ਵੱਡੀ ਇਹ ਮਿਸਟੇਕ ਹੋਈ ਹੈ ਨਾ ਹੁੰਦੀ ਤੇ ਹੁਣ ਨੂੰ ਕੁਛ ਨਾ ਕੁਛ ਬਣ ਜਾਣਾ ਸੀਗਾ ਹੁਣ ਦੁਬਾਰਾ ਆਈ ਚੱਕਣ ਚਕਣਾ ਫਿਰ ਪੋਰਚ ਆਪਣਾ ਖਜਲ ਕਰਨਾ ਪਊਗਾ ਦੂਸਰੀ ਗੱਲ ਇਹ ਆ ਦਾ ਰੋਲ ਆ ਇਸ ਸਟ੍ਰਾਈਕ ਨੂੰ ਤਾਰ ਪੀਟੋ ਕਰਨ ਦੇ ਕੋ ਕੋ ਪਾਵਰ ਹੀ ਨਹੀਂ ਤੇ ਇਹਨਾਂ ਨੇ ਤੇ ਸਾਈਨ ਕਿਉ ਕਰਾਏ ਇਹਨਾਂ ਦੇ ਹੱਥ ਕਿਉ ਵਡਾਏ ਕਹਿ ਦਿੰਦੇ ਭਾਈ ਸਾਡੇ ਇਹ ਜੁਡੀਸਟਿਸਟੈਂਡ ਦੇ ਵਿੱਚ ਨਹੀਂ ਫੈਡਰਲ ਗਵਰਨਮੈਂਟ ਦਾ ਤੁਸੀਂ ਉਹਨਾਂ ਨਾਲ ਲੜੋ ਝਗੜੋ ਉਹ ਤੁਹਾਨੂੰ ਪਛ ਦਿੰਦੇ ਠੀਕ ਆ ਅਸੀਂ ਅਸੀਂ ਤੁਹਾਡੀ ਬੈਕਪੋਨ ਦੇ ਤੇ ਮਦਦ ਕਰ ਸਕਦੇ ਆ ਇਹਨਾਂ ਨੇ ਬੱਚਾ ਪਾ ਲੈ ਕੇ ਸਟ੍ਰਾਈਕ ਨੂੰ ਤੜਵਾਇਆ ਔਰ ਉਹਦੇ ਜਿਹੜੇ ਹੁਣ ਕਸਤੀ ਕਸਤੀ ਜਿਨ ਨਿਕਲ ਰਹੇ ਆ ਉਹ ਹੁਣ ਸਾਰਿਆਂ ਨੂੰ ਪਤਾ 7-7 ਘੰਟੇ 6-6 ਘੰਟੇ ਬੈਠ ਗਿਆ ਜਾਂਦੇ 2 ਇਹਨਾਂ ਦੇ ਲੱਗਦੇ ਆ ਦੂਸਰੀ ਗੱਲ ਇਹ ਆ ਜਿਹੜੇ ਵੀਰ ਜਿਹੜੇ ਓਨ ਕਰ ਰਹੇ ਕੰਪਨੀਆਂ ਨੂੰ ਉਹ ਵੀ ਥੋੜਾ ਜਿਹਾ ਰੱਬ ਦਾ ਭੈ ਕਰ ਉਹ ਵੀ ਬਣਦੀ ਵੇਜਨ ਇਹਨਾਂ ਨੂੰ ਦੇਣ ਜੇ ਵੇਟਿੰਗ ਟਾਈਮ ਜਾਂ ਕੁਛ ਹੈ ਉਹਨਾਂ ਸਾਡੇ ਆਪਣੇ ਵਿੱਚ ਵੀ ਕੁਛ ਨਾ ਕੁਛ ਇਦਾਂ ਦੀ ਚੀਜ਼ ਹੈ ਕਿ ਜਿਹੜੇ ਅਸੀਂ ਆਪਣੇ ਆਪ ਨੂੰ ਜਿਹੜਾ ਸਪਨੇ ਦੇ ਬੱਚਿਆਂ ਨੂੰ ਅਸੀਂ ਆਪਣੇ ਨੂੰ ਆਪ ਹੀ ਖਾਈ ਜਾਂਦੇ ਔਰ ਦੂਜੀ ਗੱਲ ਕੰਪਨੀ ਤੇ ਨਹੀਂ ਸਪਾਈ ਉਹਦੀ ਕੰਪਨੀ ਦਾ ਚਲੋ ਨਹੀਂ ਪੜਦੀ ਉਹਦਾ ਕੋਈ ਤਤਕਾਰ ਹੋ ਗਿਆ ਉਹਦੇ ਕੋਲ ਰਾਈਟਸ ਹੋਣਾ ਚਾਹੀਦਾ ਕਿ ਆਪਣਾ ਟਰੱਕ ਮੂਹ ਕਰਕੇ ਐਜ਼ ਅ ਓਨਰ ਆਪਰੇਟਰ ਦੂਈ ਕੰਪਨੀ ਚ ਉਹ ਹੈ ਨਹੀਂ ਉਹ ਵਿਚਾਰਾ ਕੰਮ ਛੱਡੇ ਡਰਾਈਵਰ ਕਰ ਸਕਦਾ ਵਾ ਕੰਪਨੀ ਆਪਣੀ ਤੇ ਓਨਰ ਆਪਰੇਟਰ ਜਿਹੜਾ ਟਰੱਕਰ ਉਹ ਕਰ ਨਹੀਂ ਸਕਦਾ ਜਦਾ ਕੰਪਨੀ ਦੇ ਵਿੱਚ ਰਹਿ ਕੇ ਉਹਦੇ ਲੋਹਾਰ ਦੀ ਸੱਟਾਂ ਖਾਈ ਜਾਵੇ ਤੇ ਉਹਨਾਂ ਦਾ ਕਲਾਮ ਬਣ ਕੇ ਕਰੀ ਜਾਵੇ ਨਹੀਂ ਤੇ ਆਪਣੇ ਘਰ ਬਹਿ ਜਾਵੇ ਜਿਹੜਾ ਕੋਈ ਬੋਲਦਾ ਉਹਨੂੰ ਘਰ ਭਟਾ ਦਿੰਦੇ ਮੁਰਕੇ ਤਾਲੀ ਨਹੀਂ ਕਰਦੇ ਇਹ ਚੀਜ਼ਾਂ ਜਿਹੜੀਆਂ ਫਿਕਸ ਕਰਨ ਵਾਲੀਆਂ ਇਹ ਫੈਡਰਲ ਗਵਰਨਮੈਂਟ ਨੇ ਕਰਨੀਆਂ ਸੀ ਹੁਣ ਲਿਬਰਲ ਦੇ ਵਿੱਚ ਫੈਡਰਲ ਗਵਰਨਮੈਂਟ ਹੀ ਆਪਣੀ ਆ ਜੇ ਕਿਸੇ ਨੂੰ ਕਿਸੇ ਐਮਪੀ ਦੀ ਲੋੜ ਸਾਡਾ ਰੈਚਮੈਂਟ ਆਪਣਾ ਐਮਪੀ ਹੈਗਾ ਮਿਸਟਰ ਜੋ ਬੜਾ ਵਿਦਿਆਨੰਦਾਰ ਹੈਲਪਫੁਲ ਕੋਈ ਲੈਟਰ ਦੀ ਲੋੜ ਆ ਅਸੀਂ ਉਹ ਲੈਟਰ ਲੈਣ ਦੇ ਕੇ ਵੀ ਤਿਆਰ ਆ ਇਹਨਾਂ ਕਰਾਂ ਦੀ ਮਦਦ ਕਰਨ ਵਾਸਤੇ ਨਹੀਂ ਤਾਂ ਐਸ ਵੋਟਾਂ ਦੇ ਵਿੱਚ ਫਿਰ ਦਿਖਾ ਦਿਓ ਫਿਰ ਆਪਣੇ ਵੀ ਜਿਹੜੇ ਤੇਵਰ ਕੀ ਹੁੰਦੇ ਆ ਇਹਨਾਂ ਨੂੰ ਦੋਸਤਾ ਦੇ ਇਹਨੂੰ ਖਾਲੀ ਬਿਲ ਭਾਵਾਂ ਨੂੰ ਮੋੜ ਦਿਓ ਧੰਨਵਾਦ ਜੀ ਇੱਕ ਮੈਂ ਹੋਰ ਬੇਨਤੀ ਕਰਾਂ ਜਿਹੜੇ ਮੁੰਡੇ ਕੰਮ ਕਰ ਰਹੇ ਆ ਇਹ ਸਰੀ ਵਾਲੇ ਐਮਪੀਆ ਦੇ ਪਿੱਛੇ ਨਾ ਤੁਰ ਰਹੇ ਹੋ ਬਾਹਰਲੇ ਬੰਦੇ ਪਾਸੇ ਵਧੀਆ ਬੰਦੇ ਕੰਮ ਕਰਨ ਜਿਸ ਤਰ੍ਹਾਂ ਲਾਜੋ ਸਿੰਘ ਦੱਸ ਕੇ ਕਹਿੰਦਾ ਇਸ ਤਰ੍ਹਾਂ ਅਬ ਦੇ ਵਿੱਚ ਜਤੀ ਸਿੱਧੂ ਹੋਣੀ ਉਹਨਾਂ ਨਾਲ ਗੱਲ ਕਰ ਕੋ ਉਹਨਾਂ ਨਾਲ ਮਿਲ ਕੇ ਦੇਖ ਲਓ ਉਹ ਵੀ ਐਮਪੀ ਨੇ ਇਹ ਸਾਡੇ ਵਾਲਿਆਂ ਦਾ ਇਹਨਾਂ ਦਾ ਇਹਨਾਂ ਲਈ ਐਉਂ ਨਹੀਂ ਹੈ ਵੀ ਇਹਨਾਂ ਦੀ ਉੱਥੇ ਸੁਣਦਾ ਜਸਟਿਸ ਇਨਟਰੂਡ ਇਹਨਾਂ ਦਾ ਗਦੌੜਾ ਨਹੀਂ ਫੇਰਿਆ ਹੋਇਆ ਜਿੱਤੇ ਸਿੱਧੂ ਨੂੰ ਵੀ ਜਾ ਕੇ ਮਿਲ ਕੇ ਦੇਖ ਲਓ ਜੇ ਇਸ ਸਮੇਂ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਹੋ ਕੋਸ਼ਿਸ਼ ਕਰੋ ਤੇ ਆਪਣੀ ਗੱਲ ਦਾ ਹੱਲ ਕਰੋ ਗਗਨ ਸਿੰਘ ਮੇਰੇ ਨਾਲ ਨੇ ਇਸ ਬਾਰੇ ਦੱਸਣਗੇ ਕਿ ਮਿਨਿਸਟਰ ਜਿਹੜਾ ਕੋ ਕਹਿ ਗਿਆ ਤੇ ਅਸਲ ਕਹਾਣੀ ਕੀ ਹੈ ਫੇਰ ਗਗਨਸ ਤੁਹਾਡਾ ਸਵਾਲ ਹੈ ਨੰਬਰ 4 ਸਤਿ ਸ਼੍ਰੀ ਅਕਾਲ ਜੀ ਪਿੰਨੋ ਤੈਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸਮਾਂ ਅੱਜ ਬਹੁਤਾ ਜ਼ਿਆਦਾ ਸਮਾਂ ਨਹੀਂ ਲੈਣਾ ਜੀ ਕਿਉਂਕਿ ਕਾਫੀ ਜਿਹੜਾ ਤੇ ਬਲੇਮ ਲੱਗਦਾ ਮੈਂ ਤੂੰ ਹੀ ਸਾਰਾ ਟਾਈਮ ਖਾ ਜਾਂਦਾ ਮੈਨੇਟਰ ਸਾਹਿਬ ਜੀ ਮੈਂ ਹੁਣ ਗੱਲ ਦੱਸਣ ਲੱਗਿਆ ਜੀ ਸਾਨੂੰ ਇੱਕ ਚਿੱਠੀ ਆਈ ਸੀ ਦਸੰਬਰ 7 2016 ਨੂੰ ਜਿਹਦੇ ਥੱਲੇ ਸਾਈਨ ਟੌਲ ਸਟੋਨ ਬਣਾ ਦੇ ਵੀ ਹੋਏ ਤੇ ਪੀਟਰ ਅਪਾਰਟਮੈਂਟਰ ਹੋਣਾ ਦੇ ਵੀ ਹੋਏ ਤੇ ਟੀਰੇ ਵਿੱਚ ਅਸੀਂ ਉਦਣ ਇਹਨਾਂ ਨੂੰ ਲਿਖ ਕੇ ਭੇਜਿਆ ਸੀਗਾ ਵੀ ਭਾਈ ਵੇਟ ਟਾਈਮ ਸਾਨੂੰ ਜਿੱਥੋਂ ਤੁਸੀਂ 14 ਨਿਕਾਤੀ ਪ੍ਰੋਗਰਾਮ ਤੇ ਲਿਖ ਕੇ ਦਿੱਤਾ ਸਾਨੂੰ ਉਹਦੇ ਪੈਸੇ ਨਹੀਂ ਮਿਲ ਰਹਾ ਉਹਦੇ ਜਵਾਬ ਨੇ ਇਹਨਾਂ ਨੇ ਕਿਹਾ ਸੀਗਾ ਵੀ ਕਹਿੰਦੇ ਕੰਟੇਨਰ ਟਰੱਕਿੰਗ ਕਮਿਸ਼ਨਰ ਨੇ 파ਟਨਰ ਕੀਤਾ ਆ ਜਿਹੜੇ ਜੂਰਿਸਡਿਕਸ਼ਨ ਹੀ ਨਹੀਂ ਤੇ ਉਹ ਪੋਰਟ ਮੈਟਰੋ ਵਾਲੇ ਭੂਆ ਦੇ ਪੁੱਤ ਸੀਗੇ ਉਹਨਾਂ ਨੂੰ 1.7 ਮਿਲੀਅਨ ਡਾਲਰ ਦਿੱਤਾ ਪਹਿਲੀ ਗੱਲ ਦੂਜੀ ਗੱਲ ਇਹਨਾਂ ਨੂੰ ਤੁਸੀਂ ਸਵਾਲ ਪੁੱਛਿਆ ਸੀਗਾ ਮਨਿਸਟਰ ਸਾਹਿਬ ਇਸੇ ਲਈ ਬੜੇ ਮਾਸ ਰਿਹਾ ਵੀ ਪਾਲਿਸ਼ ਕਰਕੇ ਤਾਂ ਇਹਨੂੰ ਲਾਦਾ ਆ ਮਾੜੀ ਦੀ ਜਿਹੜੋ ਵੀ ਝੂਠ ਨੂੰ ਵੀ ਸੱਚ ਕਹਿ ਕੇ ਇਹ ਵੇਚ ਦੇਣਗੇ ਤੁਸੀਂ ਸਵਾਲ ਪੁੱਛਿਆ ਸੀਗਾ ਸੀਐਨਪੀ ਤੇ ਸੀਪੀ ਨੂੰ ਇਹਨਾਂ ਨੇ ਟਰਮੀਨਲ ਤੋਂ ਹੀ ਬਾਹਰ ਕੱਢ ਦਿੱਤਾ ਉਹਦਾ ਦੋ ਘਾਟੇ ਪਏ ਇੱਕ ਤਾਂ ਰੇਟ ਮੈਨ ਲੋ ਘਟ ਗਿਆ ਉੱਥੇ ਦੂਜੀ ਚੀਜ਼ ਜਿਹੜੀ ਸਾਰਿਆਂ ਤੋਂ ਵੱਡੀ ਹੋਈ ਜਿਹੜਾ ਸੀਐਨ ਤੇ ਸੀਪੀ ਤੇ ਸਾਨੂੰ ਵੇਟ ਟਾਈਮ ਮਿਲਦਾ ਸੀਗਾ ਜਿਹੜਾ ਮਿਲਣਾ ਸ਼ੁਰੂ ਹੋਣਾ ਸੀ ਉਹ ਬੰਦ ਹੋ ਗਿਆ ਫੇਰ ਇਹ ਕਹਿੰਦੇ ਆ ਵੀ ਸਮਾਂ ਲੱਗਦਾ ਚਲੋ ਮੈਂ ਇਹਨਾਂ ਦੇ ਨਾਲ ਕਿਸੇ ਹੱਦ ਤੱਕ ਐਗਰੀ ਕਰਦਾ ਜਾਂ ਨਹੀਂ ਕਰਦਾ ਜਦੋਂ ਇੱਕ ਆਮ ਕੋਈ ਵੀ ਬੰਦਾ ਨਵਾਂ ਕੋਈ ਕੰਮ ਕਰਦਾ ਉਹ ਇਹ ਦੇਖਦਾ ਵੀ ਭਾਈ ਇਹ ਰਿਸਰਚ ਕਰੋਗੇ ਪਹਿਲੋਂ ਕੰਮ ਕਿਸੇ ਨੇ ਜੇ ਕੀਤਾ ਹੋਵੇ ਕਿਹੜੇ ਢੰਗ ਨਾਲ ਹੋਇਆ ਕਿੱਦਾਂ-ਕਿੱਦਾਂ ਹੋਇਆ ਇਹ ਕਹਿੰਦੇ ਆ ਸਮਾਚਾਰੀ ਦਾ 2005 ਦੀ ਸਟ੍ਰਾਈਕ ਵਾਲੇ ਵੀਰ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਇਹ ਵੀ ਚੰਗੀ ਤਰ੍ਹਾਂ ਜਾਣਦੇ 1 ਮਹੀਨੇ 'ਚ ਸਾਰੀ ਇੰਡਸਟਰੀ ਐਗਰੀਮੈਂਟ ਹੋਣ ਤੋਂ ਬਾਅਦ ਰੈਜ਼ੋਲਵ ਹੋ ਗਈ ਸੀ ਤੇ ਅੱਜ 3 ਸਾਲ ਹੋ ਚੁੱਕੇ ਆ ਇਹ ਜਦੋਂ ਜਦੋਂ ਵੀ ਗੱਲਬਾਤ ਹੁੰਦੀ ਆ ਜੇ ਚਲੋ ਮੰਨ ਲਓ ਆਪਾਂ ਇਹਨਾਂ ਦਾ ਕਹਿਣਾ ਮੰਨ ਲੈਂਦੇ ਆ ਅਸੀਂ ਇਹਨਾਂ ਨੂੰ ਨਵੰਬਰ ਮਹੀਨੇ 'ਚ ਮਿਲ ਕੇ ਆਇਆ ਜੀ ਮੈਂ ਆਪ ਜਿੱਦਣ ਟੌਕਸਟੋਂ ਹੋਣੀ ਪਾਸ ਵੈਂਟਰ ਹੋਣਾ ਦੇ ਸਾਹਮਣੇ ਮੈਨੂੰ ਕਹਿਤਾ ਵੀ ਭਾਈ ਤੁਸੀਂ ਦਾ ਰੇਡੀਓ ਤੇ ਜਾਂਦੇ ਆ ਸਾਡੇ ਅਗੇ ਮੈਂ ਕਹਾਂ ਜੀ ਵੀ ਰੇਡੀਓ ਤੇ ਜਾਂਦੇ ਕੋਈ ਗੁਨਾਹ ਕਰ ਦਿੱਤਾ ਕੀ ਅਸੀਂ ਕਰਦੇ ਆ ਜੇ ਤੁਹਾਡੇ ਤੇ ਰੇਡੀਓ ਤੇ ਕੋਈ ਗਲਤ ਕਹਿੰਦੇ ਆ ਕਰਦੇ ਉਹਨਾਂ ਨੂੰ ਛੂਟ ਕਾਨੂੰ ਜਿਹੜਾ ਤੁਸੀਂ ਕਰਨਾ ਸਾਡੇ ਨੇ ਉਹਦੇ ਤੋਂ ਬਾਅਦ ਮਰੀਸ਼ੇ ਸਾਹਿਬ ਨੇ ਕੋਈ ਚਿੱਠੀ ਨਹੀਂ ਲਿਖੀ ਜਿੱਦਣ ਹੋੜਾ ਅਸੀਂ মিডিਏ ਵਿੱਚ ਸਾਡੀ ਜਿੱਦਣ ਇਹਨਾਂ ਨੇ ਦੇਖਿਆ ਵੀ ਉਹ ਵੀਡੀਓ ਇੰਨੀ ਦੂਰ ਤੱਕ ਚੱਲ ਗਈ ਆ ਉਸੇ ਦਿਨ ਚਿੱਠੀਆਂ ਲਿਖ ਦਿੱਤੀਆਂ ਹੁਣ ਸਭ ਜਿਹੜੀ ਲਿਆ ਇੱਕ ਮਰੀਜ਼ ਜਿਹੜਾ ਆ ਉਹ ਇੱਕ ਮੌਤ ਦੇ ਬੈੱਡ ਤੇ ਪਿਆ ਆ ਤੇ ਇਹ ਚੱਕ ਚੱਕ ਕੇ ਦਵਾਈਆਂ ਦੇਣ ਦਾ ਉਹ ਨੂੰ ਵੀ ਭਾਈ ਤੂੰ ਆ ਗੋਰੀ ਖਾਲਾ ਤੂੰ ਟਾਈਨਲ ਖਾਲਾ ਤੂੰ ਐਡਵਲ ਖਾਲਾ ਕਮਿਸ਼ਨਰ ਇਹਨਾਂ ਦਾ ਆ ਕਮਿਸ਼ਨਰ ਨੂੰ ਚਿੱਠੀ ਲਿਖਣ ਦੀ ਸੀ ਲੋੜ ਆ ਜੇ ਇੰਨੀ ਇਹਨਾਂ ਨੂੰ ਜ਼ਿਆਦਾ ਛੇਤੀ ਕਰਾਉਣਾ ਇਹ ਤਾਂ ਅਰਜੈਂਟ ਮੀਟਿੰਗ ਕਮਿਸ਼ਨਰ ਕਮਿਸ਼ਨਰ ਦੇ ਨਾਲ ਜਦੋਂ ਮਰਜ਼ੀ ਰੱਖ ਇਹ ਪੋਰਟ ਮੈਟਰੋ ਦੇ ਨਾਲ ਜਦੋਂ ਮਰਜ਼ੀ ਰੱਖ ਹੁਣ ਦੂਜੀ ਗੱਲ ਤੁਸੀਂ ਕਹੀ ਆ ਬਈ ਚੁਣੇ ਹੋਏ ਨਮਾਇੰਦਿਆਂ ਦੀ ਗੱਲ ਸਾਡੇ ਕੋਲ ਔਨ ਰੈਕੋਰਡ ਆ ਵੀ ਅਸੀਂ ਈਮੇਲਸ ਗਤੀ ਸਿੱਧੂ ਉਹਨਾਂ ਨੂੰ ਵੀ ਕੀਤੀਆਂ ਸਾਰੇ ਐਮਪੀਜ਼ ਨੂੰ ਕੀਤੀਆਂ ਸਮਾਂ ਉਹ ਸਾਡੀਆਂ ਯੂਟੀਏ ਦੀ ਜਿਹੜੀ ਵੈਬਸਾਈਟ ਆ ਅੰਡਰ ਕੰਸਟਰਕਸ਼ਨ ਆ ਅਗਲੇ ਹਫ਼ਤੇ ਤੱਕ ਤਿਆਰ ਹੋ ਜਾਣੀ ਆ ਕੱਲੀ ਕੱਲੀ ਉਹਦੇ ਤੇ ਈਮੇਲਸ ਭਾਵਾਂਗੇ ਕਿਹੜੇ ਕਿਹੜੇ ਬੰਦੇ ਨੂੰ आज तक एक्नॉलेजमेंट तक नहीं ਵੀ भी बंदे ने भेजी कल एक एक्नॉलेजमेंट आई है रणदीप राय के ऑफिस से भी कल आई है इन दिनों बाद माड़ी तो माड़ी जगह का भी कोई सिस्टम होवे ना राय साहब बिहार नु बिहार के मुख्यमंत्री नु चिट्ठी लिख देया कि भाई तू इथे नु आ पर जरा ये दी सोच लण वे ਤੁਸੀਂ ਪਹਿਨੋ ਤੁਹਾਡੇ ਆਪਣੇ ਦੀਵੇ ਥਲੇ ਦਾ ਤੁਹਾਡੇ ਨੇਰਾ ਆ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ ਬੰਦੇ ਮਰ ਰਹੇ ਆ ਕਿਸੇ ਇੰਡਫੀ ਦੇ ਵਿੱਚ ਤੁਸੀਂ ਪਤਾ ਨਹੀਂ ਕਿਹੜੇ ਜਹਾਜ਼ ਤੇ ਚੜ ਕੇ ਤੁਸੀਂ ਇਜ਼ਰਾਈਲ ਨੂੰ ਤੁਰਿਆ ਬੜੀ ਆ ਚੀ ਸਾਨੂੰ ਉਦੋਂ ਨੇ ਬੜਾ ਸਟੇਜ ਤੇ ਚੜ ਚੜ ਦਮ ਗੱਜੇ ਮਾਰਦੇ ਸੀ ਸਾਡੀ ਸਰਕਾਰ ਆਲ ਵੀ ਆਹ ਕਰ ਦਾਂਗੇ ਉਹ ਕਰ ਦਾਂਗੇ ਕੀ ਕੀਤਾ ਹੈ ਹੂੰ ਥੈਂਕ ਯੂ ਅੱਛਾ ਮੈਨੂੰ ਇਹ ਦੱਸੋ ਅਖੀਰ ਚ ਕਿ ਹੁਣ ਸੋਲੂਸ਼ਨ ਕੀ ਆ ਤੇ ਕਿੱਥੋਂ ਹੋਊ ਹੁਣ ਡਾਈਂਗ ਇੰਡਸਟਰੀ ਆ ਜਿਹੜੀ ਇਹ ਬੰਦੇ ਆਪਣੇ ਦੁਖੀ ਨੇ ਹੁਣ ਆਖਰੀ ਹਮਲਾ ਜਿਹੜਾ ਉਹ ਕਿਵੇਂ ਵੱਜ ਸਕਦਾ ਗਗਨ ਸਿੰਘ ਦੇਖੋ ਵੀ ਜੀ ਮੈਂ ਉਹਦਾ ਨਾ ਪ੍ਰੈਸ ਕਾਨਫਰੈਂਸ ਦੇ ਵਿੱਚ ਵੀ ਕਿਹਾ ਸੀਗਾ ਵੀ ਹੁਣ ਪਾਣੀ ਸਿਰ ਤੋਂ ਲੰਘ ਚੁੱਕਿਆ ਹੈ ਜਿਹੜੀ ਵੀ ਚੀਜ਼ ਨੂੰ ਅਸੀਂ ਕੋਈ ਵੀ ਗੱਲ ਛੇ ਇਹਨਾਂ ਨੂੰ ਪੁੱਛਦੇ ਆ ਤੇ ਉਹਦਾ ਜਵਾਬ ਗੋਲ-ਮੋਲ ਕਰਕੇ ਦੇ ਦਿੰਦੇ ਜਿੱਦਾਂ ਹੁਣ ਆ ਟੈਗ ਮੂਵਮੈਂਟ ਦੀ ਗੱਲ ਹੋਈ ਸੀ ਹੈ ਜੀ ਅਸੀਂ ਲਿਖ ਕੇ ਭੇਜਿਆ ਇਹਨਾਂ ਨੂੰ ਇਹਨਾਂ ਨੇ ਉਹਦਾ ਜਵਾਬ ਦਿੱਤਾ ਕਹਿੰਦੇ ਜਿਹੜਾ ਕੰਟੇਨਰ ਟਰਕਿੰਗ ਐਕਟ ਆ ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇਦਾਂ ਦੀ ਵੀ ਉਹ ਮੂਵ ਹੋ ਜਾਊਗਾ ਪਰ ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੂੰਗਾ ਵੀ ਉਹ ਜਿਹੜਾ ਐਕਟ ਆ ਉਹ ਕਿਤੇ ਕਿਸੇ ਬਾਹਰਲੀ ਕੰਟਰੀ ਦੇ ਵਿੱਚੋਂ ਆਇਆ ਆ ਉਹ ਕਿਤੇ ਕਿਤੇ ਟਰੰਪ ਨੇ ਬਣਾ ਕੇ ਭੇਜ ਦਿੱਤਾ ਵੀ ਤੁਹਾਡੇ ਤੋਂ ਬਦਲੀ ਨਹੀਂ ਹੋਣਾ ਤੁਸੀਂ ਬਣਾਇਆ ਸਾਰਾ ਕੁਝ ਤੁਸੀਂ ਬਣਾਉਣੇ ਵਾਲੇ ਤੁਸੀਂ ਅੱਜ ਕਿੰਨੇ ਕੋਈ ਪ੍ਰੋਵੀਜ਼ਨ ਹੈ ਵੀ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਅੱਗੇ ਕੀ ਆ ਅੱਗੇ ਹੁਣ ਇੱਕੋ ਹੀ ਚੀਜ਼ ਆ ਜਿੱਦਾਂ ਬਾਦਲਾਂ ਦਾ ਪੰਜਾਬ ਦੇ ਵਿੱਚ ਬਾਈਕਾਟ ਹੋਇਆ ਉਸੇ ਸੇਮ ਲਹਿਜੇ ਦੇ ਨਾਲ ਇਹਨਾਂ ਦਾ ਜਿਹੜੇ ਜਿਹੜੇ ਵੀਰ ਇਹਨਾਂ ਨੂੰ ਪ੍ਰਮੋਟ ਕਰਦੇ ਉਹਨਾਂ ਦਾ ਔਰ ਸਾਟੇ ਲਈ ਮੈਂ ਆਪਣੇ ਵੀਰਾਂ ਨੂੰ ਇਹ ਚੀਜ਼ ਕਹੂੰਗਾ ਕਿ ਤੁਹਾਡੀ ਇੰਡਸਟਰੀ ਦੇ ਵਿੱਚੋਂ ਇੰਨੇ ਬੰਦੇ ਜਿਹੜੇ ਇੱਕ ਵੀਰ ਹੁਣ ਪਿੱਛੇ ਜਾ ਸੁਇਸਾਈਡ ਕਰ ਗਿਆ ਉਦੋਂ ਮੈਂ ਸ਼ਰਯਾਂੰ ਕਿੰਨਾ ਵੀ ਚਰੋ ਠੀਕ ਆ ਕੁਝ ਉਹਨੂੰ ਉਹਨੂੰ ਮੈਡੀਕਲ ਪ੍ਰੋਬਲਮ ਵੀ ਸੀ ਪਰ ਕਿਤੇ ਨਾ ਕਿਤੇ ਨਾਲ ਇਹ ਪ੍ਰੋਬਲਮ ਵੀ ਉਹਦੇ ਨਾਲ ਰਣੀ ਸੀ ਉਹ ਦੇ ਹੋਣ ਕੋਈ ਬੰਦੇ ਇਹ ਚੀਜ਼ ਨੂੰ ਸੋਚ ਕੇ ਇਹ ਸਮਝ ਕੇ ਇੰਨੀ ਕੋਟਪੈਣ ਦੇ باوجود ਫੇਰ ਵੀ ਅਸੀਂ ਉਹ ਚੀਜ਼ ਲਈ ਨਹੀਂ ਤੇ ਮੇਰੇ ਖਿਆਲ ਦੇ ਨਾਲ ਫੇਰ ਅਸੀਂ ਆਪਣੀ ਅਗਲੀ ਜਨਰੇਸ਼ਨ ਨੂੰ ਕੀ ਕੀ ਦੇ ਕੇ ਜਾਣਾ ਬੜੇ ਅਸੀਂ ਦਮ ਗਜੇ ਮਾਰਦੇ ਭਗਤ ਸਿੰਘ ਇੰਦਾ ਸੀ ਅਸੀਂ ਫਲਾਨਾ ਇੰਦਾ ਸੀਗਾ ਗਾਣਿਆਂ 'ਚ ਬੜਾ ਉਹ ਜਿੰਮਾ 'ਚ ਜਾਜਾ ਪੜੇ ਉਹ ਡੋਲੇ ਦਿਖਾਉਂਦੇ ਆ ਕਈ ਕਈ ਵੀਰ ਇਦਾਂ ਦੇ ਆ ਮੈਨੂੰ ਉਹਨਾਂ ਦੇ ਸਰੀਰ ਦੇਖ ਕੇ ਹਾਸਾ ਆਉਂਦਾ ਹੁੰਦਾ ਵੀ ਜਿੱਤੀ ਤੁਹਾਨੂੰ ਪ੍ਰਮਾਤਮਾ ਨੇ ਦੇ ਦਿੱਤੀ ਆ ਤੇ ਤੁਸੀਂ ਦੇ ਉਹ ਵੀਰ ਨੂੰ ਦੇ ਨੇ ਪੁੱਛਿਆ ਕਹਿੰਦਾ ਵੀ ਭਾਈ ਤੈਨੂੰ ਗਾਲਾਂ ਕੱਢ ਕੇ ਚਲ ਗਿਆ ਉਹ ਮੋਰੋ ਕਹਿੰਦਾ ਕੋਈ ਨਹੀਂ ਆਪਣੇ ਮੂੰਹ ਗੰਦਾ ਕੀਤਾ ਮੈਂ ਕਹਿੰਦਾ ਤੂੰ ਹੀ ਚਾਰ ਕੱਢਦਾਨੀ ਆ ਸੀ ਧੰਨਵਾਦ ਕਰ ਸਕਦੇ ਆ ਗਗਨ ਸਿੰਘ ਬਹੁਤ ਚਿਰ ਦੇ ਇਸ ਕੰਮ 'ਚ ਲੱਗੇ ਹੋਇਆ ਹੈ ਹੁਣ ਰੱਬ ਜਾਣਦਾ ਕਿ ਇਹ ਕਦ ਗੱਲ ਠੀਕ ਬੈਠੂ ਅ ਬਸ ਕਮੀ ਉਹੀ ਹੈ ਜਿਹੜੀ ਅਸਲ ਕਮੀ ਹੈ ਤੁਹਾਡੇ ਏਕਤਾ ਦੀ ਘਾਟ ਹੈ ਏਕਤਾ ਜਦ ਤੱਕ ਨਹੀਂ ਹੁੰਦੀ ਤੁਹਾਡਾ ਨਹੀਂ ਸੁਣਿਆ ਜਾਂਦਾ ਪਰ ਵੋਟਾਂ ਵੇਲੇ ਘੱਟ ਬੰਦਿਆਂ ਨੇ ਵੀ ਸੁਣ ਲੈਣ ਬੰਦਾ ਬਲਜੀਤ ਸਿੰਘ ਜੀ ਲਾਈਨ ਨੰਬਰ 5 5 5 ਸਤਿਕਾਰam ਸਸਿਕਾ ਬਾਜੀ ਭਾਈ ਜੀ ਰੋਲਾ ਇਹ ਹੈ ਕਿ ਇਹਨਾਂ ਨੂੰ ਇਕੱਠੇ ਹੋਣਾ ਪੈਣਾ ਹੈ ਤਾਂ ਆਪਸ ਨੇ ਰੋਲਾ ਤਾਂ ਇਹ ਤੁਸੀਂ ਨਾਲ ਸਕੇ ਹੋਰ ਲੋਕਾਂ ਨੂੰ ਰੜਾਓ ਜਿਹੜੇ ਲੋਕਾਂ ਦੇ ਵਿੱਚ ਜਾਓ ਉਹਨਾਂ ਨੂੰ ਦੱਸੋ ਆਉਂਦੀਆਂ ਪ੍ਰੋਬਲਮਾਂ ਕਿ ਵੀ ਇਕੱਠੇ ਹੋਓ ਇਕੱਠੇ ਹੋਓ ਕਿ ਤਾਂ ਤੁਸੀਂ ਜਿਹੜਾ ਤੁਹਾਡੇ ਕੋਲੇ ਆਇਆ ਸੀਗਾ ਉਹ ਤਾਂ ਬਲੇਮ ਗੇਮ ਤੇ ਪਲੇ ਗੇਮ ਕਰ ਗਿਆ ਤੁਹਾਡੇ ਨਾਲ ਬਿਲਕੁਲ ਬਿਲਕੁਲ ਬਿਲਕੁਲ ਉਹਨੇ ਕੁਝ ਕੀਤਾ ਹੈਗਾ ਉਹਨੇ ਤਾਂ ਗਾਹ ਕਹਿਤਾ ਕਿ ਵੀ ਫੈਡਰਲ ਗਵਰਨਮੈਂਟ ਕੋਲੇ ਆ ਜਦੋਂ ਸਾਡੇ ਇੱਥੇ ਪ੍ਰੋਬਲਮ ਪਈ ਸੀ ਫੈਡਰਲ ਕੌਰਮ ਵੀ ਭਜੀਵਰਦੀ ਦੀ ਨਾਲ ਹੀ ਜਿਹੜੇ ਸ਼ਿਪ ਖੜੇ ਨੇ ਨਾਲ ਕੰਪਨੀਆਂ ਸੀ ਜਾਂ ਪੰਜਾਬੀ, ਗੋਰੇ ਸਭ ਇਕੱਠੇ ਬੰਦ ਬਾਈ ਜੀ ਸਾਰੇ ਅਰਮੀਨੀਅਨ, ਈਰਾਨੀ, ਮੈਕਸੀਕੇ ਸਾਡੇ ਦਾ ਇੱਥੇ ਤੱਕ ਹੋ ਗਈ ਗੋਲੀ ਚੱਲ ਗਈ ਸੀ ਨਾ ਪੋਰਟ ਅਥਾਰਟੀ ਦੇ ਬੰਦੇ ਕੁੱਟੇ ਬਹੁਤ ਜਿਹੜੇ ਅੰਦਰ ਕੰਮ ਕਰਦੇ ਨੇ ਜਿਹੜੇ ਗਾਲਾਂ ਕੱਢਦੇ ਹੁੰਦੇ ਸੀ ਨਾ ਉਹ ਵੀ ਘੁੱਟ ਤੇ ਫੜ ਕੇ ਰਾਤ ਨੂੰ 710 ਫ੍ਰੀਵੇ ਤੇ ਨਿਕਲਦਾ ਜੀ ਹਾਰਬਰ ਜਿਹੜਾ ਡਾਊਨਟਾਊਨ ਤੋਂ ਆਈਲੇ ਤੋਂ ਜਾਂਦਾ ਲੌਂਗ ਬੀਚ ਨੂੰ ਉਹਦੇ ਉੱਥੋਂ 에ਰਪੋਰਟ ਸਾਰੀ ਪੋਰਟ ਤੇ ਉੱਥੇ ਤਾਂ ਮਤਲਬ ਕਿ ਹਰੇਕ ਜਿਹੜਾ ਪੁਲ ਸੀਗਾ ਉਹਦੇ ਉੱਤੇ ਬੰਦੇ ਖੜਗੇ ਸੀਗੇ ਤੇ ਵੀ ਕੋਈ ਟਰੱਕ ਨੰਗਾ ਨਹੀਂ ਦੇਣਾ ਜੇ ਲੰਗੂਗਾ ਤਾਂ ਸ਼ੀਸ਼ੇ ਭੰਨ ਦੇਣੇ ਤੇ ਦੇ ਵੀ ਤੇ ਰਾਤ ਨੂੰ ਵੀ ਮਖਰੀਕਿਆਂ ਨੇ ਤੇ ਸਾਰੇ ਜਣਿਆਂ ਨੇ ਰਲ ਕੇ ਡਿਊਟੀਆਂ ਦਿੱਤੀਆਂ ਕਿ ਵੀ ਰਾਤ ਨੂੰ ਅਸੀਂ ਖੜਾਂਗੇ ਅੱਜ ਅੱਜ ਅਸੀਂ ਖੜਾਂਗੇ ਅੱਜ ਅਸੀਂ ਖੜਾਂਗੇ ਉਹਨਾਂ ਦੇ ਜਵਾਕ ਨਾਲ ਬੱਚੇ ਵੀ ਇਵਨ ਆਹ ਖੜੇ ਸੀਗੇ ਤੁਸੀਂ ਕਹਿੰਦੇ ਜੇ ਸ਼ਹਿਰ ਨੰਗੇ ਹੋਵਾਂ ਤਾਂ ਉੱਤੇ ਜਾਲ ਲੱਗੇ ਹੋਇਆ ਉਹਦੇ ਵਿੱਚ ਹੁਣ ਉਹਨਾਂ ਨੇ ਜਾਲ ਲਾਤੇ ਉੱਥੇ ਪਹਿਲਾਂ ਹੈ ਨਹੀਂ ਸੀਗੇ ਉੱਥੋਂ ਪੱਥਰ ਮਾਰੇ ਉਹਨਾਂ ਨੇ ਕਿੱਲਾਂ ਸਿੱਟੀਆਂ ਵੇਖਾਂ ਥੱਲੇ ਤੇ ਵੀ ਟਾਇਰ ਜਿਹੜਾ ਟਰੱਕ ਕੰਟੇਨਰ ਲੈ ਕੇ ਨੰਗੂਗਾ ਉਹਦੇ ਟਾਇਰ ਪਾੜ ਦਿੰਦੇ ਸੀ ਉਹ ਬਹੁਤ ਕੁਝ ਹੋਇਆ ਜੀ ਫੇਰ ਸੁੱਖ ਹੁਣ ਸੁੱਖਾ ਪੂਰਾ ਪੂਰਾ ਹੈ ਜੀ ਪੂਰਾ ਜਿਵੇਂ ਮਰਜ਼ੀ ਕਾਲ ਕਰਕੇ ਪੁੱਛ ਲਿਓ ਚੱਲ ਜਿਉਂਦੇ ਰਹੋ ਤੁਹਾਨੂੰ ਇੱਕ ਦੇ ਹੈ ਹਾਂ ਪੂਰੇ ਇਕੱਠੇ ਹੋਣਾ ਪੈਣਾ ਬਾਈ ਜੀ ਇਹ ਗੱਲ ਤਾਂ ਬਣੂਗੀ ਤੇ ਹੁਣ ਆ ਰਹੀਆਂ ਵੋਟਾਂ ਵੋਟਾਂ ਆ ਰਹੀਆਂ ਨੇ ਬਾਈ ਜੀ ਹੁਣ ਹੁਣ ਟਾਈਮ ਹੈ ਹੁਣ ਉਹਨਾਂ ਨੂੰ ਕਹਿ ਦਿਓ ਕਿ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ ਹੈ ਦੇਖੋ ਤੁਹਾਡਾ ਮਾਗਰ ਭੱਜਿਆ ਥੈਂਕ ਯੂ ਜੀ ਥੈਂਕ ਯੂ ਦਰਨੀਆ ਤੋਂ ਆਲੇ ਪੋਰਟ ਤੇ ਟਰੱਕ ਚਲਾਉਂਦੇ ਬਾਈ ਜੀ ਉੱਥੇ ਦਾ ਫਿਕਰ ਹੈ ਇੱਥੇ ਆਲੇ ਜਿਹੜੇ ਆਲੇ-ਦਾਲੇ ਫਿਰਦੇ ਆ ਉਹਨਾਂ ਨੂੰ ਫਿਕਰ ਹੈ ਕੋਈ ਗੱਲ ਨਹੀਂ ਆਪਾਂ ਆਪਣਾ ਹੋਕਾ ਦੇਣਾ ਦੇਖੀ ਜਾਓ ਕਿਵੇਂ ਗੱਲ ਬਣੂ ਮਨਿੰਦਰ ਸਿੰਘ ਜੀ ਲਾਈਨ ਨੰਬਰ 2 ਜੈ ਜੈ ਸੱਸੀ ਦਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਮੈਂ ਟਾਂਟਾ ਬੋਲਦਾ ਜੀ ਥੋੜਾ ਆਪਰਾਉਂ ਸੁਣੀਦਾ ਫਸਟ ਟਾਈਮ ਗੱਲ ਕੀਤੀ ਹੈ ਥੈਂਕ ਯੂ ਵੀਰੇ ਥੈਂਕ ਇਹ ਤੁਹਾਡੀ ਗੱਲਬਾਤ ਵਧੀਆ ਲੱਗੀ ਮਿਸਟਰ ਨਾਲ ਔਰ ਯੂਨਿਟੀ ਬਹੁਤ ਜ਼ਰੂਰੀ ਹੈ ਬਾਈ ਜੀ ਸਾਡੇ ਇੱਥੇ ਗ੍ਰੇਵਲ ਚ ਪ੍ਰੋਬਲਮ ਆ ਗਈ ਸੀ ਲਾਸਟ ਲਾਸਟ ਇਅਰ ਅਗਸਟ ਚ ਲਿਫਟ ਐਕਸਲ ਦੀ ਪ੍ਰੋਬਲਮ ਕਰਨ ਲੱਗੇ ਸੀ ਐਮ ਪੀਓ ਤੇ 400 700 400 ਕਿ ਦਿਨ ਲੱਗੇ ਸੀਗੇ ਹੂੰ ਔਨ ਚ ਉਹ ਕੈਰੀ ਕਰਦੇ ਸੀਗੇ ਬਜਰੀ ਵਗੈਰਾ ਜਾਂ ਸੈਂਡ ਵਗੈਰਾ ਉੱਪਰੋਂ ਡਾਊਨ ਬਦਲੋ ਡਾਊਨ ਲਾ ਕੇ ਆਪੇ ਲਾਗੀ ਤਾਂ ਉਹ ਲੋਡ ਮੂਵ ਕਰ ਜਾਂਦਾ ਉਸ ਤੋਂ ਬਾਅਦ ਫਿਰ ਸਟ੍ਰਾਈਕ ਕੀਤੀ ਸਟ੍ਰਾਈਕ ਹੀ ਹੱਲ ਧੀਗਾ ਸਾਰੇ ਪਿੱਟਾਂ ਬਲੌਕ ਕਰਤੀਆਂ एमटीओ स्केला सारे ब्लॉक ਕਰਦੇ ਆ ਸੜਕ ਖੜੇ ਕਰਕੇ ਲੈ ਆ ਕੇ ਉੱਥੇ ਹੂੰ ਪੰਜਾਬ ਚ ਇਹਦਾ ਆ ਮਿਨਿਸਟਰ ਮੈਨੂੰ ਮਿਲੋ ਆ ਕੇ ਮੇਰਾ ਮੀਟਿੰਗ ਕਰੋ ਤੁਸੀਂ ਮੈਨੂੰ ਮਿਲੋ ਆਹ ਪ੍ਰੋਬਲਮ ਕਿ ਕਰੋ ਅਰ ਅਭਿਵਿੰਨ ਕੀਤਾ ਪੰਜਾਬ ਦਾ ਚ ਸਾਡੀ ਹੁਣ ਆ ਕਰਕੇ ਉਹ ਬਣੀ ਹੋਈ ਆ ਆਰਗੇਨਾਈਜੇਸ਼ਨ ਹਰ ਮਹੀਨੇ ਮੀਟਿੰਗ ਹੁੰਦੀ ਆ ਔਰ ਸਾਨੂੰ ਉਹ ਆਪਣਾ ਲਾਉਂਦੇ ਆ ਸਾਧਦੇ ਆ ਕੀ ਕੋਈ ਜਿਵੇਂ ਮਾਰੂਲ ਬਰਾਤ ਦੇ ਪਾਸ ਕਰਨ ਦਾ ਗਾਟਾ ਉਹ ਲੈਂਦੇ ਆ ਬਿਜ਼ਨਸ ਤੋਂ ਟੋੜਾ ਤੋਂ ਉਹਨੂੰ ਇਹ ਚੀਜ਼ ਲੱਗਦਾ ਇਹ ਯੂਨਿਟੀ ਜ਼ਰੂਰੀ ਹੈ ਜੀ ਲਾਈਨ ਨੰਬਰ 3 ਹੈਲੋ ਜੀ ਸਤਿ ਸ਼ਕਾ ਹੈਗਾ ਜੀ ਆਪਾਂ ਕੈਨੇਡੀਅਨ ਆ ਕਿਨੇ ਹਿਊਮਨ ਰਾਈਟਸ ਦੀ ਕੰਟਰੀ ਆ ਪਰ ਜਿੱਥੇ ਅਸੀਂ ਕੰਮ ਕਰ ਰਹੇ ਆ ਇੱਥੇ ਡਿਕਟੇਟਰਸ਼ਿਪ ਪੂਰੀ ਹੋ ਰਹੀ ਆ ਇਸ ਵੇਲੇ ਇਕ ਆਦੇ ਹੀ ਉੱਨਰ ਆਇਟਸ ਆਹਰੋ ਤੁਸੀਂ ਬੰਦੇ ਰਫੂਜੀ ਸਾਡਾ ਡਾ ਤੁਹਾਡੇ ਆਪਣੇ ਬੰਦੇ ਇਥੇ ਸੁਸਾਈਡ ਕਰ ਰਹੇ ਆ ਹਾਂਜੀ ਉਹ ਰੋਜ਼ ਛੋਟੀ ਜੀ ਗਾਉਂ ਦਾ ਰੋਜ਼ ਬੰਦਾ ਟਰਮੀਨਲ ਇੰਨਾ ਸ਼ਹਿਰ ਦੇ ਵਿੱਚ ਕਰਾਈ ਹੁੰਦਾ ਉਹ ਰੁਕਦਾ ਨਹੀਂ ਖਾਂ ਖਾਂ ਤੇ ਡਰਗੀ ਮਾਰਦੇ ਆ ਇਹ ਹੁੰਦਾ ਉਹ ਹੁੰਦਾ ਉਹ ਟਰੱਕਰ ਦੇ ਆਗੇ ਫਿਰ ਇੱਕ ਫਲੋ ਪਈ ਆ ਚੈਸੀ ਰੋ ਤੇ 5-600 ਡਾਲਰ ਦੀ ਟੈਗ ਫਿਰ ਇੱਕ ਸਿਗਨਲ ਨਹੀਂ ਚੱਲਦਾ ਉਹਨੂੰ ਰਾਈਟ ਆਫ ਕਰ ਦੇਣਾ ਜਾਂ ਉਹਨੂੰ ਟਿਕਟ ਦੇ ਦੇਣੀ 500 ਦੀ ਇੰਨੇ ਟਰੱਕ ਨੂੰ ਸਿਗਨਲ ਆ ਜਾਂ ਕਿ ਨਹੀਂ ਵੀ ਚੱਲਦਾ ਕਿੱਡੀ ਕੀ ਗੱਲ ਆ ਉਹ ਹਾਂਜੀ ਬਿਲਕੁਲ ਇਹ ਡਰਾਈਵਰ ਦੀ ਗੱਲ ਹੈ ਮੈਂ ਇਹਨਾਂ ਦੀ ਸਾਰਿਆਂ ਦੀ ਠੀਕ ਹੈ ਕਿ ਹਰ ਰੋਜ਼ ਇੱਕ ਪੁਲਿਸ ਵਾਲਾ ਟਿਕਟਾਂ ਦਿੰਦਾ ਖਿਆਲ ਰੱਖੋ ਆਪਣੇ ਆਪ ਦਾ ਖਿਆਲ ਰੱਖੋ ਕੋਈ ਨਾ ਸੋਲੂਸ਼ਨ ਹੋਏਗਾ ਥੈਂਕ ਯੂ ਸਹਿਮ ਜੀ ਲਾਈਨ ਨੰਬਰ 4 ਕੋਈ ਸ਼ੱਕ ਨਹੀਂ ਵੀ ਟਰੱਕਿੰਗ ਦੇ ਰਾਸਤੇ ਲੋਕਾਂ ਦੇ ਹੱਥ ਆ ਇਹ ਇਸ਼ੂ ਹੈ ਇਹ ਬੱਸ ਕੋਸ਼ਾ ਕਰੀ ਮੈਂ ਟਰੱਕ ਚਲਾਇਆ ਮੈਂ ਕੰਟੇਨਰ ਵਿੱਚ ਚਲਾਇਆ ਔਰ ਜਦੋਂ ਦਾ ਮੈਂ ਛੱਡ ਕੇ ਮੈਂ ਛੱਡ ਕੇ ਇਸੇ ਦੀ ਆ ਹਟ ਤੇ ਇਹ ਤੁਸੀਂ ਬਿਲਕੁਲ ਉਹਨਾਂ ਨੂੰ ਬਹੁਤ ਵਧੀਆ ਗੱਲਾਂ ਕੀਤੀਆਂ ਪਰ ਜਾਇਆ ਤਾਂ ਕਹਾਣੀ ਕਿ ਯਾਰ ਸਾਡੇ ਜਿਹੜੀ ਚਾਹੁੰਦੇ ਸੀ ਉਹ ਗੱਲਾਂ ਕੀਤੀਆਂ ਤੇ ਮੈਂ ਜਿਹੜੀ ਗੱਲ ਇੱਕ ਕਾਰਨ ਲੱਗਿਆ ਜੇ ਤਾਂ ਲੀਟਰੀ ਚਮਕਾਉਣ ਨੂੰ ਕੋਈ ਮੋੜੇ ਆ ਰਿਹਾ ਹੈ ਇਸ਼ੂ ਦਾ ਪਤਾ ਨਹੀਂ ਹੈਗਾ ਉਖਲੀ ਜੋ ਟ੍ਰੱਕਾਂ ਦੇ ਵਿੱਚ ਖਰਾਬ ਕਰ ਰਿਹਾ ਕੰਮ ਨੂੰ ਔਰ ਚੱਕਰ ਇਹ ਆ ਵੀ ਜਦੋਂ ਤਾਂ ਇਸ਼ੂ ਆਉਂਦਾ ਹੈਗਾ ਸਰਵਿਸੇਜ਼ ਦਾ ਸਰਵਿਸੇਜ਼ ਉਹ ਕਹਿੰਦੇ ਵੀ ਅਸੀਂ ਅਪਾਇੰਟਮੈਂਟਾਂ ਦੇ ਦਿੰਨੀ ਤੁਹਾਨੂੰ ਔਰ ਅਪਾਇੰਟਮੈਂਟਾਂ ਜਿਹੜੀਆਂ ਲੇਟ ਹੁੰਦੀਆਂ ਉਹ ਪਹਿਲਾਂ ਆਣ ਕੇ ਖੜ ਜਾਂਦੇ ਤੇ ਜਿਹੜੀ ਅਸਲੀ ਅਪਾਇੰਟਮੈਂਟ ਆਉਂਦੀ ਉਹ ਪਿੱਛੇ ਰੁਗਿਆ ਰਹਿੰਦਾ ਔਰ ਸਰਵਿਸ ਕੀ ਹੋਏ ਖਰਾਬਤਾ ਆਪ ਅੱਧੀ ਗੱਲ ਸੀ ਆਪ ਦਾ ਔਰ ਉਹਦੇ ਵਿੱਚ ਇੱਕ ਹੋਰ ਵੱਡਾ ਇਸ਼ੂ ਹੈ ਜਿੰਨਾ ਚਿਰ ਉਹ ਰਿਜੋਲਵ ਪੈਣਾ ਮੈਨੂੰ ਲੱਗਦਾ ਨੇਵਰ ਰਿਜੋਲਵ ਇਸ਼ੂ ਹੈ ਲੋਕਾਂ ਦੇ ਕਿੰਦਾ ਆਪਣੇ ਲੋਕਾਂ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਟਰੱਕਾਂ ਐਨੂੰ ਸੋਚਣਾ ਪੈਣਾ ਵੀ ਹੋਰ ਇੱਥੇ ਬੰਦ ਕਰੋ ਕਿਸੇ ਹਿਸਾਬ ਨਾਲ ਐਂਟਰ ਕਰਨਾ ਜਿਹੜੇ ਬਾਦੂ ਆ ਟਰੱਕਸ ਬਾਹਰ ਕੱਢੋ ਹੇ ਮੜਾ ਕਿਤੇ ਰਿਜ਼ਰਵ ਬਹੁਤ ਵੱਡਾ ਇਸ਼ੂ ਆ ਨੇ ਆਪਣਾ ਇਹ ਪੰਜਾਬੀਆਂ ਦੀ ਇੱਕ ਕੰਮ ਦੀ ਇੰਡਸਟਰੀ ਆ ਸਸੇਕਾਲ ਜੀ ਸਤਿਕਾਰਮ ਜੀ ਸੈਂਬਰ 5 ਅ ਸਸੇਕਾ ਜੀ ਸਸੇਕਾਲ ਮੇਰਾ ਕਹਿਣਾ ਮੈਂ ਟ੍ਰਾਂਟੋ ਤੋਂ ਬੋਲ ਰਿਹਾ ਐਕਚੁਅਲੀ ਵੀ ਸੇਮ ਪ੍ਰੋਬਲਮ ਆਈ ਸੀਗੀ ਜੀ ਗ੍ਰੇਵਲ ਦੇ ਵਿੱਚ ਪਹਿਲਾਂ 12 ਦੇ ਵਿੱਚ ਕਈ ਵਾਰੀ ਹੋਈ ਜੀ ਸਟ੍ਰਾਈਕਾਂ ਤੇ ਪਹਿਲਾ ਤਾਂ ਗੱਲ ਸਾਹਿਬ ਇਹ ਗੱਲ ਆ ਜੀ ਸਾਰੇ ਵੀਰਾਂ ਨੂੰ ਰਿਕੁਐਸਟ ਆ ਪਹਿਲਾਂ ਆਪ ਇਕੱਠੇ ਹੋਵੋ ਜੀ ਇੱਥੇ ਵੀ ਸਾਡੇ ਹੋਇਆ ਕੁਝ ਕੁ ਬੰਦੇ ਸੀਗੇ ਜੀ ਫਿਰ ਜਦੋਂ ਧੱਕਾ ਥੋੜਾ ਜਿਹਾ ਕੀਤਾ ਜੀ ਉਹਨਾਂ ਨੂੰ ਕਿਹਾ ਕਿ ਜੇ ਪਿੱਟਾਂ ਦੇ ਟਰੱਕ ਬੜੇ ਦਾ ਭੰਣਨੇ ਟਰੱਕ ਦੇਖ ਲਓ ਮਰਜ਼ੀ ਆ ਠੀਕ ਆ ਜੀ ਆਪਣੇ ਬੰਦੇ ਸੀਗੇ ਜੀ ਤੁਹਾਨੂੰ ਪਤਾ ਹੀ ਆਪਣੇ ਪੰਜਾਬੀਆਂ ਦਾ ਨਹੀਂ ਤੇ ਫੇਰ ਬਾਈ ਜੀ ਉਹ ਬੰਦੇ ਆ ਕੇ ਬਰਾਬਰ ਖੜੇ ਨੇ ਔਰ ਜਦੋਂ ਸਾਰੇ ਇਕੱਠੇ ਹੋਏ ਨੇ ਹੁਣ ਸਿਚੁਏਸ਼ਨ ਬਣੀ ਆ ਜੀ ਤੁਸੀਂ ਬਲੀਨ ਕਰਿਓ ਪ੍ਰੋਪਰ ਜਿਹੜੀ ਵੀ ਗੱਲਬਾਤ ਹੁੰਦੀ ਆ ਟੇਕ ਟਾ ਸੀ ਬੜਾ ਤੰਗ ਕਰਦੇ ਸੀ ਸਕੇਲਾਂ ਦੇ ਮੁੰਡਿਆਂ ਨੂੰ ਉਹਨਾਂ ਐਕਸਲ ਵੇਡੀਆਂ ਟੈਪਾਂ ਦੇ ਦੇ ਕੇ ਬੜਾ ਬਹੁਤ ਪਰੇਸ਼ਾਨ ਕੀਤਾ ਜੀ ਇਹਨਾਂ ਨੇ ਪਰ ਮੇਰੀ ਤਾਂ ਇੱਕੋ ਹੀ ਬੇਨਤੀ ਆ ਵੀ ਸਾਰੇ ਵੀਰਾਂ ਨੂੰ ਆ ਮੁੰਡਾ ਗਗਨਪ੍ਰਤਾ ਲਾਈਫ ਆ ਜੀ ਮੁੰਡਾ ਪੜਿਆ ਜੇ ਮੂਰੇ ਲੱਗੇ ਹੋਏ ਹੋ ਡਟ ਕੇ ਚੱਲੋ ਜੀ ਬਾਕੀ ਜਿਹੜੇ ਆਪਣੇ ਐਨਪੀਆ ਇਹਨਾਂ ਨੇ ਬਾਈ ਜੀ ਕਿਤੇ ਨਹੀਂ ਖੜਨਾ ਸਾਡੇ ਨਾਲ ਵੀ ਉੱਥੇ ਚੀਜ਼ ਹੋਈ ਆ ਮੇਰਾ ਕਹਿਣਾ ਵਾ ਜੇ ਕੋਈ ਗੋਰਾ ਵਧੀਆ ਜਿਮੜੇ ਤੇ ਜਗਮੀਤ ਨੇ ਬੜਾ ਸਾਥ ਦਿੱਤਾ ਹੀ ਸਾਡਾ ਮੁੰਡਾ ਐਨਡੀਪੀ ਵਾਲਾ ਇਹ ਵੀ ਇੱਥੇ ਕੋਈ ਵਧੀਆ ਬੰਦਾ ਲਾਓ ਨਾਲ ਉਹਨੂੰ ਲੈ ਕੇ ਬਾਈ ਜੀ ਚੱਲੋ ਜਗਮੀਤ ਤੁਸੀਂ ਬਲੀਵ ਕਰਿਓ ਤੁਸੀਂ ਅੱਤ ਸਾਹੀ ਦਾ ਤਰੱਕੀ ਕਰਨੀ ਸਿੰਘ ਨੇ ਕਮੀ ਵੀ ਕੋਈ ਨਹੀਂ ਰਹਿਣੀ ਯਾਦ ਰੱਖਿਓ ਬਸ ਭਾਈ ਇਹ ਹੀ ਰਿਕਵੈਸਟ ਇਹਨਾਂ ਨੂੰ ਤੁਸੀਂ ਵੀ ਕਹੋ ਬਾਰ-ਬਾਰ ਆਪਣਾ ਰੇਡੀਓ ਚੋਂ ਤੁਹਾਡੇ ਰੇਡੀਓ ਤੇ ਆਉਂਦੇ ਨੇ ਜੀ ਕਿ ਤਸੋਰਤ ਆਪਣਾ ਤੇ ਇੱਥੇ ਵੀ ਗੱਲਾਂ ਹੋਈਆਂ ਸੀ ਜਿਹੜਾ ਜਮਨ ਤੁਸੀਂ ਕਹਿੰਦੇ ਵੀ ਉਹ ਬਾਈ ਦੱਸਦੇ ਵੀ ਸਾਨੂੰ ਕਹਿੰਦੇ ਵੀ ਤੁਸੀਂ ਰੇਡੀਓ ਤੇ ਗਏ ਆ ਹੁਣ ਅਸੀਂ ਆਪਣਾ ਮੁੱਤਲ ਅਖੇ ਤਾਂ ਰੱਖੀਏ ਕਿੱਥੇ ਜੀ ਜੇ ਰੇਡੀਓ ਤੇ ਜਾਈਏ ਜਿਹਨੂੰ ਸੁਣਦੇ ਨੇ ਲੋਕ ਅਸੀਂ ਤਾਂ ਉੱਥੇ ਹੀ ਜਾਣਾਂਗੇ ਮਹਾ ਫਿਕਰੇ ਕੋਈ ਨਹੀਂ ਆਪਾਂ ਤਾਂ ਪ੍ਰਵਾਹ ਹੀ ਨਹੀਂ ਮੈਨੂੰ ਤਾਂ 5 ਸਾਲ ਹੋ ਗਏ ਲੱਗੇ ਨੂੰ ਆਪਾਂ ਤਾਂ ਸਰੰਗੀ ਨਿਤ ਵਜਾਉਂਦੇ ਆ ਨਹੀਂ ਨਹੀਂ ਬਾਈ ਜੀ ਕੋਈ ਤਾਂ ਤੁਹਾਨੂੰ ਸਾਨੂੰ ਪਤਾ ਜੀ ਓਕੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਹੁਣ ਕਰੀਏ ਕੀ ਇਹ ਜਿਨ੍ਹਾਂ ਨੂੰ ਜਿਤਾਇਆ ਹੋਇਆ ਝੋਲੇ ਇਹਨਾਂ ਦੇ ਵਧੀਆ ਪਾਇਨੇ ਸਿੰਘ ਚੋਪੜੇ ਨੇ ਗੋਡਣੀ ਜੜੇ ਲਾਉਂਦੇ ਜਦ ਮਾੜੀ ਜੀ ਪੰਜਾੜੀ ਰੱਖਦੇ ਆ ਵੀਜ਼ਿਆਂ ਦੀਆਂ ਚਿੱਠੀਆਂ ਲੈ ਲਓ ਜਿੰਨੀਆਂ ਮਰਜ਼ੀ ਸਾਈਨ ਕੀਤੇ ਪਏ ਨੇ ਮਾਮੇ ਭੂਆ ਦੇ ਜੋ ਵੀ ਜਿਹਨੇ ਸੱਦਣਾ ਉਹਦੇ ਖਾਸ ਨੇ ਜਿਹੜੇ ਲਿਉਣੇ ਨੇ ਉਹਨਾਂ ਲਈ ਖਾਸ ਨੇ ਫੇਰ ਤਾਂ ਮinistr ਪਰਮਿਟ ਵੀ ਵਰਤਦੇ ਆ ਜਿੱਦਣ ਫਿਰ ਆਪਣਾ ਕੰਮ ਹੋਵੇ ਨਹੀਂ ਆਉਂਗਾ ਉਹਨੂੰ ਮਿਲਣਾ ਇਹਨੂੰ ਮਿਲਣਾ ਮੈਂ ਹੁਣ ਇੱਥੇ ਆ ਮੈਂ ਹੁਣ ਉੱਥੇ ਆ ਹੁਣ ਕਰਦੇ ਆ ਪ੍ਰਾਇੋਰਟੀ ਤੇ ਕਰਦੇ ਆ ਝੂਠਾ ਦਾ ਪਲੰਦਾ ਏ ਆ ਜਿੱਦਣ ਕੋਈ ਬਣ ਜਾਂਦਾ ਨਾ ਘੁੰਮਣ ਵਾਲੀ ਕੁਰਸੀ ਤੇ ਬਣ ਜਾਂਦਾ ਉਹ ਕਹਿੰਦਾ ਬਾਕੀਆਂ ਟਿੱਡੀ ਪਪਲੀ ਨੇ ਆ ਜਿਹੜੇ ਪੈਰਾਂ 'ਚ ਬੈਠਿਆ ਹੁੰਦੇ ਇਹਨਾਂ ਨੂੰ ਫੜ ਫੜ ਕੇ ਲਾ ਲਓ ਐਤ ਹਰਪਾਲ ਸਿੰਘ ਕੰਗਜੀ ਲਾਈਨ ਨੰਬਰ 2 ਬਸ ਬਸਿਕਾ ਗੱਲ ਸਾਥੀ ਸਤਿਕਾਰ ਜੀ ਇਹ ਕਹਾਣੀ ਜਿੱਦਾਂ ਕਾਲਰ ਨੇ ਪਹਿਲਾਂ ਗੱਲ ਕੀਤੀ ਕਿ ਟਰੱਕ ਬਾਦ ਦੀ ਰੋਗ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਦੂਜੀ ਗੱਲ ਜਿਹੜੀ ਗੱਲ ਕਰਦੇ ਹਨ ਆਪਾਂ ਇੱਕ ਆਬਦੇਰਾ ਦਿਖਾਇਆ ਇੰਨੀ ਗੱਲ ਨਹੀਂ ਇੱਕਾ ਪਿਛਲੇ ਬਹੁਤ ਦਿਖਾਇਆ ਇਹਨਾਂ ਨੇ ਆਪਣੇ ਬੰਦਿਆਂ ਨੇ ਐਡੀ ਨਹੀਂ ਗੱਲ ਪਰ ਜਿਹੜਾ ਹਨ ਰੈਸਿਜ਼ਮ ਹੋ ਰਿਹਾ ਪੈ ਹੀ ਨਹੀਂ ਰਹੇ ਉੱਥੇ ਜਿਹੜੇ ਹਨ ਉੱਥੇ ਦਾ ਟਰੱਕਾਂ ਦਾ ਵਢੀਲੇ ਸਮਝਦੇ ਆ ਉਹਦੇ ਜਿਹੜੇ ਗੋਰੇ ਆ ਉੱਥੇ ਮੈਂ ਆਪ ਥੋੜਾ ਜਿਹਾ ਕੰਟੇਨਰ ਚਲਾਇਆ ਮੈਂ ਤਾਂ ਇੱਕ ਦੋ ਵਾਰ ਲੜ ਲੜ ਕੇ ਆ ਗਿਆ ਮੈਂ ਕਿਹਾ ਨਹੀਂ ਬਣ ਦੇਣਾ ਨਾ ਪਰ ਤੁਹਾਨੂੰ ਮੈਂ ਚਲ ਦੱਸਦਾ ਜੀ ਤੇ ਕਸਾ ਦੀ ਗੱਤੀ ਗਈ ਆ ਵੱਧ ਜੇ ਮੈਨੂੰ ਇੱਕ ਹੱਲ ਜੇ ਮੈਨੂੰ ਮਹਾਰਾਜਾ ਲੱਗਦਾ ਜੇ ਤਾਂ ਨਾ ਜਿਵੇਂ ਡਰਾਈਵਰ ਵੀ ਪੈਸੇ ਬਹੁਤ ਸੋਨੇ ਉਹਨਾਂ ਦੇ 25 ਡਾਲਰ ਘੰਟੇ ਲੈਂਦੇ ਆ ਜੇ ਓਨਰ ਆਪਣੇ ਖਾੜੇ ਕਰਨ ਵੇਚਣ ਜਾਂ ਵਾਟਾ ਵਰ ਕੀ ਕਰਮ ਇਹ ਟਰਾਕੀ ਘਟਾ ਲੈਣ ਰਿਪੋਰਟ ਤੋਂ ਕਾਮੇ ਮਹੌਰਾ ਰਿਪੋਰਟ ਦਾ ਕਾਮੇ ਨਾ ਹੋਣਾ ਲੈ ਆਪੇ ਮੈਂ ਤਾਂ ਆ ਜੇ ਡਰਾਈਵਰੀ ਦੀ ਗੱਤ ਆਉਣ ਓਨਰ ਘੱਟ ਪਣ ਗਈ ਹੈ ਨਾ ਸਾਜਵਾ ਬਹੁਤ ਹੰਪਟ ਦਿਖਾ ਦੇ ਲੈ ਬਈ 20000 ਦੀ ਚੈੱਕ ਲੈ ਵੀ ਜੀ ਇਦਾਂ ਨੂੰ ਇਦਾਂ ਨਹੀਂ ਹੈ ਸਾਜਵਾਗ ਨਹੀਂ ਦਿਖਾਣਗੇ ਇੱਥੇ ਜੋ ਪੜਦਾ ਉਹ ਦਸਤਾ ਡਰਾਈਵਰ ਵੀ ਪੈਸੇ ਹੌਲੇ ਮੰਗਦੇ ਆਪਣੇ ਟਰੱਕ ਖੜੇ ਕਰਨ ਡਰਾਈਵ ਨਹੀਂ ਜਾ ਜਾਣ ਤੇ ਪੋਰਟ ਵਾਲਿਆਂ ਦਾ ਆਪਾਂ ਹੱਥ ਤੇ ਮੈਨੂੰ ਲੱਗਦਾ ਵੀ ਟਰੱਕਾਂ ਦੀ ਬਹੁਤ ਟਰੱਕ ਵੀ ਕੋਈ ਸ਼ੱਕ ਨਹੀਂ ਇੱਕ ਘੱਟ ਬੰਦ ਕਰਨਾ ਪਿਆ ਉਹ ਵਾਕੇ ਟਰੱਕਾਂ ਨੂੰ ਬੰਦ ਕੁਛ ਨਹੀਂ ਗਏ ਖਾਸ ਕਰਕੇ ਗੋਦੇ ਧੰਨਵਾਦ ਜੀ ਧੰਨਵਾਦ ਜੀ ਥੈਂਕ ਯੂ ਮਨਿਸਟਰ ਦਾ ਕੋਈ ਪਿਆਰ ਕਰਨ ਵਾਲਾ ਸੁਣਦਾ ਉਹ ਦੱਸ ਦਿਓ ਵੀ ਪਿਛਲੇ 20 ਮਿੰਟ ਦੇ ਵਿੱਚ 30 ਬੰਦੇ ਬੋਲ ਕੇ ਗਏ ਆ ਸਾਰੇ ਪਿੱਟਦੇ ਆ ਮਖਮਲੀ ਗੱਲਾਂ ਨਾਲ ਕੱਖ ਨਹੀਂ ਬਣਨੀ ਐ ਸ਼ਫਾਸਪਿੰਡਰ ਬਹੁਤ ਵਧੀਆ ਬੋਲਦਿਆ ਹੌਲੀ ਬੋਲਦਿਆ ਅੰਗਰੇਜ਼ੀ ਬਹੁਤ ਵਧੀਆ ਬੋਲਦਿਆ ਉਹ ਗੱਲਾਂ ਬਹੁਤ ਸੋਹਣੀਆਂ ਕਰਦੇ ਪਰ ਐਕਸ਼ਨ ਦੀ ਜ਼ਰੂਰਤ ਐ ਦੋਬਿਆਂ ਤਾਂ ਸਾਡਿਆਂ ਨੇ ਨਾ ਜਿਹੜੇ ਫੈਰੀ ਲੈ ਕੇ ਗਏ ਛਾੜ ਕੇ ਹੁਣ ਆ ਕੇ ਦੱਸਣ ਮਾੜਾ ਜਾ ਕੀਤਾ ਕੀ ਆ ਪੰਜਾਬੀ ਚ ਬੋਲ ਕੇ ਕਿ ਅਸੀਂ ਆਹ ਕੀਤਾ ਪਿਛਲੇ 18 ਮਹੀਨੇ ਚ ਜਦੋਂ ਯੂਨੀਅਨ ਵਾਲੇ ਰਹਿ ਤਾ ਕਮਰੇ ਚ ਬਹਿ ਗਏ ਦੋ ਕਿਤੇ ਭੱਜੇ ਫਿਰ ਦੋ ਕਿਤੇ ਫੋਟੋ ਆਪਾਉਣ ਆਲਾ ਹੁਣ ਅਸੀਂ ਮੂਰੇ ਹੋਣਾ ਅਸੀਂ ਕੀਤਾ ਜਦ ਆਪਣੀ ਆਪਣੀ ਵਾਰੀ ਆ ਉਦੋਂ ਉਹਨਾਂ ਦੀ ਵਾਰੀ ਸੀ ਤੁਹਾਡੇ ਕੋਲ ਵਾਰੀ 3 ਮਹੀਨਿਆਂ ਨੂੰ ਆਉਣੀ ਹੈ ਖਿਆਲ ਕਰਿਓ ਹੁਣ ਜੇ ਹੁਣ ਵੀ ਉਰਦੂ ਲੱਗ ਗਿਆ ਨਾ ਯਾਦ ਰੱਖਿਓ 4 ਸਾਲ ਅਗਲੇ ਬਹੁਤ ਦੂਰ ਹੈ 22 ਬਹੁਤ 21 ਬਹੁਤ ਦੂਰ ਹੈ ਵਪਾਰਕ ਸੰਦੇਸ਼ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਅੱਜ ਸ਼ੀਸ਼ੇ ਦੀ ਗੱਲ ਕਰਨੀ ਹੈ ਕਿ ਸ਼ੀਸ਼ਾ ਕਹਿੰਦੇ ਐ ਕਿ ਪਿੰਡਾਂ ਚ ਸ਼ੀਸ਼ਾ ਕਹਿੰਦੇ ਐ ਅਜ਼ਲਾ ਤੋਂ BC ਬਿਫੋਰ ਕ੍ਰਾਈਸਟ ਤੋਂ ਪਹਿਲਾਂ ਲੋਕ ਪਹਿਲਾਂ ਤਿਆਰ ਹੋ ਕੇ ਪਾਣੀ ਦੇ ਵਿੱਚ ਆਪਣੀ ਝਲਕ ਦੇਖਦੇ ਸੀ ਖੜੇ ਪਾਣੀ 'ਚ ਫਿਰ ਹੌਲੀ-ਹੌਲੀ ਜਵਾਲਾਮੁਖੀ ਦੇ ਜਿਹੜੇ ਪੱਥਰ ਨੇ ਉਹਨਾਂ ਨੂੰ ਐਨ ਕਸਾ ਕੇ ਚਿੱਟਾ ਕਰਕੇ ਉਹਦੇ ਜਮੂਹ ਦੇਖਣ ਲੱਗੇ ਫਿਰ ਧਾਤਾਂ ਨੂੰ ਪਾਲਿਸ਼ ਕਰ ਕਰਕੇ ਕਰ ਕਰਕੇ ਕਰ ਕਰਕੇ ਦੇਖਣ ਲੱਗੇ ਫਿਰ ਜਰਮ ਦੇ ਵਿੱਚ ਜਨੀ ਦੇ ਵਿੱਚ ਸੌਰੀ ਮੈਂ ਸ਼ਬਦ ਜਰਮਨ ਕਹਿ ਦੇਣਾ ਉਹ ਗੱਲ ਇਹ ਪੁੱਠਾ ਪੰਗਾ ਪੈ ਗਿਆ 60ਵੇਂਾਂ 'ਚ ਮਾਮੇ ਉੱਥੇ ਆਵੜੇ ਉਹ ਜਰਮਨ ਜਰਮਨੇ ਕਹਦੇ ਹੁੰਦੇ ਸੀ ਉਹੀ ਗੱਲ ਮੂੰਹ ਤੇ ਚੜ ਗਈ ਜਰਮਨੀ ਦੇ ਵਿੱਚ ਇਹ ਸ਼ੀਸ਼ਾ ਬਣਾਇਆ ਗਿਆ ਸ਼ੀਸ਼ਿਆਂ ਦੀ ਜਿਹੜੀ ਗੱਲ ਹੈ ਉਹ ਬੜੀ ਮੈਂ ਹੁਣ ਤੋਂ ਪਿਛਲੇ ਨੂੰ ਛੱਡ ਤੇ ਹੁਣ ਚੱਲੀਏ ਸਮਾਂ ਘਟਦਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ 40-50 ਸਾਲ ਪਹਿਲਾਂ ਬਹੁਤ ਘੱਟ ਸ਼ੀਸ਼ੇ ਹੁੰਦੇ ਬਹੁਤ ਮੈਂ ਹੁਣ ਵੀ ਵੇਖੇ ਬਿਨਾ ਸ਼ੀਸ਼ੇ ਤੋਂ ਪੱਗ ਬੰਨ ਲੈਂਦੇ ਲੋਕ ਬਿਨਾ ਸ਼ੀਸ਼ੇ ਤੋਂ ਬੀਬੀਆਂ ਵਾਲ ਬੌਂਦੀਆਂ ਹੁਣ ਤਾਂ ਸ਼ੀਸ਼ੇ ਦੇ ਮੂਹਰੇ ਖੜ ਕੇ ਵਾਲ ਬੌਂਦੀਆਂ ਚੀਰਮੀ ਬੀਬੀਆਂ ਕੱਢਦੀਆਂ ਸ਼ੀਸ਼ੇ ਬਹੁਤ ਅਲੱਗ-ਅਲੱਗ ਕਿਸਮ ਦੇ ਹੁੰਦੇ ਸ਼ਿੰਗਾਰਦਾਨੀਆਂ ਪੁਰਾਣੀਆਂ ਬੇਬੇ ਉਹਨਾਂ ਦੀਆਂ 50 ਸਾਲ ਪੁਰਾਣੀਆਂ ਜਦੋਂ ਸ਼ਿੰਗਾਰਦਾਨੀ ਖੁੱਲਣੀ ਉਹਦੇ ਵਿੱਚ ਛੋਟਾ ਜਿਹਾ ਸ਼ੀਸ਼ਾ ਹੁੰਦਾ ਹੁਣ ਤਾਂ ਸ਼ੀਸ਼ੇ ਬਹੁਤ ਨੇ ਹੁਣ ਤਾਂ ਬੀਬੀਆਂ ਅਲੱਗ ਬੈਗ ਚ ਪਾ ਕੇ ਰੱਖਦੀਆਂ ਛੋਟਾ ਜਿਹਾ ਗੱਡੀ ਚਲਦੀ-ਚਲਦੀ 'ਚ ਸ਼ੀਸ਼ਾ ਖੋਲ ਕੇ ਟੱਕ ਦੇ ਕੇ ਬੰਦ ਕਰਕੇ ਉਹਦੇ 'ਚ ਦੇਖ ਲੈਂਦੀਆਂ ਇਹ ਉਹਦੇ ਵਿੱਚ ਕਾਰ ਵਾਲੇ ਸ਼ੀਸ਼ੇ ਨੇ ਅਲੱਗ-ਅਲੱਗ ਕਿਸਮ ਦੇ ਹੋਰ ਸ਼ੀਸ਼ੇ ਨੇ ਟਰੱਕਾਂ ਦੇ ਆਲਦਾਲੇ ਸਾਡੀ ਇੰਡਸਟਰੀ ਦੇ ਵਿੱਚ ਜਿਹੜਾ ਮੇਰੇ ਨਾਲ ਦਾ ਰੋਜ਼ਮਰੀ ਜ਼ਿੰਦਗੀ ਸ਼ੀਸ਼ੇ ਹੈ ਹੀ ਕੱਖ ਨਹੀਂ ਕਾਰਾਂ ਨੇ ਉਹ ਡਰਾ ਮਿਰਰ ਤੋਂ ਬਿਨਾ ਨਹੀਂ ਚੱਲਦੀਆਂ ਸ਼ੀਸ਼ਾ ਸ਼ੀਸ਼ਾ ਸ਼ੀਸ਼ਾ ਸ਼ੀਸ਼ਾ ਪਰ ਸ਼ਿੰਗਾਰ ਲਈ ਆਪਾਂ ਨੂੰ ਸ਼ੀਸ਼ੇ ਦੀ ਬੜੀ ਜ਼ਰੂਰਤ ਸੀ ਸ਼ੀਸ਼ੇ ਤੇ ਵੇਖ ਕੇ ਫਦੰਦੇ ਕੱਢੇ ਜਾਂਦੇ ਸ਼ੀਸ਼ੇ ਪੱਗਾਂ ਵਾਲੇ ਮੁੰਡੇ ਜਦ ਪਟਿਆਲਾ ਸ਼ਾਈ ਸ਼ੁਰੂ ਹੋਈ 80 ਮਿਆਂ ਦੇ ਵਿੱਚ ਦੋ ਦੋ ਸ਼ੀਸ਼ੇ ਇੱਕ ਮੂਹਰੇ ਦੋ ਸ਼ੀਸ਼ੇ ਪਿੱਛੇ ਪਿਛਲੀ ਕੰਧ ਦੇ ਜਿੱਥੋਂ ਪਿਛਲੇ ਲੜ ਦੇਖਣਾ ਕਾਲਜ ਨੂੰ ਜਦ ਤਿਆਰੀ ਹੋਣੀ ਘੰਟਾ ਘੰਟਾ ਸ਼ੀਸ਼ੇ ਦੇ ਮੂਹਰੇ ਹਰੇਕ ਦੇ ਘੰਟਾ ਆਉਣ ਵਾਲੇ ਦੇ ਬਾਪੂ ਨੇ ਕਹਿਣਾ ਤੇਰਾ ਬਣੂ ਕੀ ਹਲੇ ਤਾਂ ਪੜਦਾ ਹੀ ਹੈ ਜੇ ਕਿਤੇ ਲੱਗ ਗਿਆ ਕੁਛ ਫਿਰ ਤੇਰੀ ਪੱਗ ਦਾ ਕੀ ਬਣੂ ਘੰਟਾ ਘੰਟਾ ਪੱਗ ਨੂੰ ਪਹਿਲਾ ਪਿੰਡਾ ਚ ਇੱਕੇ ਸ਼ੀਸ਼ਾ ਹੁੰਦਾ ਕਿਉਂਕਿ ਆ ਜਿਹੜੇ ਦੂਜੇ ਹੁਣ ਹਰ ਜਗ੍ਹਾ ਰੂਮ ਚ ਆਪਣਾ ਆਪਣਾ ਫਿਰ ਹੁਣ ਤਾਂ ਕੰਧਾਂ 'ਚ ਲਾਏ ਹੋਇਆ ਪਹਿਲਾਂ ਛੋਟਾ ਸ਼ੀਸ਼ਾ ਹੁੰਦਾ ਉਹਨੂੰ ਰੱਖਣੇ ਚ ਕਿਤੇ ਰੱਖ ਲੈਣਾ ਮੇਜ਼ ਪੋਛ ਤੇ ਬੈਠ ਕੇ ਪੱਗ ਮੰਨਣੀ ਮੂਹਰੇ ਰੱਖ ਲੈਣਾ ਮੇਜ਼ ਤੇ ਜਾਂ ਫਿਰ ਕੰਸ ਤੇ ਰੱਖ ਲੈਣਾ ਬੀਬੀਆਂ ਸ਼ੀਸ਼ੇ 'ਚ ਸਿਰ ਨਾ ਤਿਆਰ ਨਾ ਹੁੰਦੀਆਂ ਬਹੁਤ ਸ਼ਰਮ ਮੰਨੀ ਜਾਂਦੀ ਛੋਟੇ ਸ਼ੀਸ਼ੇ ਦੀ ਇੱਕ ਛੜਿਆ ਦਾ ਸ਼ੀਸ਼ਾ ਹੁੰਦਾ ਉਹ ਟਿਪੀਕਲ ਬਾਹਰਲੇ ਵਿੜੇ ਪੈਰਾਂ ਪਾਰ ਬਹਿੰਦੇ ਹੱਥ ਚ ਸ਼ੀਸ਼ਾ ਹੁੰਦਾ ਜਿਹੜਾ ਐਨ ਹੱਥ ਚ ਗੋਲ ਹਥੇਲੀ ਚ ਗੋਲ ਸ਼ੀਸ਼ਾ ਫੜਿਆ ਹੁੰਦਾ ਤੇ ਫੇਰ ਮੋਚਣਾ ਤੇ ਗੱਲ ਤੇ ਮੁੱਛ ਤੇ ਅੰਦਰੋਂ ਜੀਬ ਨਾਲ ਹੋੜਾ ਦੇ ਕੇ ਗੱਲ ਬਾਹਰੋਂ ਕਢਣੀ ਤੇ ਫੇਰ ਧੁੜਤਦੇ ਹੀ ਲੈ ਕੇ ਉਹਦੇ ਚ ਕਿਸੀਸ ਲੈ ਕੇ ਫੇਰ ਮੋਚ ਦੇ ਨਾਲੋਂ ਧੂਣਾ ਕਿੱਟਿਆਂ ਤੇ ਨਿਤ ਜ਼ੋਰ ਲਾਉਣਾ ਸ਼ੀਸ਼ਿਆਂ ਦੀ ਗੱਲ ਚੱਲਦੀ ਮਾਮਾ ਜਿਹੜੀਆਂ ਸੱਸਾਂ ਨੂੰ ਹਾਂ ਕਹਿੰਦੀਆਂ ਸ਼ੀਸ਼ੇ ਮੂਹਰੋ ਹੀ ਉੱਠਦੀ ਇਹਨੇ ਕੀ ਕਰਨਾ ਮੁੰਡੇ ਨੂੰ ਜੋ ਜ਼ੋਰ ਪਾਉਂਦੀਆਂ ਮੁੰਡੇ ਸ਼ੀਸ਼ਾ ਭੰਨ ਦਿੰਦੇ ਕਈ ਵਾਰ ਮਾਂ ਸ਼ੀਸ਼ਾ ਭੰਨਦੀ ਦਿਲ ਟੁੱਟ ਜਾਂਦਾ ਸ਼ੀਸ਼ੇ ਦਾ ਤੇ ਦਿਲ ਦਾ ਬਹੁਤ ਮੇਲ ਰੱਖਿਆ ਸ਼ੀਸ਼ੇ ਦੇ ਆਲੇ ਦਾਲੇ ਕਹਾਣੀ ਬਹੁਤ ਚੱਲਦੀ ਸ਼ੀਸ਼ੇ ਨੂੰ ਦੇਖ ਕੇ ਲੋਕ ਪਿਆਰ ਹੁੰਦੇ ਕਿੱਥੋਂ ਗੱਲਾਂ ਚੱਲੀਆਂ ਖੜੇ ਪਾਣੀ 'ਚ ਆਪਣਾ ਮੂੰਹ ਦੇਖਦੇ ਦੇਖਦੇ ਲੋਕ ਹੁਣ ਹਰ ਘਰ ਦੇ ਵਿੱਚ ਹਰ ਰੂਮ ਦੇ ਵਿੱਚ ਡਰੈਸਿੰਗ ਤੇ ਹੁਣ ਤਾਂ ਇੱਥੇ ਤਾਂ ਕੰਮ ਹੀ ਬਹੁਤ ਸੂਤਾ ਬਾਥਰੂਮ 'ਚ ਬਣਿਆ ਬਣਾਇਆ ਹੀ ਕੱਦ ਤੇ ਸ਼ੀਸ਼ਾ ਨਾਉਂਦਾ ਵੀ ਬੰਦਾ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖ ਸਕਦਾ ਇੱਥੇ ਵੇ ਸਾਬਣ ਕਿਤੇ ਗਰਦਨ ਤੇ ਰਹਿ ਤ ਨਹੀਂ ਗਿਆ ਪਿੱਛੇ ਤੇ ਉੱਥੇ ਹੀ ਤਿਆਰ ਆਪਾਂ ਹੋ ਜਾਂਦੇ ਆ ਪਰ ਜਿਹੜੇ ਪੰਜਾਬ ਚ ਸਾਡੇ ਸ਼ੀਸ਼ੇ ਹੁੰਦੇ ਚਵਾਰੇ ਚ ਇੱਕ ਸ਼ੀਸ਼ਾ ਫਿਰ ਜਿਹੜਾ ਸ਼ਿੰਗਾਰਦਾਨ ਜਿਹੜਾ ਡ्रेसਿੰਗ ਟੇਬਲ ਜਿਹਨੂੰ ਕਹਿੰਦੇ ਉਹਦੇ ਮੂਰੇ ਸਟੂਲੀ ਜੀ ਇੱਕ ਹੁੰਦੀ ਉਹਦੇ ਤੇ ਬਹਿ ਕੇ ਲੋਕ ਪੱਗਾਂ ਬੰਨ੍ਹਦੇ ਸਰਦਾਰਨੀ ਉਹਦੇ ਤੇ ਬਹਿ ਕੇ ਆਪਣੇ ਆਪ ਨੂੰ ਤਿਆਰ ਕਰਦੀ ਪਰ ਅਸਲ ਜਿਹੜਾ ਚੱਕ ਮੈਂ ਛੁੱਲੇ ਵਾਲਾ ਸ਼ੀਸ਼ਾ ਹੁੰਦਾ ਸੀ ਜਿਹੜਾ ਚੱਕ ਕੇ ਜਿੱਧਰ ਮਰਜ਼ੀ ਲੈ ਜਾਓ ਉਹ ਬਹੁਤ ਵਧੀਆ ਹੁੰਦਾ ਸੀ ਇੱਥੇ ਵੀ ਜਲ ਮਨਾਈ ਕਰਦੇ ਆ ਪੂਰੀ ਬੰਦੇ ਜਾ ਕੇ ਬਹਿੰਦੇ ਆ ਸਾਰਾ ਕੁਝ ਦਿਖਾ ਦਿਖੂ ਕੇ ਫਿਰ ਪਿਛਲੀ ਗਰਦਨ ਵਾਲੀ ਜਿਹੜੀ ਪਿੱਛੋਂ ਵਿਚੀ ਚੱਕੀ ਹੁੰਦੀ ਆ ਸ਼ੀਸ਼ਾ ਪਿੱਛੋਂ ਘੁਮਾ ਕੇ ਉਤੇ ਤੇ ਫਿਰ ਸੇਮੇ ਵਰਗੇ ਲੋਕਾਂ ਵਾਲੇ ਠੀਕ ਆ ਫਿਰ ਆ ਪਿੱਛੇ ਤੇਜ਼ ਘਮਾਉਂਦੇ ਜਿਹੜਾ ਹੱਥ ਆਲਾ ਸ਼ੀਸ਼ਾ ਹੱਥਲਾ ਸ਼ੀਸ਼ਾ ਜਿਹੜਾ ਗੋਲ ਸ਼ੀਸ਼ਾ ਹੁੰਦਾ ਬਾਹਲੋ ਵਾਲਾ ਉਹਦੇ ਆਰਗੇ ਮੌਜ ਬਾੜੀ ਸੀ ਮੁਠੀ 'ਚ ਆ ਜਾਂਦਾ ਤੇ ਬਸ ਫਿਰ ਉਹ ਮੂੰਹ ਦੇ ਕੋਲ ਖੱਬੇ ਸੱਜੇ ਇਹ ਪੁਰਾਣੇ ਸਮੇਂ 'ਚ ਬੀਬੀਆਂ ਵੀ ਉਹ ਛੋਟੇ ਸ਼ੀਸ਼ੇ ਨਾਲ ਮੂੰਹ ਆਪਣਾ ਇੱਕ ਲੈ ਕੇ ਫੰਬਾ ਜਿਆ ਚੋਪੜੀਆਂ ਵੇਖਦੀਆਂ ਦੰਦੇ ਕੱਢਦੀਆਂ ਪੱਗ ਦੇ ਸ਼ੀਸ਼ੇ ਦੀ ਬਹੁਤ ਤਿਆਰੀ ਸ਼ੀਸ਼ੇ ਤੇ ਚਾਂਦੀ ਦੀ ਝਾਲ ਜਿਹੜੀ ਹੈ ਪਰਤ ਪਤਲੀ ਫੇਰ ਕੇ ਬਹੁਤ ਫੈਂਸੀ ਸ਼ੀਸ਼ੇ ਅਮੀਰਾਂ ਦੇ ਘਰ ਦੇ ਪੁਰਾਣੇ ਸਰਦਾਰਾਂ ਦੇ ਜਿਹੜਾ ਮਹਾਰਾਜਾ ਹਾਲੇ ਪਟਿਆਲੇ ਵਾਲੇ ਦੇ ਰਿਸ਼ਤੇਦਾਰ ਬਣ ਗਏ ਸਨਖ ਸਾਰਾ ਪੰਜਾਬ ਦਾ ਉਹਦੇ ਮਹਿਲਾਂ 'ਚ ਵਾਰਤਾ ਤੇ ਘੋੜੀਆਂ ਫੇਰ ਲੀਆਂ ਉਹਨਾਂ ਦੇ ਮਹਿਲਾ ਦੇ ਜਿਹੜੇ ਸ਼ੀਸ਼ੇ ਉਹ ਅਲੱਗ ਹੁੰਦੇ ਉਹਨਾਂ ਦੇ ਆਲੇ-ਦਾਲੇ ਫਰੇਮ ਬੜੇ ਵਧੀਆ ਹੁੰਦੇ ਸ਼ੀਸ਼ਿਆਂ ਦੇ ਵਿੱਚ ਬਣਿਆ-ਬਣਾਇਆ ਸਰਦਾਰ ਪੈਰ ਤੋਂ ਲੈ ਕੇ ਉੱਪਰ ਦੀ ਪਾਈ ਵੇਖਦਾ ਅਚਕਨ ਜਿਹੜੀ ਆ ਨੂੰ ਜਾਂਦੀ ਹੈ ਇਹ ਫੇਰ ਦਸਤਾਰ ਚਿਹਰਾ ਬਹੁਤ ਅਲੱਗ ਸ਼ੀਸ਼ੇ ਦੀ ਕਹਾਣੀ ਕਾਲਜਾਂ 'ਚ ਪੜ੍ਹਦੇ ਮਸਾਂ ਬਾਥਰੂਮ 'ਚ ਇੱਕ ਅੱਧਾ ਸ਼ੀਸ਼ਾ ਹੁੰਦਾ ਉੱਥੇ ਲੈਨ ਮੁੰਡਿਆਂ ਦੀ ਪਾੜਿਆਂ ਦੀ ਲੱਗ ਜਾਂਦੀ ਪੱਗ ਦਾ ਲੜਦਖਣ ਨੂੰ ਕਈ ਜਿਹੜੇ ਵਧੀਆ ਨਾ ਬੰਨਦੇ ਉਹਨੂੰ ਸਕੂਲ ਚ ਆ ਕੇ ਕਾਲਜ ਚ ਕਹਿੰਦਾ ਤੇਰੀ ਪੱਗ ਨਹੀਂ ਵਧੀਆ ਬੰਨੀ ਉਹ ਢਾ ਕੇ ਜਾ ਕੇ ਵਾਸ਼ਰੂਮ ਚ ਬੰਨ ਲਨ ਤੇ ਦਾ ਇੱਕ ਪੀੜ ਅੱਡ ਕੇ ਉਹ ਕਹਿੰਦਾ ਦੇਹ ਗੇੜਾ ਯਾਰ ਪੱਗ ਤਾਂ ਬੰਨੀ ਹੱਥ ਨੇ ਬਾਹ ਚੜਨਾ ਪੈਣ ਨੂੰ ਕੁੜੀਆਂ ਨੂੰ ਸ਼ੀਸ਼ਾ ਦੇਖਣਾ ਮੇਹ ਮੰਨੇ ਕੁੜੀਆਂ ਕੁੜੀਆਂ ਨੂੰ ਘਰਾਂ ਚ ਸ਼ੀਸ਼ਾ ਹੀ ਨਾ ਬਾਪੇ ਦੇਖਣ ਦੇਖੋ ਕਿੰਨਾ ਜ਼ੁਲਮ ਹੈ ਦੂਜਾ ਰਾਠ ਘੰਟਾ ਲਾ ਕੇ ਪੱਗ ਬੰਨਦਾ ਜੇ 10ਵੀਂ 11ਵੀਂ 12ਵੀਂ ਚ ਪੜ੍ਹਦੀ ਕੁੜੀ ਕੋਈ ਸ਼ੀਸ਼ਾ ਚੱਕ ਬੈਦੀ ਸ਼ੀਸ਼ਾ ਵੀ ਦੇਖੀਦਾ ਹੁੰਦਾ ਬਾ ਬੇਰਿਆਂ ਕੁੜੀਆਂ ਨੂੰ ਮਾਂ ਹੀ ਕੂੜਦੀਆਂ ਰਹਿੰਦੀਆਂ ਸਾਰਾ ਦਿਨ ਇੱਥੇ ਵੀ ਆਪਾਂ ਬਾਲਾ ਸਮਾ ਕੁੜੀ ਖੜਜੇ ਤੇ ਆਰਬ ਨੂੰ ਪੁੱਤ ਬਾਲਾ ਅਨਸ਼ੀਸ਼ ਨੂੰ ਹੁੰਦਾ ਇੱਥੇ ਆਪ ਨੂੰ ਬਈ ਕਿਵੇਂ ਕਹਾਣੀ ਲੱਗਦੀ ਆ ਢੱਡਾ ਵਾਲੇ ਢਿੱਡ ਦੇਖੀ ਜਾਂਦੇ ਸ਼ੀਸ਼ੇ 'ਤੇ ਢੱਡ ਵੱਧ ਗਿਆ ਲੱਗਦਾ ਆਪਣੇ ਢਿੱਡ ਤੇ ਹੱਥ ਫੇਰ ਕੇ ਸ਼ੀਸ਼ੇ ਨੂੰ ਦੇਖੀ ਜਾਂ ਕੇ ਉਹ ਤਾਂ ਲੱਗਿਆ ਹੀ ਹੋਇਆ ਨਾਲ ਉਥੋਂ ਪਤਾ ਕਿਸੇ ਸਮੇਂ ਸਹਿਤੀ ਤੇ ਨੇ ਤਿਆਰੀ ਕੀਤੀ ਹੋਗੀ ਸ਼ੀਸ਼ੇ 'ਚ ਵੇਖ ਕੇ ਆਪਣੇ ਆਪ ਨੂੰ ਕਲ ਮਾਨਖ ਦੀ ਕਹੀ ਸੁਣੋ ਤੇ ਫਿਰ ਤੁਸੀਂ ਕਰਿਓ ਕਾਲ ਸ਼ੀਸ਼ੇ ਨਾਲ ਕੋਈ ਯਾਦ ਆਸ਼ਤ ਜੁੜੀ ਆ ਪੁਰਾਣੀ 25 30 40 ਸਾਲ ਪਹਿਲਾਂ ਮੋਟਰ ਵਾਲੇ ਸ਼ੀਸ਼ੇ ਤੇ ਜਿੱਥੇ ਖੱਤ ਨਿਕਲਦੇ ਕਈ ਵਾਰ ਕੈਂਸਰ ਜਿਹੜੀ ਕੈਂਚ ਟੁੱਟਿਆ ਹੁੰਦਾ ਸ਼ੀਸ਼ਾ ਉਹਦੀ ਟਿੱਡੀ ਵੇਰੀ ਜਿਹੜੀ ਉਹ ਸ਼ੀਸ਼ਾ ਟੁੱਟਿਆ ਹੁੰਦਾ ਕੈਂਕਰ ਉਹਦੀ ਉਹ ਵੀ ਮੋਟਰ ਤੇ ਲੈ ਜਾਂਦੇ ਕਈਆਂ ਦੇ ਮੂੰਹ ਵਿੰਗੇ ਕੀਤੇ ਚਵਾਦੇ ਤੋਂ ਸ਼ੀਸ਼ੇ ਦੀ ਵਿੱਚ ਪਾ ਕੇ ਬੁਰਾ ਹਰ ਕਰਾਤਾ ਕੌਂਆਂ ਤੇ ਬਹੁਤ ਲਿਸ਼ਕੋਰਾਂ ਪਾਈਆਂ ਸ਼ੀਸ਼ੇ ਦੀਆਂ ਕੌਂ ਉੱਡ ਜਾਂਦੇ ਜਦੇ ਸ਼ੀਸ਼ੇ ਦੀ ਲਿਸ਼ਕੋਰ ਦੇ ਇੱਕੇ ਪਰ ਉਹ ਦੂਜਾ ਸ਼ੀਸ਼ਾ ਹੁੰਦਾ ਸੀ ਜਿਹੜਾ ਕਾਗਜ਼ ਸਾੜ ਦਾ ਹੁੰਦਾ ਸੀ ਉਹਦਾ ਵੀ ਨਾਮ ਦੱਸੋ 1844 1715 150 ਉਦੋਂ ਪਹਿਲਾ ਮਾਣਕ ਦਾ ਹੈ ਮਾਣਕ ਦੀ ਤਿਆਰੀ ਕਰ ਲਈ ਬਾਗ ਦੀ ਗੁਰਪ੍ਰੀਤ ਸਿੰਘ ਜੀ ਲਾਈਨ ਨੰਬਰ 3 ਤੁਸੀਂ ਏਰ ਤੇ ਹੋ ਸਤਿ ਸ੍ਰੀ ਅਕਾਲ ਜੀ ਸੁਣਾਓ ਕੋਈ ਹਾਂਜੀ ਬਾਜੀ ਉਹ ਸ਼ੀਸ਼ੇ ਦੀ ਗੱਲ ਚੱਲਦੀ ਸੀ ਅਸੀਂ ਨਾ ਇੱਕ ਮੁੰਡਾ ਵਿਆਹਣ ਚਲੇ ਗਏ ਬਟਾਂਡੇ ਸਾਈਡ ਬਰਾਤ ਚਲੇ ਗਏ ਬਜ਼ੁਰਗ ਇਹ ਮੈਨੂੰ ਲੱਗਦਾ 8 ਸਾਲ ਪਹਿਲਾਂ ਦੀ ਗੱਲ ਆ ਜੀ ਅੱਛਾ ਜੀ ਹਾਂਜੀ ਹਰਦੀਪ ਗਿੱਲ ਦਾ ਇੱਕ ਗਾਣਾ ਆਇਆ ਸੀ ਜੀ ਤੇਰੀ ਮਾਂ ਨੇ ਸ਼ੀਸ਼ਾ ਤੋੜ ਤਾ ਵੀ ਮੈਂ ਮਬੀਨਾ ਤੱਕਿਆ ਸਵਾਰ ਕੇ ਜਗਤਾਰ ਜੱਗੇ ਨੇ ਗਾਇਆ ਸੀ 30 ਸਾਲ ਪਹਿਲੇ ਜਗਤਾਰ ਜੱਗੇ ਹਾਂਜੀ ਹਾਂਜੀ ਉਹ ਨਾ ਗਾਣਾ ਟੈਕਸੀ ਵਾਲਿਆਂ ਨੇ ਬਠਿੰਡੇ ਤੱਕ ਬੰਦੇ ਨਹੀਂ ਕੀਤਾ ਬਜ਼ੁਰਗ ਜਦੋਂ ਅਸੀਂ ਵਿਆਹ ਕੇ ਲੈ ਡੋਲੇ ਲਾਹੇ ਉਹ ਕਹਿੰਦੇ ਵੀ ਵਧਾਈਆਂ ਵੀ ਸਰਦਾਰਾ ਜੇ ਬੁਆ ਮੋਟਰ ਵਾਲੇ ਉਹ ਕਹਦਾ ਕਾਹਦੀਆਂ ਵਧਾਈਆਂ ਸਾਲੇ ਵਧਾਈਆਂ ਦੇ ਸਾਲੇ ਦਾ ਸ਼ੀਸ਼ਾ ਹੀ ਨਹੀਂ ਛੂਤ ਆਇਆ ਕਹਿੰਦਾ ਪਰ ਛੰਡਿਓ ਮੁੜ ਆਈ ਜੀ ਥੈਂਕ ਯੂ ਜੀ ਬਪਾਰਖ ਅਕਾਲ ਭਾਈ ਜੀ ਯਾਰ ਇਹ ਕੋਈ ਮੋਟਰ ਵਾਲੇ ਸ਼ੀਸ਼ੇ ਦੀ ਸ਼ੀਸ਼ੇ ਦਾ ਬੜਾ ਜਿਆਦਾ ਹੈ ਜੀ ਮੋਟਰ ਵਾਲੇ ਸ਼ੀਸ਼ੇ ਕਈ ਵਾਰੀ ਕੀ ਹੋਣਾ ਜਿਹੜੇ ਘਰ ਦੇ ਜਿਵੇਂ ਸ਼ੀਸ਼ਾ ਤੜਕ ਜਾਣਾ ਨਾ ਉਹਦੇ ਵਿੱਚ ਬੰਦਾ ਵੀ ਦੋ ਦੋ ਵੀ ਤੇ ਚੱਲੇ ਨਾ ਸ਼ੀਸ਼ੇ ਦਾ ਰੌਲਾ ਜਦੋਂ ਸਵੇਰੇ ਰਾਤ ਦੇ ੱੱਕੇ ਟੁੱਟੇ ਬੰਦਿਆਂ ਨੇ ਪੈਰ ਜੇ ਮਲੀ ਜਾਣੇ ਉਹ ਮੈਨੂੰ ਕੋਈ ਸੀਸਾ ਤਾਂ ਲਿਆ ਮੈਂ ਸੀਸਾ ਲੱਭਾਂ ਪੱਕਵਾਂ ਉਹ ਜਾਣਾ ਉਹ ਬੰਦਿਆਂ ਨੇ ਉੱਠਣ ਦਾ ਜੀ ਨਹੀਂ ਕਰਦਾ ਸੀਗਾ ਉਹੀ ਜੀਸੇ ਵਿਚਾਰੀਆਂ ਧੀਆ ਭੈਣਾਂ ਨੇ ਕੀ ਕਰਨਾ ਡੋਰੀਆਂ ਪਰਾਂਦੇ ਜਿਹੜੀਆਂ ਤੁਹਾਰੀ ਕੁੜੀਆਂ ਨੇ ਉਹਨੇ ਸ਼ੀਸ਼ਾ ਲੈ ਕੇ ਕਮਰੇ ਚ ਵੜ ਜਾਣਾ ਮਤਲਬ ਇੱਕੋ ਸ਼ੀਸ਼ਾ ਆਪਣੇ ਸੀ ਕੇ ਸ਼ੀਸ਼ਾ ਘੁੰਮ ਕੇ ਸ਼ੀਸ਼ਾ ਬੜਾ ਇੰਪੋਰਟੈਂਟ ਹੁੰਦਾ ਸੀਗਾ ਚਲੋ ਹੁਣ ਤਾਂ ਵੀ ਫੇ ਕਦੇ ਬਾਪੂ ਜਿਵੇਂ ਪਿਓ ਦਾ ਸ਼ੀਸ਼ਾ ਫੜ ਕੇ ਉਹਦੀ ਪੱਗ ਬਣਾਉਣੇ ਕਿਤੇ ਸੂਤ ਨਾ ਆਉਣਾ ਕੰਸ ਕੁੰਸ ਕਿੱਥੇ ਲੱਭਦਾ ਸੀ ਐਨੇ ਰੋਲੇ-ਗੋਲੇ ਚ ਮਤਲਬ ਸ਼ੀਸ਼ੇ ਦੀ ਬਹੁਤ ਇੰਪੋਰਟੈਂਸ ਰਹੀ ਆ ਆਪਣੇ ਟਾਈਮ ਚ ਤੇ ਉਹਦੀ ਮਹੱਤਤਾ ਵੀ ਕਾਸੀ ਸੀਗੀ ਤੇ ਇੱਕ ਜਿਹੜੇ ਅਚਕਣ ਵਾਲਾ ਦੀ ਮੈਨੂੰ ਗੱਲ ਯਾਦ ਆ ਗਈ ਹਾਸੀ ਆ ਗਈ ਜਿਹੜੀ ਬੰਦੇ ਫਸੇ ਨਾ ਉਹਦੇ ਦੂਜੀ ਜਿਹੜੀ ਆਪਣਾ ਕਰਾਏ ਵਾਲੀ ਤੇ ਉਹ ਪਜਾਮਾ ਫਸੇ ਨਾ ਉਹਦੇ ਗਿੱਟੇ ਫਿਰ ਉਹਦੀ ਅਚਕਣ ਪਲੇਡ ਨਾਲ ਵੱਟ ਕੇ ਉਹਦੇ ਗਿੱਟੇ ਫਸਾਇਓ ਬੰਦਾ ਕਹਿੰਦਾ ਮੈਂ ਤਾਂ ਅਚਕਣੇ ਨਹੀਂ ਪਾਉਂਦਾ ਹੈਗਾ ਵਿਆਹ ਤੇ ਮਤਲਬ ਇਹ ਨੰਦਾ ਤੇ ਬੈਠਣਾ ਸਾਰਾ ਉਹ ਐਨਾ ਖੱਪ ਗਿਆ ਸੀ ਬੰਦਾ ਨੂੰ ਅਚਕਨ ਦੇ ਵਿੱਚ ਅਸੀਂ ਤੰਗ ਲਿਆ ਵੀ ਲੱਤਾਂ ਵਿੱਚ ਬੁਰਾ ਹਾਲ ਹੋਇਆ ਉਹ ਵੀ ਸਾਨੂੰ ਯਾਦ ਆ ਗਿਆ ਪਿਆ ਸ਼ਾਦੀ ਦਾ ਤੇ ਆ ਸ਼ੀਸ਼ੇ ਹੁੰਦੇ ਪੱਗਾਂ ਬੰਨਣ ਵਾਲੇ ਵੱਧ ਹੁੰਦੇ ਕਈ ਸ਼ੀਸ਼ੇ ਹੁੰਦੇ ਉਹ ਚ ਵੀ ਕਿਹੜਾ ਖੜੇ ਪੈਰ ਲਿਆ ਹੁੰਦੇ ਦੀ ਮਨਿਆਰੀ ਦੇਉ ਉਹਦੇ ਚ ਵੀ ਦੋ ਮੂੰਹ ਦੇਖਦੇ ਤਰੇੜ ਤੋਂ ਥੱਲੇ ਪਾਸੇ ਨੱਕ ਦਿਖਦਾ ਉੱਪਰ ਵੱਨੇ ਪੱਗ ਦਾ ਲੜ ਦਿਖਦਾ ਫਿਰ ਉਹਨੂੰ ਕਹਿੰਦੇ ਐ ਕਰੋ ਤੋੜੇ ਲਓ ਇਹਨੂੰ ਤੇ ਫਿਰ ਅੱਦਾ ਅੱਦਾ कर लो ਜਿਹੜਾ ਰੌਲਾ ਪੈਂਦਾ ਵੀ ਤੇਰੀ ਘਰ ਵਾਲੀ ਹਰ ਵਕਤ ਸ਼ੀਸ਼ੇ ਮੂਰੇ ਬੈਠੀ ਰਹਿੰਦੀ ਐ ਜਗਤਾਰ ਜੱਗੇ ਦਾ ਬਹੁਤ ਪੁਰਾਣਾ ਗੀਤ ਰੋਪੜ ਜ਼ਿਲ੍ਹੇ ਦਾ ਇਹ ਮੁੰਡਾ ਸਮੇਂ ਦੇ ਵਿੱਚ ਗਵਾਚ ਗਿਆ ਬਹੁਤ ਵਧੀਆ ਗੀਤ ਸੀ ਇਹਦਾ ਇਹ 1990 ਦੇ ਵਿੱਚ ਬੜ ਚੱਲਿਆ 26 27 ਸਾਲ ਪਹਿਲਾਂ ਤੇਰੀ ਮਾਂ ਨੇ ਸ਼ੀਸ਼ਾ ਤੋੜਤਾ ਸੁਣੋ ਅਖੀਰ ਚ ਦਦਾਰ ਸਿੰਧੂ ਦਾ ਗੀਤ ਤੁਹਾਡੇ ਲਈ ਛੱਡ ਕੇ ਜਾਂਦਾ ਤੇ ਰੱਬ ਰੱਖ